ਵਰਣ ਚਿਹਨ ਸਭ ਹੁੰਦੇ ਨਿਆਰਾ ਆਤਪੁਰਕ ਅਦਵੈ ਅਭਿਕਾਰਾ ਵਰਣ ਚਿਹਨ ਸਭ ਹੁੰਦੇ ਨਿਆਰਾ ਕੁਝ ਕਿਤੇ ਲੱਗਤ ਕੁੱਲ ਅਲਖ ਰੂਪ ਅਛੈ ਰਾਗ ਰੰਗ ਜਹਿ ਰੂਪਨ ਰੇਖਾ ਅਲਖ ਰੂਪ ਅਲਖ ਰੂਪ ਅਛੈ ਅਨਪੇਖਾ ਰਾਗ ਰੰਗ ਜੇ ਰੂਪ ਨਰੇਖਾ ਅਲਖ ਰੂਪ ਜੋ ਰੂਪ ਦੀਦਾ ਦੀ ਅੱਖ ਅੱਖਾਂ ਨੂੰ ਅਲਖ ਰੂਪ ਹੈ ਅੱਖਾਂ ਨੂੰ ਬਣੀ ਦੀਦਾ ਵੇਸ ਗਿਆਨ ਦਰਿਆ ਨੂੰ ਤੇਈ ਸਕਦੇ ਟੇਸਟ ਨਹੀਂ ਕਰ ਲੈ ਸਕਦੇ ਛੂਹ ਨਹੀਂ ਸਕਦੇ ਉਹ ਅਲਖ ਰੂਪ ਹੈ ਅਕਲ ਤੋਂ ਵੀ ਪਰੇ ਐ ਗੁੱਦੀ ਦੇੰ ਦਾ ਜੇ ਤੋਂ ਵੀ ਪਰੇ ਐ ਅ ਲਖ ਰੂਪ ਅੱਛਾ ਅਨੁਪੇਖਾ ਅੱਛਾ ਐ ਅੱਛਾ ਕਹਿੰਦੇ ਨੇ ਛੈ ਦੀ ਹੁੰਦਾ ਨਾਸ ਨਹੀਂ ਹੁੰਦਾ ਕੋਈ ਭੇਖ ਨਹੀਂ ਉਹਦਾ ਭੇਖ ਹੁੰਦਾ ਨਹੀਂ ਛੈ ਹੋਣਾ ਜਾਂ ਭੇਖ ਕੋਈ ਨਹੀਂ ਛੈ ਰਾਗ ਰੰਗ ਜਿਹ ਰੂਪ ਨਾ ਰੇਖਾ ਨਾ ਕੋਈ ਰਾਗ ਐ ਰਾਗਾ ਮਤਲਬ ਕੋਈ ਉਹਦੀ ਆਵਾਜ਼ ਨਹੀਂ ਹੈ ਆਵਾਜ਼ ਨੂੰ ਰਾਗ ਕਹਿੰਦੇ ਅਸਲ ਦੇ ਵਿੱਚ ਰਾਗ ਆਵਾਜ਼ ਨੂੰ ਹੀ ਕਹਿੰਦੇ ਰਾਗ ਕਹਿੰਦੇ ਨੇ ਡਿਮਾਂਡ ਨੂੰ ਜਿਹੜੀ ਆਵਾਜ਼ ਵਿੱਚ ਕੋਈ ਮੰਗ ਹੋਵੇ ਉਹ ਰਾਗ ਹੈ ਜਿਹੜੀ ਰਾਗ ਵਿੱਚ ਕੋਈ ਆਪਣੇ ਪਰਸਨਲ ਇੱਛਾ ਹੋਵੇ ਉਹ ਰਾਗ ਹੈ ਜਿਹੜੀ ਆਵਾਜ਼ ਪਰਪਕਾਰ ਦੀ ਇਛਾ ਲਈ ਹੋਵੇ ਉਹ ਰਾਗ ਦੀ ਹੁੰਦੀ ਪਰ ਪੁਕਾਰ ਦੀ ਇੱਛਾ ਹੋਵੇ ਪਰ ਪੁਕਾਰ ਖਾਤਰ ਕੋ ਬੋਲੀਏ ਹੋਰ ਗੱਲ ਹੈ ਆਪਣੇ ਵਾਸਤੇ ਬੁਗੀਏ ਕੁਝ ਹੋਰ ਗੱਲ ਉਹ ਦੇਣ ਦੀ ਇੱਛਾ ਹੁੰਦੀ ਆ ਇੱਕ ਬੱਗਲ ਦੀ ਛਲਦੀ ਇੱਕ ਧਾਤੇ ਦੀ ਆਵਾਜ਼ ਆਏ ਕਮੰਗ ਤੇ ਦੀ ਆਵਾਜ਼ ਆਏ ਬੁਗਤੇ ਦੀ ਜਿਹੜੀ ਆਵਾਜ਼ ਆ ਰਾਕ ਰਾਗ ਰੰਗ ਨਾ ਰਾਗ ਹੈ ਕੋਈ ਨਾ ਰਾਗ ਹੈ ਕੋਈ ਰੂਪਾ ਕੋਈ ਨਾ ਰੇਖਾ ਕੋਈ ਕੋਈ ਐਸੀ ਐਸਾ ਰੂਪਾ ਜੀ ਦਾ ਤਾਂ ਤੁਸੀਂ ਕਲਕੀਰ ਵੀ ਬੀਚੇ ਸਕਦੇ ਰੇਖਾ ਚਿੱਤਰ ਬਣਾਉਨੇ ਹਨ ਆਪਾਂ ਰੇਖਾ ਵੀ ਬੀਚੇ ਜਾ ਸਕਦੀ ਰੇਖਾ ਦਾ ਵੀ ਤਾਂ ਕੋਈ ਰੂਪ ਛੋਟੀ ਵੱਡੀ ਏਡੀ ਵਰਣ ਚਿਹਨ ਸਭ ਨਿਆਰਾ ਜਿਹੜੇ ਵਰਣ ਵਰਲ ਜਿਹਨੇ ਵੀ ਆਦਮੀ ਦੇ ਨਹੀਂ ਵਰਣ ਜਿਹਦੀਆਂ ਵੀ ਸਭ ਜੋ ਜੂਨੀਅਰ ਨੇ ਸਾਰੇ ਵੜ ਨੇ ਅੱਡੋ ਅੱਡ ਵੱਡੂ ਸਰੀਰ ਨੂੰ ਕਹੇ ਦੇੜ ਦੇਰਾ ਜਮੰਦਦਾ ਵੱਡੂ ਨੇ ਕੋ ਚੇਨੋਲੀ ਹੈ ਚੇਨੂ ਵੀ ਰੱਖ ਲੈਣਾ ਹੈ ਨਾ ਆਪਾਂ ਚੇਨੂ ਰੱਖਿਆ ਨੇ ਉਹਨਾਂ ਵਾਸਤੇ ਜਿਹੜੇ ਦੀਦੇ ਨੇ ਆਪਾਂ ਨੂੰ ਜਿਵੇਂ ਸ਼ਿਵਜੀ ਵਾਸਤੇ ਕੋ ਚੇਨ ਰੱਖ ਲਿਆ ਚੱਡੀ ਵਾਸਤੇ ਤਲਵਾਰ ਦਾ ਚੇਨ ਰੱਖਿਆ ਹੋਇਆ ਜਿਹੜੇ ਕੋਈ ਵਸਤੂ ਉਹਦੇ ਵਾਸਤੇ ਚੇਹਰਾ ਰੱਖਣਾ ਤੁਸ ਜੇ ਨੋ ਦੇ ਵਾਸਤੇ ਹੀ ਹੋ ਸਕਦਾ ਜਿਹਦਾ ਪਹਿਲਾਂ ਸਰੀਰ ਹੋਵੇ ਜੇ ਕੋਈ ਚੇਹਰਾ ਰੱਖਦੇ ਆ ਤਾਂ ਕਾਲਪਨਿਕ ਹੋ ਜੂਗੀ ਗੱਲ ਜਦੋਂ ਦਾ ਕੋਈ ਸਰੂਪ ਹੈ ਨਹੀਂ ਉਹਦੇ ਸਰੂਪ ਬੱਟੇ ਕੋਈ ਦੂਸਰਾ ਸਰੂਪ ਰਖੜੋ ਜਿਵੇਂ ਮੂਰਤੀ ਬਣਾਉਦੇ ਨੇ ਬੂਰਤੀ ਉਹ ਸਿਆਦ ਦੀ ਬਣੂ ਜਿਹੜਾ ਪਹਿਲਾਂ ਅੰਦਰ ਸੀ ਕਿਸੇ ਵੇਲੇ ਪਹਿਲਾਂ ਦੇ ਫੋਟੋ ਉਸਦੀ ਹੈ ਜਿਹੜਾ ਪਹਿਲਾਂ ਸੀਗਾ ਵजूद ਵਿੱਚ ਅੱਜ ਹੈ ਨਹੀਂ ਜਿੱਤੇ ਸੀ ਉਹ ਉਹਦੇ ਵਾਤੇ ਆਲਮੀ ਦੀ ਬੂਰਤੀ ਚੱਲੇ ਆਉਂਦਾ ਸਰ ਬਾਅਦ ਦੇ ਵਿੱਚ ਜੇ ਚੱਲੇ ਆਉਂਦਾ ਫੋਟੋ ਸਾਡੇ ਕੋਲ ਕਿੰਨੇ ਆ ਜਿਹੜਾ ਕੋ ਚੜਾਈ ਕਰ ਜਾਂਦਾ ਉਹਦੀ फोटो ਫੋਟੋ ਆ ਉਹ ਜਿੰਨੇ ਉਹ ਹੋਣ ਕੀ ਆ ਐਸਾ ਕੋਈ ਨਿਸ਼ਾਨੀ ਨਹੀਂ ਹੁੰਦੀ ਜਿਹੜਾ ਨਿਸ਼ਾਨੀ ਨੂੰ ਕਹਿੰਦੇ ਨੇ ਜਿਹੜੀ ਉਹ ਨਿਸ਼ਾਨੀ ਨੂੰ ਉਹ ਸਾਰਾ ਰੱਖ ਲੀਏ ਹੁਣ ਜਿੰਨੇ ਵੀ ਪੂਜਾ ਦੇ ਹਸਾਲੇ ਨਿਸ਼ਾਨੀ ਰੱਖੀ ਹੋਈ ਹੁੰਦੀ ਔਰ ਔਰ ਗਿਆਨ ਗੁਰੂ ਦੀ ਕੋ ਨਿਸ਼ਾਨੀ ਟੀ ਹੁੰਦੀ ਹੈ ਜਿਹਾ ਜੇ ਗ੍ਰੰਥ ਨੂੰ ਗਿਆਨ ਗੁਰੂ ਬਣਾ ਲਿਆ ਵੀ ਗਲਤੀ ਹੈ ਵਿਹਾਦੀ ਹੋ ਗਈ ਚੱਲ ਗਿਆ ਚੱਨ ਆ ਗਿਆ ਨਾ ਇੱਥੇ ਇੱਥੇ ਆ ਕੇ ਵਰਲ ਚੰਨ ਵਾਲੀ ਗੱਲ ਸਮਾਪਤ ਹੋ ਜਾਂਦੀ ਹੈ ਚੰਨ ਨਹੀਂ ਹੋ ਸਕਦਾ ਉਹਦਾ ਕੋਈ ਜਿਹਨੂੰ ਅਸੀਂ ਮੰਨਦੇ ਆ ਨਾ ਸਿੱਖ ਉਹਦਾ ਵਰਲ ਚੰਨ ਹੈ ਨਹੀਂ ਕੋਈ ਤੇ ਗ੍ਰੰਥ ਦਾ ਦਾ ਵਰਲ ਹੈਗਾ ਵੀ ਪੁੱਤੀ ਜਾਉਦਾ ਦਾ ਵਰਲ ਚੰਨ ਹੈਗਾ ਜਿਹਦੇ ਅਸੀਂ ਪੁਜਾਰੀ ਆ ਖਾਲਸਾ ਪੁਜਾਰੀ ਉਹਦਾ ਵਰਲਡ ਚ ਨਹੀਂ ਹੈ ਅਕਾਲ ਦਾ ਅਕਾਲ ਦਾ ਜਿਹਦੀ ਹਸਤੀ ਹੈ ਜਿਹਦੀ ਹਸਤੀ ਹੈ ਉਹ ਤੇ ਨਹੀਂ ਜੁੜਿਆ ਖਾਲਸਾ ਜਿੱਥੇ ਜੁੜਨਾ ਚਾਹੀਦਾ ਸੀ ਬਸ ਆਹੀ ਗੱਲ ਹੋਈ ਹੋਈ ਹੈ ਜਿਵੇਂ ਹਿੰਦੂ ਸੀ ਹੋਏ ਹੋਗੇ ਵਰਲਡ ਚ ਕੋਈ ਰੱਖ ਲਿਆ ਤੇ ਰੱਖ ਲਿਆ ਗਿਆ ਕਿਸੇ ਨੇ ਨਹੀਂ ਰੱਖਿਆ ਇਹ ਗੱਲ ਗਲਤ ਹੈ 100% ਦੀ ਕਿ ਘੁਰਿਆਈ ਦੇਤੀ ਦੇਦੀ ਤਾਂ ਚਾਲ ਸੀ ਦੁਆਲੀ ਦੁਆਲੀ ਵੀ ਨਹੀਂ ਚਾਲ ਸੀ ਉਹ ਤੋਂ ਮਜਬੂਰੀ ਸੀ ਘੁਰਿਆਈ ਦੇਤੀ ਕਹਣ ਬੰਦੇ ਬਾਹਰ ਦੀ ਜਗਤੀ ਲਾ ਲਈ ਉਹ ਮਜਬੂਰੀ ਗੱਲ ਫਸ ਗਈ ਹੁਣ ਉਹ ਤੋਂ ਗਲਤੀ ਕਰ ਲਈ ਝੂਠ ਬੋਲ ਉਹ ਗਲਤੀ ਕੀਤੀ ਉਹ ਗਲਤੀ ਪੱਕ ਗਈ ਕਹਦੇ ਕਹਦੇ ਹੁਣ ਉਹਨੂੰ ਖੜਾ ਨਹੀਂ ਛੱਡਦੀ ਗਲਤੀ ਹਾਲਾਂਕਿ ਹੋਈ ਨਹੀਂ ਚਲਦਾ ਕਿ ਉਸ ਕੁਰਬਾਨੀ ਨੂੰ ਉਸ ਉਸ ਪੋਥੀ ਸਾਹਿਬ ਨੂੰ ਕਿ ਜੇ ਉਹ ਰਾਇ ਨਾ ਦਿੱਤੀ ਜਾਂਦੀ ਜਿਵੇਂ ਇਹ ਕਹਿੰਦੇ ਨੇ ਅਸੀਂ ਕਹਿੰਦੇ ਹਾਂ ਬੰਦੇ ਹਾਂ ਫਿਰ ਉਹਦੀ ਕੋਈ ਕੀ ਵੈਲਿਊ ਨਹੀਂ ਸੀ ਫਿਰ ਫਿਰ ਉਹਦੀ ਕੋ ਪੁੱਛ ਨਹੀਂ ਸੀ ਫਿਰ ਕਿਸੇ ਨੇ ਨਹੀਂ ਸਿਆਣੇ ਲੋਕ ਇਹ ਵੈਲਿਊ ਇੰਡੀ ਵੀ ਰੈਡੀ ਸੀ ਕਬੀਰ ਦੇ ਬਾਣੀ ਦੀ ਵੀ ਵੈਲਿਊ ਉਹੀ ਹੋਦੀ ਸੀ ਚਾਹੇ ਕੱਟੀ ਹੋਈ ਹੋਵੇ ਚਾਹੇ ਨਾ ਕੱਟੀ ਹੋਈ ਹੋਈ ਇਹਦੀ ਵੈਲਿਊ ਉਹੀ ਹੋਈ ਪਹਿਲਾਂ ਜਿਹਦੀ ਸੀ ਜਿਹੜਾ ਤਾਂ ਸਮਝਦੇ ਰੋਹਾਂ ਵਾਸਤੇ ਤਾਂ ਹੋਰ ਵੈਲਿਊ ਆ ਜਿਹੜੇ ਨਹੀਂ ਸਮਝਦੇ ਉਹਨਾਂ ਵਾਸਤੇ ਹੋਰ ਵੈਲਿਊ ਜਿਹੜਾ ਨੂੰ ਗੁਰਬਾਣੀ ਸਮਝੀ ਹੋਣੀ ਜਦੋਂ ਗੁਰੂ ਰਹੇ ਰਹੇ ਆਪਣੇ ਟਾਈਮ 'ਚ ਤਾਂ ਉਹਨਾਂ ਨੇ ਗੁਰਬਾਣੀ ਨਾਲੇ ਜੋੜਿਆ ਸਾਨੂੰ ਗੁਰਬਾਣੀ ਕਿਤੇ ਹੋਰ ਜੋੜਦੀ ਹੈ ਆਦਮੀ ਗੁਰਬਾਣੀ ਨਾਲ ਜੋੜ ਸਕਦਾ ਹੋਰ ਕਿਹੜਾ ਨਾਲ ਜੋੜ ਸਕਦਾ ਤੁਹਾਨੂੰ ਆਦਮੀ ਇਹ ਜੋੜੂਗਾ ਗੁਰਬਾਣੀ ਨਾਲ ਜੋੜੂਗਾ ਅਸੀਂ ਵੀ ਕਹਿੰਨਾ ਗੁਰੂ ਨਾਲ ਜੋੜੋ ਬਾਣੀ ਨਾਲ ਜੋੜੋ ਗੁਰਬਾਣੀ ਨਾਲ ਜੋੜੂ ਗੁਰਬਾਣੀ ਕਿਤੇ ਹੋਰ ਜੋੜਦੀ ਹੈ ਪਰ ਅਸੀਂ ਕੀ ਕਰਦੇ ਹਾਂ ਗੁਰਬਾਣੀ ਨੂੰ ਬਸ ਸਾਡੇ ਕਰਨ ਪਰ ਨਾਲ ਜੁੜ ਕੇ ਭੁੱਲਿਆ ਇਹ ਗੱਲ ਗਲਤ ਹੈ ਵੇ ਗੁਰਬਾਣੀ ਨੂੰ ਬੰਨ ਰਿਹਾ ਹਾਂ ਤੇ ਬੜੀ ਮਸੀਤ ਤੇ ਜਾਣਾ ਨਹੀਂ ਹੈ ਗੁਰਬਾਣੀ ਨਾਲ ਜੁੜਨਾ ਰਿਹਾ ਗੁਰਬਾਣੀ ਕੀ ਕਹਿੰਦੀ ਹੈ ਕਿੱਥੇ ਜੋੜ ਰਹੀ ਹੈ ਜਿਵੇਂ ਜੀ ਟ੍ਰੇਨ 'ਚ ਬੈਠ ਗਏ ਜਿੱਥੇ ਟ੍ਰੇਨ ਜਾ ਕੇ ਰੁਕੂਗੀ ਉੱਥੇ ਅਸੀਂ ਰੁਕਾ ਕੇ ਟ੍ਰੇਨ 'ਚ ਬੈਠ ਗਏ ਅਸੀਂ ਤੇ ਇਹਨਾਂ ਨਾਲ ਜੁੜ ਗਏ ਜਿੱਥੇ ਟ੍ਰੇਨ ਸਾਨੂੰ ਲੈ ਜਾਊ ਉੱਥੇ ਜਾਵਾਂਗੇ ਜਿੱਥੇ ਗੁਰਬਾਣੀ ਲੈ ਕੇ ਜਾਂਦੀ ਉੱਥੇ ਜਾਓ ਮੱਤਾ ਟੇਕ ਨਾ ਕਰ ਡੁੱਬੋ ਓ ਉਹਨਾਂ ਨੇ ਗੁਰਬਾਣੀ ਨਾਲ ਜੋੜਿਆ ਜਿਹੜਾ ਗੁਰਬਾਣੀ ਨਾਲ ਜੁੜ ਗਿਆ ਉਹ ਨਾਨਕ ਬਣ ਗਿਆ ਜਿਹੜਾ ਨਹੀਂ ਜੁੜਿਆ ਉਹ ਰਹਿ ਗਿਆ ਜਿਹੜਾ ਗੁਰਬਾਣੀ ਨਾਲ ਜੁੜ ਗਿਆ ਸੱਚਖੰਡ ਚਲਾ ਗਿਆ ਟਰਕੀ ਬਾਣੀ ਇਹ ਟਰਕੀ ਬਾਣੀ ਦਾ ਮਤਲਬ ਹੈ ਜੇ ਤੁਰੋਂ ਆਈਏ ਤੁਰ ਲੈ ਵੀ ਜਾਂਦੀ ਹੈ ਜੇ ਗੱਡੀ ਬੱਬਈ ਤੇ ਚੱਲੀ ਆ ਤਾਂ ਮੁੜ ਕੇ ਬੱਬਈ ਆਉਣਾ ਵੀ ਐ ਇਹ ਵੀ ਜਲਦੀ ਨਾਲ ਗੱਡੀ ਇਹ ਗੱਡੀ ਅੱਬਰਸਰਾਂ ਚੱਲ ਕੇ ਬੱਬਈ ਜਾਂਦੀ ਐ ਦੋ ਦਿਨ ਮੁੜ ਕੇ ਤੀਹ ਦਿਨ ਫੇਰ ਆ ਜਾਂਦੀ ਐ ਫੇਰ ਉੱਥੇ ਚੱਲ ਪੈਂਦੀ ਐ ਇਹੀ ਨਰਮਲੀ ਕਰ ਰਹੀ ਐ ਇਹੀ ਲੋ ਕਰ ਰਿਹਾ ਕੰਮ ਇੱਥੋਂ ਜਾਂ ਅਸੀਂ ਤੁਰਕੀ ਬਾਣੀ ਕਹਾਂਗੇ ਇੱਥੋਂ ਤੁਰਕੀ ਬਾਣੀ ਦਾ ਮਤਲਬ ਹੈ ਇੱਥੋਂ ਤੱਕ ਕੋਈ ਬਦਲਣਾ ਨਹੀਂ ਪੈਣਾ ਗ੍ਰੰਥ ਤੇ ਵਿਚਾਰ ਧਾਰਾ ਕਬੀਰ ਨੂੰ ਬਦਲ ਲਈ ਕਬੀਰ ਵਾਲਾ ਫੇਰਦਾ ਸੀ ਨਾ ਉਹਦੋਂ ਝਾਲੂ ਬਦਲ ਲਈ ਭਈ ਉਹਦੋਂ ਝਾਲੂ ਬਦਲ ਲਈ ਭਈ ਬੰਦੇ ਵਖਦਨ ਨੂੰ ਬਦਲ ਲਈ ਪਰ ਬੰਦਾ ਵਾਲਾ ਫੇਰ ਛਾਲ ਮਾਰ ਕੇ ਉਤਰ ਗਿਆ ਬਦਲ ਪਈ ਨਾ ਸੇਕ ਨੂੰ ਇਹ ਵਿਚਾਰਦਾਰਾ ਬਦਲਦੀ ਜਿੰਦਗੀ ਤੁਰ ਲੈ ਜਾਂਦੀ ਹੈ ਅੱਗੇ ਜਾ ਕੇ ਰਸਤਾ ਹੀ ਇੱਕੋ ਹੀ ਹੈ ਪਿੱਛੋ ਰਸਤੇ ਹੋਰ ਹੈਗੇ ਨੇ ਜਰੂਰ ਅੱਗੇ ਜਾ ਕੇ ਸਿਰਫ ਇਹੀ ਰਸਤਾ ਹੋਰ ਕੋਈ ਰਸਤਾ ਨਹੀਂ ਹੈ ਕਿਸੇ ਗ੍ਰੰਥ ਵਿੱਚੋਂ ਹੋਰ ਕੋਈ ਤੁਰਦਾ ਰਸਤਾ ਨਹੀਂ ਦੱਸਿਆ ਹੋਇਆ ਤੁਰਦਾ ਰਸਤਾ ਇਹ ਦੱਸਿਆ ਹੈ ਗੁਰਬਾਣੀ ਨਾਲ ਜੁੜਨਾ ਹੈ ਗੁਰਬਾਣੀ ਜੁੜਨਾ ਮਤਲਬ ਇਹ ਜੋ ਗੁਰਬਾਣੀ ਕਹਿੰਦੀ ਹੈ ਉਹ ਬਨਣਾ ਹੈ ਉੱਥੇ ਜੁੜਨਾ ਜਿੱਥੇ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਨਾਲ ਜੁੜਨਾ ਮਤਲਬ ਇਹ ਹੈ ਗੁਰਬਾਣੀ ਸੁਣਨੀ ਹੈ ਸਮਝਣੀ ਹੈ ਜਿੱਥੇ ਕਹਿੰਦੀ ਹੈ ਉੱਥੇ ਜੁੜਨਾ ਜੁੜਨਾ ਮਤਲਬ ਇਹ ਨਹੀਂ ਵੀ ਗੁਰਬਾਣੀ ਨੂੰ ਬਨਣਾ ਬਨਣਾ ਤਾਂ ਹੀ ਬਨਣਾ ਜੋ ਕਹਿੰਦੀ ਹੈ ਪਰ ਬਨਣਾ ਕੀ ਹੈ ਇਹ ਬਨਣਾ ਨਹੀਂ ਵੀ ਬਸਾ ਗੁਰਬਾਣੀ ਨੂੰ ਟੇਕਣਾ ਹਲ ਕਿਤੇ ਟੇਕੜਾਂ ਦੀ ਇਹ ਬਨਣਾ ਨਹੀਂ ਹੈ ਇਹ ਗੁਰਬਾਣੀ ਨਾਲ ਜੋੜਨਾ ਨਹੀਂ ਹੈ ਜਿਹੜਾ ਜੁੜ ਗਿਆ ਉੱਥੇ ਪਹੁੰਚ ਗਿਆ ਜਿੱਥੇ ਗੁਰਬਾਣੀ ਲੈ ਕੇ ਜਾਂਦੀ ਹੈ ਜਿੱਥੋਂ ਆਈ ਹੋਈ ਹੈ ਉੱਥੇ ਲੈ ਜਾਂਦੀ ਹੈ ਉੱਥੇ ਜੋੜ ਦਦੀ ਹੈ ਕਿੱਥੇ ਜੋੜਦੀ ਹੈ ਆਪਣੇ ਬੋਲ ਨਾਲ ਜੋੜਦੀ ਹੈ ਪਹਿਲਾਂ ਤਾਂ ਕਹਿੰਦੀ ਆਪਣਾ ਬੋਲ ਪਛਾਣ ਜੋ ਕਹਿੰਦੀ ਆਪਣਾ ਬੋਲ ਪਛਾਣ ਕੇ ਪਛਾਣੋ ਸੁਣ ਲੈ ਕਬਲੀ ਕਰਦੇ ਜੇ ਸੁਣ ਕੇ ਕੰਮ ਕੀਤਾ ਨਹੀਂ ਬੋਲ ਨਾਲ ਜੁੜਿਆ ਹੀ ਨਹੀਂ ਗੁਰਬਾਣੀ ਨਾਲ ਜੁੜਿਆ ਉਹ ਇਹ ਕੰਮ ਨਾ ਜੋੜਨ ਵਾਲੇ ਕਰ ਰਹੇ ਨੇ ਗੁਰਵਾਲੇ ਜਿਹੜੇ ਕਹਿੰਦੇ ਠੇਕਾ ਲੈਂਦੇ ਪਰ ਗੁਰੂ ਨੇ ਜੋੜਨ ਵਾਲੇ ਨਾ ਉਹ ਇਹ ਕੰਮ ਕਰ ਰਹੇ ਨੇ ਜੋੜ ਜੋੜਨ ਵਾਲਿਆਂ ਨੇ ਤਾਂ ਕੀ ਕਰਨਾ ਜਾਂ ਤੂੰ ਖੁਦ ਹੀ ਨਹੀਂ ਕਰ ਰਹੇ ਜੇ ਜੋੜਨ ਵਾਲੇ ਨਹੀਂ ਉਹ ਕੰਮ ਕਰ ਰਹੇ ਜਿਹੜਾ ਗੁਰਵਾਲੇ ਕਹਿੰਦੀ ਹੈ ਤੇ ਜੋੜਨ ਵਾਲਿਆਂ ਨੇ ਵਿਚਾਰਾ ਨੇ ਕੀ ਕਰਦੇ ਜੋੜਨ ਵਾਲੇ ਹੀ ਕਰ ਰਹੇ ਉਹ ਤਾਂ ਕੰਮ ਜਿਹੜਾ ਗੁਰਵਾਲੇ ਕਹਿੰਦੀ ਹੈ ਇਸ ਕਰਕੇ ਕੋਟਨਵੇਂ ਨਾਨਕੋ ਉਨਾਰਣ ਜਾਈ ਚੀਤ ਇਹ ਠੀਕ ਲਿਖਿਆ ਸੀਗਾ ਉਹ ਤਾਂ ਕਰੋਨਾ ਜੋ ਕੋਈ ਕੱਦਾ ਹੁੰਦਾ ਹੈ ਜੁੜਨ ਵਾਲਾ ਬਾਕੀ ਰੌਲਾ ਪਾਉਣ ਵਾਲੇ ਹੁੰਦੇ ਰੌਲਾ ਪਾਉਣ ਦੇ ਵਿੱਚ ਕੋਈ ਸਰਦਾਰੀਆਂ ਦੀ ਗੱਲ ਹੁੰਦੀ ਹੈ ਸਸ ਸਚਮਕੌੜ ਦੀ ਗੱਲ ਹੁੰਦੀ ਹੈ ਗੋਲਕਾ ਦੇ ਕਬਜ਼ੇ ਦੀ ਗੱਲ ਹੁੰਦੀ ਹੈ ਸਾਰੀ ਚੌਧਰ ਦੀ ਗੱਲ ਹੁੰਦੀ ਹੈ ਹੋਰ ਕੁਝ ਨਹੀਂ ਹੁੰਦਾ ਇਹਦੇ ਜਿਆਦਾ ਕੁਝ ਨਹੀਂ ਹੁੰਦਾ ਇੱਥੇ ਜਿਆਦਾ ਕੁਝ ਨਹੀਂ ਹੁੰਦਾ ਜੀਨੇ ਗੁਰਬਾਣੀ ਨਾਲ ਜੁੜਨਾ ਉਹਦਾ ਰੌਲਾ ਇਹਨੇ ਆਪ ਜੁੜਨਾ ਨੂੰ ਲੋਕਾਂ ਨੂੰ ਰੌਲਾ ਨਹੀਂ ਪਾਉਣਾ ਉਹਨੇ ਤਾਂ ਆਪ ਜੁੜਨਾ ਉਹਨੂੰ ਰੌਲਾ ਪਾਉਣ ਦੀ ਲੋੜ ਨਹੀਂ ਹੁੰਦੀ ਬਹੁਤ ਹੀ ਵਰਣਾ ਚਿਹਨ ਸਭ ਹੋਂਤੇ ਨਿਆਰਾ ਤੇ ਵਰਣ ਪੇ ਸਾਰਿਆਂ ਤੋਂ ਹੀ ਕਿਸੇ ਵਰਣ ਵਿੱਚ ਨਹੀਂ ਹੈ ਜਿਹੜੇ ਅਸੀਂ ਕਹਿੰਦੇ ਪੰਜੇ ਕਕਾਰ ਪਾਉਏ ਪਾਉ ਬੋਗ ਬਾਉ ਉਹ ਇਹਦੇ ਉੱਪਰੇ ਹੈ ਇਹ ਤਾਂ ਵੀ ਦਿਖਾਰਾ ਹੈ ਉਹ ਇਹ ਤਾਂ ਜੁੜਨ ਵਾਸਤੇ ਹੈ ਇਹ ਤਾਂ ਨਹਿਰਾ ਹੋਣ ਵਾਸਤੇ ਵੇਖ ਪਾਇਆ ਹੈ ਸਰੀਰ ਵੀ ਜੇ ਤਿਆਗ ਲਈ ਤਾਂ ਭੇਜਦਾ ਪਹਿਲਾਂ ਤਾਂ ਗਿਆ ਨਾਲੇ ਜੇ ਜਿਉਂਦੇ ਰਹਿਣਾ ਹੈ ਜੀਵਤ ਰਹਿਣਾ ਸਰੀਰ ਤੇ ਆ ਗਿਆ ਗਿਆ ਤਾਂ ਭੇਜ ਸਰੀਰ ਦਾ ਰਹਿ ਗਿਆ ਉਸ ਰੂਪ ਵਰਲਡ ਜਿਹੜੇ ਉੱਤੇ ਵਿਹਾਰਾ ਹੀ ਹੋਣਾ ਜਦੋਂ ਫਿਰ ਜਨ ਪਦਾਰਥ ਜੇ ਮਿਲਣਾ ਉਸ ਰੂਪ ਦੀ ਗੱਲ ਹੈ ਰਾਵਰਤਨ ਤਾਂ ਪਾਈਏ ਜੇ ਪਹਿਲਾਂ ਤਾਂ ਜੇ ਪਹਿਲੇ ਤਜੇ ਸਰੀਰੋ ਨਾਲ ਹੈ ਤਾਂ ਬੰਡ ਚੱਲ ਜਿਹੜੇ ਵਰਲਡ ਜਿੰਨ ਤੇ ਜੋਰ ਦਿੰਦੇ ਨੇ ਉਹ ਇਸ ਦੁਨੀਆ ਦੇ ਵਿੱਚ ਰਹਿ ਜਾਣਗੇ ਇੱਥੇ ਰਹਿਣਗੇ ਬਾਹਰ ਨਹੀਂ ਜਾ ਸਕਦੇ ਗਾਹਾਂ ਦਾ ਗੱਲੇ ਹੀ ਨਹੀਂ ਉਹਨਾਂ ਕੋਲ ਉਦਾਹੀ ਹੈ ਜਿਵੇਂ ਪੜਨ ਤਰਵ ਮੁਸਲਮਾਨ ਦੀ ਦੋ ਫਿਰਕੇ ਪਹਿਲਾਂ ਇਹ ਲੜੀ ਜਾਂਦੇ ਸੀ ਜੇ ਹੋਗੇ ਲੜ ਨੂੰ ਵਿਚਾਲੇ ਉਹ ਰੁਬਦਰਨ ਨਾਲ ਨਾਲ ਉਹਦਾ ਸੰਸਾਰੀ ਲੜਾਈ ਹੈ ਇਹਨਾਂ ਦੀ ਸੰਸਾਰੀ ਲੜਾਈ ਹੋਈ ਹੈ ਇਹ ਮਨiyet ਨਾਲ ਲੜਾਈ ਨਹੀਂ ਹੈ ਜਿਤਣ ਰਾਵਣਾ ਬਣ ਸੀ ਲੜਾਈ ਆਪਣੇ ਮਨ ਨਾਲ ਸੀ ਤੇ ਤੇ ਲੋਕਾਂ ਨਾਲ ਹੈ ਕੁਰਬਾਨੀ ਆਪਣੇ ਮਨ ਨੂੰ ਜਿੱਤਣ ਦੀ ਗੱਲ ਕਰਦੀ ਹੈ ਜਿਹਨੇ ਆਪਣਾ ਮਨ ਜਿੱਤ ਲਿਆ ਉਹਨਾਂ ਸਾਰਾ ਸੰਸਾਰ ਜਿੱਤ ਲਿਆ ਇਨੇ ਆਪਣਾ ਮੰਨੀ ਜਿੱਤੇ ਉਹਦੇ ਕੋਈ ਵੀ ਨਹੀਂ ਜਿੱਤ ਹੁੰਦਾ ਕੁਛ ਉਹ ਨਹੀਂ ਜਿੱਤ ਹੁੰਦਾ ਆ ਝਗੜਾ ਹੈ ਰੌਲਾ ਪਾਈ ਜਾ ਦੂਆ ਦੂਆ ਦੀ ਨਹੀਂ ਬੰਦਦਾ ਦੂਆ ਦੂਆ ਦੀ ਨਹੀਂ ਬੰਦਦਾ ਤੁਸੀਂ ਦੂਆ ਨੂੰ ਬਣਾ ਕੀ ਲੈਣਾ ਆਪਣਾ ਬੋਲ ਬਲੋਵ ਮਨੂਖ ਝਗੜਾ ਹੋਰ ਪਾਸੇ ਪਾਰ ਰੱਖਦੇ ਹੁੰਦੇ ਕਿ ਜੇ ਉਹ ਇਹ ਗੱਲ ਕਰਨਗੇ ਫਿਰ ਫਿਰ ਉਹਨਾਂ ਨੂੰ ਆਪਣਾ ਬੋਲ ਬਲੋਵ ਲਊਗਾ ਅੱਜ ਪੁਰਖ ਅਦਵਾਯ ਵਿਕਾਰ ਆ ਹੁਕਮਾਤਪੁਰ ਕੇ ਇਹਨੇ ਹੁਕਮ ਰੂਪੇ ਹੋ ਜਾਣ ਜਦ ਇਹ ਕਹੋਗੇ ਉਕਣ ਬਹੁਤ ਵਿੱਚ ਸਮਾ ਜਾਣ ਕੋਈ ਗੁਰ ਸ਼ਬਦ ਦਾ ਸਬਾਬ ਹੈ ਵਰਨਾ ਜਾਣ ਕੋਈ ਜੀ ਉਹ ਸ਼ਬਦ ਵਿੱਚ ਸਮਾ ਜਾਣ ਸ਼ਬਦ ਚ ਸਮਾ ਕੇ ਇੱਕ ਹੋ ਜਾਣ ਸ਼ਬਦ ਚ ਸਮਾ ਕੇ ਤਾਂ ਇੱਕ ਹੋਣਾ ਸੱਚ ਦੇ ਵਿੱਚ ਦੀ ਕੋ ਫੈਲਾਇਨੇ ਇੱਕ ਬੀਜ ਰੂਪ ਹੋਲੇ ਪਹਿਲਾਂ ਤਾਂ ਆਪ ਬੀਜ ਰੂਪ ਚ ਕੋਲ ਫਿਰ ਸ਼ਬਦ ਦੇ ਵਿੱਚ ਸੁਬਾ ਕੇ ਹੁਕਮ ਰੂਪ ਹੋ ਜਾਂਦੇ ਨੇ ਦੇ ਉਹ ਹੈ ਦੇ ਦਾ ਸ਼ਬਦ ਹੈ ਹੁਣ ਦੇ ਕਿਹੜੀ ਹੈ ਹੁਣ ਜਿਹੜਾ ਬੰਦਾ ਸ਼ਬਦ ਹੈ ਇਹ ਦੇ ਹੈ ਇਹ ਝੂਠੀ ਦੇਹੀ ਹੈ ਬੰਦੀ ਦੇਹੀ ਵੀ ਝੂਠੀ ਹੈ ਬਿਜਾਏ ਚਲਵੇਂ ਝੂਠੀ ਨਹੀਂ ਆ ਦੇਹੀ ਝੂਠੀ ਨਹੀਂ ਹੈ ਜਿਹੜੀ ਸਾਡਾ ਸਰੀਰ ਹੈ ਇਹ ਤਾਂ ਜੀਵੀ ਹੈ ਜ ਹੈਗੀ ਹੈ ਬੜੀ ਹੈ ਇਹ ਠੀਕ ਹੈ ਨਾ ਵੀ ਪਿੰਡs ਜਾਣਾ ਇਹ ਤਾਂ ਪਤਾ ਹੀ ਐ ਨਾ ਮੁੰਡਿਆਂ ਦਾ ਇਹ ਤਾਂ ਪਤਾ ਹੀ ਨਹੀਂ ਗੱਲ ਦਾ ਪਤਾ ਨਹੀਂ ਸੀ ਉਹ ਦਸੀਆ ਕੁਰਬਾਨੀ ਦੇ ਜਿਹਦਾ ਪਤਾ ਉਹਦਾ ਕੀ ਦੱਸਣੂ ਸੀ ਉਹਦਾ ਯਾਦ ਕਰਾਈ ਜਿਹੜੀ ਗੱਲ ਦਾ ਪਤਾ ਉਹਦਾ ਯਾਦ ਹੀ ਕਰਾਈ ਐ ਉਹਨੂੰ ਦੱਸਣਾ ਨਹੀਂ ਕਹਿੰਦਾ ਉਹਨੂੰ ਯਾਦ ਕਰਾਣਾ ਇਹਨੇ ਯਾਦ ਕਰਾਈਆ ਤਾਂ ਤੇਰੇ ਫੇਰ ਤਾਜੀ ਕਰਾਈਏ ਵੇ ਭਾਈ ਜਿਹੜਾ ਕਹਾਂਗਾ ਇੱਥੇ ਰਹਿ ਜਾਣਾ ਪਤਾ ਹੀ ਹੈ ਰਹਿ ਜਾਣਾ ਲੈ ਕੇ ਘਾਉਣਗੇ ਦੀ ਜਾਈਆ ਸਰ ਉਹ ਤੀਨ ਸਾਹਮਣੇ ਹੀ ਇਹਦਾ ਯਾਦ ਹੈ ਕਰਾਇਆ ਇਹਦੇ ਝੂਠੀ ਦੇਹੀ ਕਿਹੜੀ ਹੈ ਜੋ ਮੰਦ ਦੀ ਕਲਪਨਾ ਝੂਠੀ ਦੇਹੀ ਹੈ ਜਿੰਨਾ ਚਿਰ ਉਹ ਨਹੀਂ ਫਿਰਸਲੀ ਉਹ ਦੇਹੀ ਦਾ ਫਿਰਸਲੀ ਇਹਦੇ ਕਾਲ ਦਾ ਫਿਰਸਲੀ ਉਹ ਦੇਹੀ ਇਹਦਾ ਕਾਲ ਹੈ ਜਦੋਂ ਕਲਪਣਾ ਮਾਰੀ ਗਈ ਨਾ ਇਹਦੀ ਬਿੰਦ ਸੀਗੀ ਕਾਲ ਵਿਰਤ ਗਿਆ ਬਸ ਕਾਲ ਫਿਰ ਫਿਰ ਅਕਾਲ ਬਣਦੀ ਉੱਪਰ ਚਲਾ ਗਿਆ ਕਾਲ ਇਹਦੀ ਕਲਪਣਾ ਹੀ ਇਹਦਾ ਕਾਲ ਹੈ ਇਹਦੀ ਮਾਇਆ ਦੀ ਭੁੱਖੇ ਦਾ ਕਾਲ ਹੈ ਮਾਇਆ ਦੀ ਭੁਖ ਮਾਇਆ ਛੱਡਣ ਨਹੀਂ ਦਿੰਦੀ ਮਾਇਆ ਦੀ ਭੁੱਖ ਹੈ ਮਾਇਆ ਛੱਡਣ ਦੀ ਸੰਸਾਰ ਛੱਡਣ ਦੀ ਜਨਮ ਬਰਨ ਉਸੇਹੀ ਪਾ ਰੱਖਦੀ ਹੈ ਨਾ ਉਹ ਭੁੱਖ ਮਰ ਗਈ ਬਸ ਸੰਸਾਰ ਚੋਏ ਮਰ ਗਿਆ ਸੰਸਾਰ ਮਨ ਮਰ ਗਿਆ ਭੁੱਖ ਮਰ ਗਈ ਮਨ ਮਰ ਗਿਆ ਕਾਦੇਨਾ ਮਰਿਆ ਸ਼ਬਦ ਨਾਲ ਉਪਦੇਸ਼ ਨਾਲ ਮਰਿਆ ਕੁਰਬਾਨੀ ਦੇ ਉਪਦੇਸ਼ ਨਾਲ ਸ਼ਬਦ ਮਰਿਆ ਮਰਿਆ ਫੋਨ ਜੀਵੇ ਬਸ ਫਿਰ ਜੀਵੇ ਜੀਵੇ ਕਾਦੇਨਾ ਹੁਕਮ ਨਾਲ ਜੀਵੇ ਹੁਕਮ ਦੇ ਵਿਚਰਨ ਜੂਗਾ ਫਿਰ ਫੇ ਜਉਣਾ ਹੋਣਾ ਹੁਕਮ ਨਾਲ ਮਾਰੇ ਫੋਨ ਜੀਵੇ ਤਾਂ ਫਿਰ ਮਰਨ ਹੋਈ ਫਿਰ ਮਰਨ ਤਾਂ ਰੂ ਆਦਪੁਰਖ ਅਦਵਾਏ ਅਵਕਾਰਾ ਉਹ ਹੈ ਅਦਵਾਏ ਹੈ ਉਹ ਜ ਤੋਇ ਜਦੋਂ ਸ਼ਬਦ ਦੇ ਵਿੱਚ ਪ੍ਰਗਟ ਹੁੰਦਾ ਨਾ ਸ਼ਬਦ ਰੂਪ ਫਿਰ ਨਾ ਸਿੱਖ ਰੈਂਦਾ ਨਾ ਮੁਸਲਮਾਨ ਰੈਂਦਾ ਨਾ ਹਿੰਦੂ ਕੁਝ ਵੀ ਨਹੀਂ ਰੈਂਦਾ ਫਿਰ ਫਿਰ ਐਸਾ ਕੁਝ ਨਹੀਂ ਰਿਹਾ ਤਾਂ ਫਿਰ ਕੁਝ ਵੀ ਨਹੀਂ ਹੈ ਫਿਰ ਆਦਰੂ ਪਰ ਇਹਨਾਂ ਦੇ ਕੋਈ ਫਿਰ ਕੋਈ ਰੂਪ ਹੈ ਪਰ ਸੰਝਾ ਹੈ ਸਾਦਾ ਸਬਦਾ ਫਿਰ ਇਹ ਨਹੀਂ ਵੇ ਇਹ ਨੂੰ ਸਿੱਖ ਚੰਗਾ ਲੱਗਦਾ ਹੈ ਯਾ ਦੂਸਰ ਸਿਕ ਚੰਗਾ ਨਹੀਂ ਲੱਗਦਾ ਸਾਰੇ ਆਪਣੇ ਨੇ ਉਹਨਾਂ ਜਿਹੜੇ ਪਰਾਇਆ ਆਪਣੇ ਜਿਹਨਾਂ ਜਨਮਾਇਆ ਨਾਲ ਜੁੜਿਆ ਹੋਇਆ ਹੈ ਪਰਾਇਆ ਆਪਣਾ ਫਿਰ ਕੀ ਹੈ ਉਹ ਚਹਿਹੀਆਂ ਗੱਲਾਂ ਕਹੀਓ ਭਗਤਾਂ ਨੇ ਜਿਹੜੀਆਂ ਉਹਨਾਂ ਦੇ ਧਰਮ ਵਾਲਿਆਂ ਨੂੰ ਚੰਗੀਆਂ ਲੱਗੀਆਂ ਲੋਗਾਂ ਨੇ ਤੋੜੀ ਰਾਂ ਲੋਗਾ ਰੀਤ ਤੋੜਦਾ ਜੇ ਅਸੀਂ ਲੋਗਾ ਰੀਤ ਤੋੜੀ ਜਿਹੜੀ ਸਿੱਖਾਂ ਚ ਪੈ ਗਈ ਤਾਂ ਸਿੱਖ ਤਾਂ ਸਾਨੂੰ ਨਫ਼ਰਤ ਕਰਨਗੇ ਨਾ ਇਹ ਲੋਗਾ ਰੀਤ ਨਾ ਤੋੜੀਏ ਲੋਗਾ ਰੀਤ ਬੰਨਣਾ ਰੁੱਧ ਨੇ ਬੰਧੂ ਲੋਗਾ ਰੀਤ ਦਾ ਜੇ ਕੱਟਦੇ ਨਹੀਂ ਤਾਂ ਨਿਰਵਾਹ ਨਹੀਂ ਹੁੰਦੇ ਮੰਦਿਰ ਕਾਟ ਭਏ ਨਿਰਵਾਹ ਜਿਹੜੇ ਬੰਦਨਾ ਦੇ ਵਿੱਚ ਨੇ ਨਿਰਵਾਹ ਨਹੀਂ ਹੋ ਸਕਦੇ ਜਿਹੜੇ ਜੋ ਪੰਜੇ ਕਕਾਰਾਂ ਦੇ ਬਨਣਾ ਜਿਹਦੇ ਨਿਰਵਾਹ ਨਹੀਂ ਹੋ ਸਕਦੇ ਉਹ ਜਿਹੜੇ ਸਰੀਰ ਦੇ ਬਨਣ ਚ ਨਾ ਨਿਰਵਾਹ ਨਹੀਂ ਹੋ ਸਕਦੇ ਇਹ ਪੰਜ ਕਕਾਰ ਤਾਂ ਨਿਰਵਾਹ ਹੋਣ ਵਾਸਤੇ ਨੇ ਵੈਰ ਵਿਰੋਧ ਕਰਨ ਵਾਸਤੇ ਨਹੀਂ ਇਹ ਤਾਂ ਨਿਰਵਾਹਤਾ ਦੀ ਨਿਸ਼ਾਨੀ ਸੀ ਇਹ ਤਾਂ ਨਿਰਵਾਹ ਹੋਣ ਵਾਸਤੇ ਨੇ ਇਹ ਤਾਂ ਉਹ ਨਿਸ਼ਾਨੀਆਂ ਵੀ ਇਹ ਪੰਜ ਕਕਾਰਾਂ ਨਾਲ ਨਿਰਵਾਹ ਹੁੰਦਾ ਅਜੀਬ ਜਿਹੇ ਕਾਰਨ ਨੂੰ ਵੈਰ ਉਹ ਦਾ ਕਾਰਨ ਬਣਾ ਲਿਆ ਅਜੀਬ ਗੱਲ ਹੈ ਜਿਹੜਾ ਨਿਸ਼ਾਨੀ ਸਾਨੂੰ ਨਰਵਾਇ ਕਰਨ ਵਾਸਤੇ ਪਾਈ ਸੀ ਉਹ ਵੈਰ ਫਰੋਦ ਦਾ ਕਾਰਨ ਬਲੋਈ ਬੈਠਿਆ ਇਹ ਲੋਗਾਂ ਦੀ ਰੀਤ ਇਹ ਲੋਗਾਂ ਦੀ ਰੀਤ ਹੈ ਇਹ ਤੋੜ ਦिए ਲੋਗਾਂ ਰੀਤ ਤੋੜਾਂਗੇ ਤਾਂ ਦੁੱਖ ਲੱਗੂਗਾ ਸੱਚ ਬੋਲਾਂ ਮੇਰੇ ਪਾਮਣ ਬਚੂਗਾ ਜਿਹੜੇ ਬਣਾਈ ਬੈਠੇ ਨੇ ਉਹਨਾਂ ਨੂੰ ਦੁੱਖ ਲੱਗੂਗਾ ਅਸਲ ਗੱਲ ਸੱਚ ਹੈ ਗੱਲ ਸੱਚ ਹੈ ਵੇਖ ਨਹੀਂ ਹੈ ਕੋਈ ਕਹੂ ਨਾ ਵੇਖ ਪੀਜੂ ਦਸ ਬਾਸ਼ਾ ਕਰਨ ਸੱਚ ਘਣ ਰੋ ਆਵਾਜ਼ ਆ ਰਹੀ ਹੈ ਜਿਹੜੀ ਬੋਲ ਰਹੇ ਨੇ ਕਹਿੰਦੇ ਅਸੀਂ ਕਿਸੇ ਵੇਖ ਨੂੰ ਦੇ ਨਾਲ ਸਾਡੇ ਤੇ ਅਸਰ ਨਹੀਂ ਹੁੰਦਾ ਤੇ ਤੁਹਾਡੇ ਕਕਾਰ ਤਾਂ ਇੱਥੇ ਰਹਿ ਗਏ ਕਕਾਰ ਨਹੀਂ ਪੈਂਦਾ ਕੋਈ ਇਹਦਾ ਸਰਵ ਨਿਸ਼ਾਨੀ ਜੇਦਾ ਕਕਾਰ ਨਿਸ਼ਾਨੀ ਨੇ ਬੈਰ ਵਿਰੋਧ ਖਤਮ ਕਰ ਦੇ ਫਿਰ ਉਸ ਗੱਲ ਨਾਲ ਪਿਛੇ ਜਿਹੜੀ ਤੁਹਾਡੇ ਅੰਦਰ ਗੱਲ ਹੈ ਬੈਰ ਵਿਰੋਧ ਨਹੀਂ ਹੈ ਉਸ ਭਾਵਨਾ ਨਾਲ ਪਿਛੇ ਬੈਰ ਵਿਰੋਧ ਖਤਮ ਕਰਨ ਵਾਲੀ ਜਿਹੜੀ ਭਾਵਨਾ ਹੈ ਉਹਦਾ ਅਸਰ ਪਿਆ ਲਾਗੇ ਕਕਾਰਾ ਨਾਲ ਪਿਆ ਸਰ ਅਸੇ ਕਕਾਰ ਦਾ ਲੈਣਾ ਬਈ ਜੇ ਅਸੀਂ ਕਕਾਰ ਪਾਇਦੇ ਸੀ ਬੈਰਵਰੋਧ ਉਹਨੂੰ ਤਿਆਗਣਾ ਹੈ ਅਸੀਂ ਆਪਣੇ ਵਾਸਤੇ ਲੈਣਾ ਆਪਣੇ ਮਨ ਵਾਸਤੇ ਲੈਣਾ ਤੈਂ ਕਕਾਰ ਤਾੜ ਲਈ ਤੇ ਨਾ ਤੈਂ ਬੈਰਵਰੋਧ ਤੋਂ ਪਰੇ ਜਾਣਾ ਤੂੰ ਨਹੀਂ ਰੱਖ ਸਕਦਾ ਬੈਰਵਰੋਧ ਨਹੀਂ ਕਕਾਰ ਲਾਦੇ ਨਹੀਂ ਲਾਦੇ ਸਿੱਖ ਲਾਦੇ ਪਰੇ ਕਰਦੇ ਸਿੱਖੀ ਜੇ ਬੈਰਵਰੋਧ ਦੇ ਵਿਚਰਾਣੇ ਸਿੱਖੀ ਤੇ ਪਰੇ ਹੋ ਜਾ ਤੂੰ ਕਹੀ ਜਾਂਸੀ ਸਿੱਖਾਂ ਤੂੰ ਦਰਗਹ ਪ੍ਰਵਾਨ ਨਹੀਂ ਗੁਰੂ ਕੋਲ ਪ੍ਰਵਾਨ ਨਹੀਂ ਹੋ ਸਕੋ ਭਲੇਖਾ ਜਾਂ ਤੂੰ ਬਹੁਤ ਬੜੇ ਜੀ ਮੈਂ ਸਿੱਖਾਂ ਇਹ ਭਲੇਖਾ ਲਾ ਦੇ ਇੱਕ ਕਾਰਾ ਨੇ ਕੁਝ ਨਹੀਂ ਦੋਣਾ ਤੈਨੂੰ ਜੇ ਤੂੰ ਬੈਰ ਬਰੋ ਵਰਦੀ ਪਾਈਆਂ ਪੁਲਿਸ ਦੀ ਨਾਲੇ ਡਗੈਤੀਆਂ ਮਾਰਦਾਂ ਪੁਲਿਸ ਦੀ ਵਰਦੀ ਪਾਖੜ ਕੇ ਕੈਤੀਆਂ ਮਾਰਦੀਆਂ ਨੇ ਕੋਈ ਜਾਂ ਇਨਸਾਫ ਕਰੀਦਾ ਤੇਰਾ ਬੁੱਢਾ ਡਕਾਇਦਾ ਉਹ ਨਹੀਂ ਉਹਦੇ ਵੀ ਉਹੀ ਮਾਰ ਜੱਤ ਵਾਦੀਆ ਚਾਹੇ ਤੇਰਾ ਹੀ ਬੁੱਢਾ ਜਤਵਾਦੀਆ ਗੋਲੀ ਉਹਦੇ ਵੀ ਮਾਰ ਜੇ ਤੂਗੇ ਦੇ ਮਾਰਦਾ ਉਹਨੇ ਵੀ ਮਾਰ ਫਿਰ ਕਹਦਾ ਤੇ ਕਹਦੇ ਰਹੇਗੇ ਨਾਨਕ ਨੇ ਚੱਕ ਕੇ ਗੁਰੇ ਜਿਹੜਾ ਕਾਫਲ ਸੀ ਉਹਨੂੰ ਦੇ ਦਿੱਤੀ ਉਥੇ ਆਪਣਾ ਪਰਾਇਆ ਨਹੀਂ ਕੋਈ ਜਿੱਥੇ ਆਪਣਾ ਪਰਾਇਆ ਉੱਥੇ ਗਗਾਰ ਬੇਗਾਰ ਨੇ ਇਹ ਦਿਖਾਵਾ ਫਿਰ ਫਿਰ ਤਾਂ ਦਿਖਾਵਾ ਆਦਪੁਰਖ ਅਦਵੈ ਅਭਿਕਾਰਾ ਆਦਪੁਰਖ ਅਦਵੈ ਅਭਿਕਾਰਾ ਆਦਪੁਰਖ ਹੈ ਆਦਪੁਰਖ ਦੇ ਨਾਲ ਤੈ ਜਾਣਾ ਰਲਣਾ ਆਦਪੁਰਖ ਜਹਜਾ ਹੋ ਜਾਈ ਖਾਲਸਾ ਚਾਹੀਦਾ ਕਹਨਣਾ ਯਾਵੇਂ ਉਹ ਜਮਾ ਤਾਸ ਮੇ ਰਣਚ ਕਰਾਹੀ ਨਾ ਪੇਵ ਪਰਮੇਸ਼ਰ ਜੇ ਮਹੇਜਾਰ ਮੇਰੇ ਖਾਲਸਾ ਚ ਕੋਈ ਫਰਕ ਨਹੀਂ ਇੱਕ ਆਦ फेर ਗੱਲ ਬਣਦੀ ਐ ਨਾ ਯਾਵਾ ਹੈ ਉਹ ਜਮਾ ਹੈ ਤਾਸਬ ਰੰਚਗਲਾ ਹੀ ਨਾ ਪੇ ਇੱਕ ਰੰਚਕ ਜਨੋ ਵੀ ਪੇਵ ਨੇ ਫਰਕ ਨਹੀਂ ਤੇ ਉਹ ਜੇ ਬੰਡਰ ਤੇ ਫਿਰ ਅਭਿਕਾਰਾ ਅਭਿਕਾਰਾ ਵਿਕਾਰਾ ਤੋਂ ਰਹਤਾ ਹੈ ਬੈਰ ਵਿਰੋਧ ਤਾਂ ਵਿਕਾਰ ਹੈ ਲੋਭ ਤਾਂ ਵਿਕਾਰ ਹੈ ਆਪਣਾ ਪਰਾਇਆ ਦਾ ਵਿਕਾਰ ਹੈ ਵਕਾਰ ਵਕਾਰਾ ਨਾ ਕੋਈ ਵੈਰੀ ਨਾ ਹੈ ਵਿਗਾਨਾ ਸਗਲੇ ਸੰਭ ਸਾਧਾ ਹਮ ਕੋ ਬਨ ਆਈ ਇਹ ਗੱਲ ਕਹਦੀ ਹੈ ਗੁਰਬਾਣੀ ਇਹ ਮੰਨਣੀ ਹੈ ਪੜਨੀ ਨਹੀਂ ਹੈ ਪੜਲੀ ਇੱਕ ਵਾਰ ਪੜਲੀ ਬਸਰੀ ਹੈ ਪੜਲੀ ਇੱਕ ਵਾਰੇ ਬਹੁਤ ਹੈ ਫੇ ਤਾਂ ਟਾਈਮ ਬੰਦੂ ਬਣਾਉਣ ਤੇ ਲਾਓ ਰੋਜ਼ ਪੜ੍ਹ ਕਰਦੀ ਕੋਈ ਲੋੜ ਨਹੀਂ ਇਹ ਪੜ੍ਹ ਕਦ ਤੇ ਕਰ ਕਦੇ ਵਾਤੇ ਕਰ ਲੋ ਮਾਰ ਜੇ ਮੰਨਣਾ ਲੈਣੀ ਫਿਰ ਕੰਮ ਵਾਸਤੇ ਕਰਨ। ਜਿਹੜੀ ਕੀ ਬੋਲਣੀ ਹੈ ਹੀ ਨਹੀਂ ਹੈ। ਫੇ ਤੋ ਤਾਂ ਹਟਾਣ ਦੀ ਗੱਲ ਕਰਨੀ ਹੈ। ਇੱਕ ਵਾਰ ਸੁਣ ਲਿਆ ਬਥੇਰਾ। ਵੜਵੜ ਕੱਢੀ ਲੰਦੀ ਹੈ ਇਹ ਤਾਂ ਹੀ ਲਿਖਿਆ ਸੀ। ਵੜਵੜ ਕੱਢੀ ਲੰਦੀ ਦਾ ਕੀ ਮਤਲਬ ਹੈ? ਇਹ ਕੁਝ ਕਰ ਰਹੇ ਸੀ ਪਿੱਛੇ ਤੁਸੀਂ ਵੀ ਉਹੀ ਕੰਮ ਕਰਨ ਲੱਗੇ ਅਸੀਂ ਵੀ ਉਹੀ ਕੰਮ ਕਰਨ ਲੱਗੇ। ਪ੍ਰਮਾਣ ਕਿਵੇਂ ਹੋ ਜਾਂਦੇ? ਇਹ ਨਹੀਂ ਰਿਆਦ ਕਿਸੇ ਨਾਲ ਕੋਈ ਰਿਆਦ ਕਹਦੇ ਨਾਲ ਹੋਣੀ ਸੀ ਕਿਸੇ ਨਾਲ ਵੀ ਕੋਈ ਰਿਆਦ ਨਹੀਂ ਜੋ ਗੁਰਬਾਣੀ ਹੈ ਸਭ ਵਾਸਤੇ ਕੋਈ ਹੈ ਇਹ ਨਹੀਂ ਆ ਵੀ ਸਖਮਾਤੇ ਕੋ ਰਿਆਤਾ ਦੇ ਹਾਂ ਸਿੱਖਦਾ ਸਭ ਬੁਲਜਾ ਜੈਸੇ ਇੱਕ ਬਣ ਕੇ ਵੀ ਇਹ ਪ੍ਰਚਾਰ ਕਰਦਾ ਢੇਕਾ ਲੈ ਕੇ ਵੀ ਤੂੰ ਵੀ ਕਰਦਾ ਤੂੰ ਤਾਂ ਸਗੋ ਜਿਆਦਾ ਬੁਲਜਾ ਪੜਿਆ ਹੋਵੇ ਗੁਨਾਹਗਰ ਉਮੀ ਸਾਧਨਾ ਮਾਰੀਏ ਉਮੀ ਸਾਧਨਾ ਮਾਰੀਏ ਤੂੰ ਪੜਿਆ ਤੂੰ ਤਾਂ ਗੁਨਾਹਗਰ ਜ਼ਿਆਦਾ ਹੈ ਫਿਰ ਜਿਹੜੇ ਬਾਣੀ ਪੜ੍ਹਦੇ ਨੇ ਗੁਨਾਹਗਰ ਜ਼ਿਆਦਾ ਨਹੀਂ ਪਰ ਸੋਚਣ ਸਾਧਨਾ ਕੋਈ ਰਾਤ ਹੋਊਗੀ ਰਾਤ ਕੋਈ ਨਹੀਂ ਹੋਣ ਵਾਲੀ ਕਿਸੇ ਨੂੰ ਜਵਾਬ ਦੇਣਾ ਔਖਾ ਹੋ ਜਵਾਬ ਦੇਣਾ ਔਖਾ ਹੋ ਜਿਹੜੇ ਨਹੀਂ ਪੜ੍ਹੇ ਉਹਨਾਂ ਨੂੰ ਸੌਖਾ ਜਵਾਬ ਦੇਣਾ ਉਹ ਸਮਝ ਚ ਨਹੀਂ ਆਈ ਸਾਨੂੰ ਤਾਂ ਉਲਟਾ ਸਮਝਾ ਦਿੱਤਾ ਅਜੇ ਤਾਂ ਪੜਿਆ ਹੀ ਨਹੀਂ ਹੈ ਉਹ ਕਾਹਜੂਆ ਜਵਾਬ ਦੇ ਲੋ ਉਹਨਾਂ ਨੂੰ ਇਹ ਕਹੋ ਜਿਹੜੇ ਬੂਰੇ ਨੇ ਦੂਜਿਆਂ ਨੂੰ ਸੌਖਾ ਜਵਾਬ ਦੇਣ 12 ਨ ਚਹਿਨਾ ਜਹ ਜਾਤ ਨ ਪਾਤਾ ਨ ਬੋਲਣਾ ਨ ਚਿਰਨਾ ਨ ਜਾਤ ਨ ਪਾਤਾ ਜਾਤ ਵੀ ਕੋਈ ਨਹੀਂ ਹੈ ਜਾਤ ਦਾ ਕੀ ਕੰਮ ਇਹ ਤਾਂ ਸਭ ਪੜਨ ਲਈ ਹੋਈਆਂ ਨੇ ਪੰਡਤਾਂ ਜੁੜਾ ਸੀ ਲਾ ਕੇ ਪਰੇ ਮਾਰਿਆ ਆ ਸਪਸ਼ਟ ਰੂਪ ਦੇ ਵਿੱਚ ਜਾਤ ਪਾਤ ਪੰਡਤੀ ਬਣਾਈ ਹੋਈ ਹੈ ਲਾਗਾਂ ਮਾਰੀ ਇੱਕੋ ਹੀ ਲਾਈਨ ਤੇ ਇਹ ਜੀ ਗੱਲ ਗੁਰਬਾਨੀ ਨਹੀਂ ਕਰ ਰਹੀ ਆਦ ਦੇ ਵਿੱਚ ਇੰਨੀ ਸਪਸ਼ਟ ਜਿਹੀ ਇੱਥੇ ਹੋ ਰਹੀ ਹੈ ਇਹਨਾਂ ਨੂੰ ਕੀ ਪਤਾ ਅਸਲ ਦੇ ਵਿੱਚ ਇਹ ਗੱਲ ਮੰਨਣੀ ਔਖੀ ਹੈ ਤਾਂ ਭਜਦੇ ਨੇ ਤੋਂ ਜਿਹੜੇ ਭਜਦੇ ਨੇ ਲੋਕ ਸਿੱਖ ਤਾਂ ਹਣੇ ਹੋ ਨਾ ਉਹਨਾਂ ਨੇ ਸਿੱਖ ਬਣਡ ਉਹਨਾਂ ਨੇ ਸਿੱਖ ਪੜਨਾ ਹੀ ਨਹੀਂ ਹੈ ਸਪਸ਼ਟ ਗੱਲ ਕਰ ਰਹੀ ਹੈ ਨਾ ਜਿਆਦਾ ਨਾ ਪਤਾ ਛਤਰ ਮਿੱਤਰ ਜਹਤਾਤ ਨਮਾਤਾ ਛਤਰੂ ਕੋਈ ਉਹਦਾ ਕੋਈ ਬੱਤਰ ਨਹੀਂ ਕੁੜੀ ਦਾ ਛਤਰੂਆਂ ਨਾਲ ਮੱਤਰ ਨਹੀਂ ਹੈ ਸਰਤਾਤ ਹੈ ਨਵਾਬ ਹੈ ਨਵਾਈ ਸੰਸਾਰ ਕੋਈ ਤੋੜ ਦੂ ਦੇ ਸੇ ਕਿਹਨੇ ਤੋੜਿਆ ਜੇ ਤੋੜੇ ਨੇ ਉਹ ਤੇ ਬਾਅਦ ਸਿੱਖਾ ਜਿਵੇਂ ਕਬੱਡੀ ਖੇਡਣੇ ਵਾਲੇ ਜਿਹੜੇ ਆ ਗਏ ਨਾ ਖਾੜੇ 'ਚ ਉਹੀ ਖੇਡਣੇ ਨੇ ਕਪੜੇ ਲਾ ਕੇ ਆ ਗਏ ਖਾੜੇ 'ਚ ਜਿਹੜਾ ਆ ਗਿਆ ਇਹ ਕੁਝ ਕਰਕੇ ਖਾੜੇ ਜਾਇਆ ਜੋ ਉਥੇ ਜਿੱਤ ਹਾਰ ਜੋ ਫੇਰ ਹੋਣੀ ਏ ਅਜੇ ਤਾਂ ਖਾੜੇ 'ਚ ਬੜਿਆ ਇਹ ਕੁਝ ਕਰਕੇ ਸੱਤਰ ਮਿੰਟ ਤਿਆਗ ਕੇ ਤਾਤਵਾਤ ਤਿਆਗ ਕੇ ਦਾ ਜੋ ਖਾੜੇ 'ਚ ਬੜਿਆ ਹੈ ਨੇ ਖਾੜੇ ਦੇ ਬਾਹਰ ਖੜੇ ਹੋ ਤੁਸੀਂ ਸਾਰੇ ਸਿੱਖੇ ਕਰੌਲਾ ਪਾਈ ਜਾਂਦੇ। ਅਜਾਓ ਖਾੜੇ 'ਚ ਵੜਿਆ ਜਿਹਦਾ ਜੋ ਪਤਾ ਨਹੀਂ ਕੀ ਹੋਵੇ। ਜਿਹੜਾ ਪਹਿਲਵਾਨ ਖਾੜੇ 'ਚ ਵੜਿਆ। ਅਜੇ ਤੂੰ ਜਾ ਕੀ ਪਤਾ ਕੀ ਹੋਵੇ। ਉਹ 'ਚ ਫੜੇ ਨਹੀਂ ਤੁਸੀਂ ਗੱਲਾਂ ਮਾਰੀ ਜਾਂਦੇ ਸਿੱਖੀ ਦੀ। بڑے بڑے ਦਾਅਵੇ ਕਰੀ ਜਾਂਦੇ ਉਹ ਖਾ ਖਾਦੇ ਬੇਮਤਲੂ ਦੇ। ਉਹਨਾਂ 'ਚੋ ਹੀ ਛਾਂਟੀ ਹੋਣੀ ਆ ਜਿਹੜੇ ਖਾੜੇ 'ਚ ਫੜੇ ਨੇ। ਉਹਨੇ ਜੋ ਪਤਾ ਲਗੂਆ। ਉਨੇ ਵੀ ਦਾ ਕਿਹੜਾ 10 ਹੈ ਕਿਹੜਾ 15 ਹੈ ਕਿਹੜਾ 18 ਹੈ ਕਿਹੜਾ 20 ਹੈ ਉੱਥੇ ਪਤਾ ਲੱਗੂ ਉਹਨਾਂ ਚੇ ਹੋ ਜੇ ਕੋਈ ਪਾਸ ਹੋਇਆ ਬਾਕੀ ਬਾਕੀ ਦਾ ਇਮਤਿਹਾਨ ਜਿਨ੍ਹਾਂ ਨੇ ਇਮਤਿਹਾਨ ਨਹੀਂ ਦਿੱਤਾ ਉਹਨਾਂ ਦਾ ਫਿਰ ਬਾਅਦ ਦਾ ਕੀ ਮਤਲਬ ਸਾਰੇ ਪਾਸ ਦੇ ਉਹ ਪਰਚੇ ਹੀ ਨਹੀਂ ਤਾਂ ਸਾਰੇ ਪਾਸੇ ਨੇ ਫਿਰ ਤਾਂ ਕੋਈ ਨਹੀਂ ਉਹਨਾਂ ਜੋ ਫਿਰਦਾ ਤਾਂ ਹੋ ਜੇ ਪਰਚਾ ਦਊਗਾ ਉਹ ਤਾਂ ਪਾਸੇ ਦੇ ਸਾਰੇ ਉਹਨਾਂ ਦੇ ਨਹੀਂ ਲੌਣਾ ਤਾਂ ਹੀ ਆਪਣਾ ਆਪ ਨੂੰ ਸਖਬੰਦੀ ਬੈਠੇ ਨੇ ਉਹ ਕਿਹੜਾ ਪਰਚਾ ਦਿੰਦਾ ਖਾਰੇ ਜਿ ਵੜਿਆ ਕੋਈ ਨਹੀਂ ਪਰਚਾ ਦਿੰਦਾ ਕੋਈ ਨਹੀਂ ਲੈਵਲ ਲਾ ਲੈ ਬੜੇ ਬੜੇ ਪਰਮ ਗਿਆਨੀਆਂ ਦਾ ਲੈਵਲ ਪਹਿਲਾਂ ਹੀ ਲਾ ਲੈ ਸੰਤਾ ਦੇ ਲੈਵਲ ਪਹਿਲਾਂ ਹੀ ਲਾਲੇ ਖਾੜੇ 'ਚ ਕੋਈ ਉਹ ਨਹੀਂ ਬੜਿਆ ਜੇ। ਹਾਂਜੀ। ਸ਼ਤਰੋ ਮਿੱਤਰ ਜਿਹ ਤਾਤ ਨ ਮਾਤਾ। 70 ਇਹ ਸ਼ਤਰੋ ਨਹੀਂ ਕੋਈ ਕੋਈ ਮਿੱਤਰ ਹੈ। ਹੱਥ ਰੱਖ ਕੇ ਦੇਖ ਆਪਣੇ ਸ਼ਤਰੂ ਮਿੱਤਰ ਹੈ ਨਹੀਂ। ਜੇ ਸ਼ਤਰੂ ਮਿੱਤਰ ਹੈਗੇ ਜੋ ਖਾੜੇ 'ਚ ਨਹੀਂ ਬੜੇ ਪਹਿਲਾਂ ਤਿਆਗ ਦੋ ਫਿਰ ਬੰਡ ਦੇਣਗੇ ਖਾੜੇ 'ਚ। ਸਾਨੂੰ ਨਹੀਂ ਬੰਡ ਦਿੰਦੇ ਉੱਤੇ। ਟੈਸਟ ਪਹਿਲਾਂ ਲਾ ਲੈਣ। ਓਹੋ ਅੰਦਰ ਬਾਹਰ ਤੇ ਆਪਾਂ ਵੀਆਪੀ ਲੋਕ ਆਏ ਹੁੰਦੇ ਨੇ। पहले ਗੇੜ ਦੇ ਤਲਾਸ਼ੀ ਲੈ ਲੰਦ ਨੇ ਪਹਿਲਾਂ ਚੈੱਕ ਕਰਕੇ ਹੀ ਖਾੜੇ ਚ ਬੜੂਗਾ ਕੋਈ ਇਹ ਜੀ ਸਭ ਤੋਂ ਦੂਰ ਇਹ ਟੈਸਟ ਹੈ ਆ ਜਿਹੜਾ ਟੈਸਟ ਹੈ ਖਾੜੇ ਚ ਬੜਨ ਦਾ ਟੈਸਟ ਜਿਹੜਾ ਇਹ ਟੈਸਟ ਦੇ ਦੂਗਾ ਇਹ ਹੋਰ ਬਹੁਤ ਕੁਝ ਆਗਾ ਗਾਹਗੇ ਤੇ 70 ਮੀਟਰ ਧਿਆਗੜ ਦੇ ਕਿਤੇ ਗੱਲ ਬਣ ਜੂਗੀ ਇਹਨਾਂ ਨੂੰ ਤਾਂ ਸਾਰੇ ਸੰਗਰੇ ਦੇਖ ਲੈ ਸਭ ਤੋਂ ਦੂਰ ਸਭਨ ਜੇ ਤਾਂ ਬਾਹਰ ਡੋਲੂਗੇ ਫੇ ਤਾਂ ਇਹਨਾਂ ਦੂਰ ਹਲ ਬਣਾਈ ਦੀ ਸਭ ਕੁਝ ਨੇੜੇ ਐ ਚੰਦਰਮਾ ਸੂਰਜ ਸਭ ਕੁਝ ਨੇੜੇ ਐ ਜੇ ਬਾਹਰ ਡੋਲੂਗੇ ਜਿਹੜੀ ਸ੍ਰਿਸ਼ਟੀ ਆ ਸਭ ਕੁਝ ਨੇੜੇ ਐ ਉਦੋਂ ਦੂਰ ਐ ਉਹ ਕਹ ਰਜਨਾ ਤੋਂ ਪਰੇ ਐ ਨਾ ਪਪਸਾਗਰ ਤੋਂ ਪਰੇ ਐ ਨਾ ਜੇ ਬਾਹਰ ਜਾਓਗੇ ਪਪਦਾਦਰ ਤੋਂ ਪਰੇ ਐ ਚਲੇ ਜਾਓਗੇ ਨਹੀਂ ਦੂਰ ਹੈ ਪਪਸਾਗਰ ਪਹਿਲਾਂ ਹੱਦ ਪਪਸਾਦਰ ਦੀ ਤੈ ਕਰ ਲੋ ਚਲੇ ਜਾਓ ਇਧਰ ਦਿੱਤਾ ਜੇ ਅੰਦਰ ਨੂੰ ਜਾਖੋਗੇ ਸਭ ਤੇ ਨੜੇ ਅੰਦਰ ਹੈ ਹੀ ਨਹੀਂ ਔਰ ਕੁਛ ਉਹਦੇ ਬਿਨਾ ਅੰਦਰ ਰਾਜ ਹੋਣੇ ਕੁਛ ਨਹੀਂ ਅੰਦਰ ਨਹੀਂ ਕੋਈ ਆਉਂਦਾ ਹੈ ਅੰਦਰ ਸਦਾ ਹੀ ਹੋਵੇ ਆਪੇ ਅੰਦਰ ਦੀ ਨੇੜੇ ਐ ਬਾਹਰ ਦੀ ਸਭ ਤੋਂ ਦੂਰ ਕਿਹੜੇ ਰਸਤੇ ਜਾਣਾ ਕਿਸੇ ਨੇ ਕਿਹੜੇ ਰਸਤੇ ਨਹੀਂ ਜਾਣਾ ਇਹ ਉਹ ਸੋਚ ਲਵੇ ਦੂਰ ਵਾਲੇ ਰਾਹ ਜਾਂ ਨੇ ਨੇੜੇ ਵਾਲੇ ਜਾਣ ਦੂਰ ਵਾਲੇ ਰਾਹ 'ਤੇ ਕੋਈ ਪਹੁੰਚਿਆ ਨਹੀਂ ਹੈ ਦੂਰ ਆਣ ਦੀ ਪਹੁੰਚਿਆ ਕੋਈ ਜਿੰਨੇ ਪਹੁੰਚੇ ਨੇੜੇ ਵਾਲੇ ਨਾਲ ਫਿਰ ਅਕਲਵੰਦ ਕਾਹਦਾ ਹੈ ਜਿਹੜਾ ਰੇੜੇ ਵਾਲਾ ਰਾਹ ਛੱਡ ਕੇ ਦੂਰ ਵਾਲੇ ਪਵੇ ਦੂਰ ਵਾਲੇ ਰਾਹ ਪੈਣ ਵਾਲਾ ਕੋਈ ਅਕਲਵੰਦ ਹੈ ਹਾਂ ਦੂਰ ਵਾਲੇ ਰਾਹ ਜਾਂਦੇ ਨੇ ਸੈਦਾਨ ਰੱਖਣ ਲੈ ਲੈ ਦੇਖਾਂਗੇ ਜਿਹੜਾ ਪਹੁੰਚੂ ਉੱਥੇ ਇਹ ਜਾਂਦੇ ਨੇ ਉੱਤੇ ਨੂੰ ਮਾਇਆ ਬਾਹਰ ਕਰ ਜਣ ਦੇਖ ਲਾਂਦੇ ਫਿਰ ਜਿਹੜਾ ਕਰ ਜੂਗਾ ਮੈਂ ਦੂਰ ਤੇ ਮਾਇਆ ਬਾਹਰ ਕਰਨੀ ਹੈ ਕਰ ਜੋ ਮਾਇਆ ਬਾਹਰ ਦੇਖਣਾ ਕੋਈ ਕਰਕੇ ਆਤਾ ਦਸ ਦੜਾ ਆ ਕੇ ਵੀ ਉਹਦਾ ਵੀ ਕਰ ਗਿਆ ਜਲਥਲ ਮਹੀਲ ਜਾਹਿ ਬਸੇਰਾ ਜਲਥਲ ਮਹੀਲ ਜਾਹਿ ਬਸੇਰਾ ਜਿੱਦਾ ਜਲਥਲ ਚਲ ਵਿੱਚ ਥਲ ਵਿੱਚ ਮਹੀਲ ਹੁਕਮ ਦਾ ਸਾਰੇ ਹੀ ਬਸੇਰਾ ਹੁਕਮ ਰੂਪ ਅਨਾਹਤ ਬਾਣੀ ਬਾਣੀ ਹੈ ਰੂਪ ਦੱਸਿਆ ਉਹ ਹੈ ਕੀ ਫਿਰ ਜੇ ਆਦੀ ਆਲੀ ਉਹਦਾ ਰੂਪ ਰੇਖ ਨਹੀਂ ਉਹ ਨਹੀਂ ਰਹੇ ਕੀ ਸਵਾਲ ਹੈ ਕੀ ਅਨਾਦ ਰੂਪ ਹੈ ਉਹਦਾ ਰੂਪ ਦਾ ਦਾ ਹੈਗਾ ਅਨਾਦ ਬਾਣੀ ਹੈ ਅਨਾਦ ਬਾਣੀ ਉਹਨੂੰ ਕਹਿੰਦੇ ਨਹੀਂ ਕੰਨਾਂ ਨੂੰ ਢੀ ਢੀ ਜਾਂਦੀ ਅਨਾਦ ਬਾਣੀ ਹੋ ਹੈ ਦੋ ਚੀਜ਼ਾਂ ਦੀ ਟਕਰਾਓ ਤੋਂ ਆਵਾਜ਼ ਪੈਦਾ ਹੁੰਦੀ ਹੈ ਜਿਹੜੀ ਮਾਇਆ ਦੇ ਵਿੱਚ ਆਵਾਜ਼ ਪੈਦਾ ਹੁੰਦੀ ਹੈ ਆਵਾਜ਼ ਕਹਾਂਗੇ ਸ਼ਬਦ ਪੈਦਾ ਹੁੰਦਾ ਹੈ ਮਾਇਆ ਦੇ ਵਿੱਚ ਦੋ ਚੀਜ਼ਾਂ ਦੇ ਟਕਰਾਵ ਨਾਲ ਹੀ ਪੈਦਾ ਹੁੰਦਾ ਹਵਾ ਤੇ ਆਕਾਸ਼ ਦੇ ਵਿੱਚ ਜਦ ਆਕਾਸ਼ ਨਾਲ ਆੜ ਹਵਾ ਹੋਈ ਤੇ ਸ਼ਬਦ ਪੈਦਾ ਹੋ ਗਿਆ ਜਿਹੜਾ ਕੰਨਾਂ ਨੂੰ ਸੁਣਦਾ ਹਵਾ ਚਲਦੀ ਹੈ ਗੂੰਜਦੀ ਹੈ ਸੁਣਦੀ ਹੈ ਆਪਾਂ ਨੂੰ ਜ਼ੋਰ ਨਾਲ ਚਲਦੀ ਹੈ ਪਰ ਉੱਥੇ ਇੱਕੋ ਹੀ ਹੈ ਜਿਹੜਾ ਉਹਦੇ ਜਿੱਲਾ ਸ਼ਬਦ ਪੈਦਾ ਹੋਇਆ ਟਕਰਾ ਦਾ ਹੈ ਜੀ ਅਨਾਹਰ ਬਣੀ ਹੋਤਾ ਉੱਥੇ ਤੇ ਟਕਰਾ ਟਕਰਾਊਗਾ ਦੇ ਨਾ ਹੋ ਅਨਾਹਰ ਬਣੀ ਹੋ ਦੇ ਦੋ ਇੱਕ ਹੈ ਉਹਦਾ ਕੋਈ ਐ ਨਹੀਂ ਹੈਗਾ ਵੀ ਇੱਥੇ ਤੱਕ ਹਾਂ ਜਿਹੜਾ ਟਕਰਾ ਤੋਂ ਸ਼ਬਦ ਪੈਦਾ ਹੋਇਆ ਹੈ ਇੱਕ ਹੱਦ ਤੱਕ ਜਾਂਦਾ ਖੁਦੀ ਹੋ ਜਿਹੜਾ ਦੋ ਚੀਜ਼ਾਂ ਨੇ ਟਕਰਾਦੋ ਆਵਾਜ਼ ਪੈਦਾ ਹੁੰਦਾ ਨਾ ਜਿਵੇਂ ਆਪਾਂ ਹੱਥ ਨਾਲ ਹੱਥ ਮਾਰਦੇ ਆ ਆਵਾਜ਼ ਪੈਦਾ ਹੋ ਜੀਏ। ਜਦੋਂ ਦੋ ਹੱਥਾਂ ਤੇ ਮੈਨਾਂ ਤਾੜੀ ਦੀ ਵੱਜਦੀ। ਦੋ ਹੱਥਾਂ ਤੇ ਮੈਨਾਂ ਦੋ ਚੀਜ਼ਾਂ ਤੇ ਮੈਨਾਂ ਸ਼ਬਦ ਨਹੀਂ ਪੈਦਾ ਹੁੰਦਾ। ਉਹ ਕਿਸੇ ਹੱਦ ਤੱਕ ਚੱਲਦੀ ਕਿ ਕਿੱਡੀ ਆ ਉਹ ਦੂਰ ਚਲੀ ਜਾਂਦੀ। ਚੂਕੇ ਉਹ ਆਹਤ ਬਾਣੀ ਆ ਇਸ ਕਰਕੇ ਉਹ ਸਰਬ ਵਿਆਪੀ ਹੈ, ਸਰਬ ਵਿਆਪੀ। ਐਨੀ ਹੈ ਕਿ ਵੀ ਇੱਥੇ ਰੁਕ ਗਈ ਜਾ ਕੇ ਹਰ ਹਰ ਵਾਲੀ ਚਰਨ ਸ਼ਰਨ ਜਿਹੇ ਵਸਤ ਭਵਾਨੀ ਭਵਾਨੀ ਜਿਹੜੀ ਹੈਗੀ ਹੈ ਉਹ ਬਾਣੀ ਦੇ ਚਰਨਾਂ ਦੇ ਸ਼ਰਨ ਵਿੱਚ ਹੀ ਹੈ ਭਵਾਨੀ ਚਰਨਾਂ ਸ਼ਰਨ ਜੇ ਵਸਤ ਭਵਾਨੀ ਇਹ ਨਾਲ ਜਿਹੜੀ ਭਵਾਨੀ ਹੈ ਨਾ ਜਿਹੜੀ ਇਹ ਨਾਲ ਹੀ ਉਹ ਤਾਂ ਆਪ ਹੈ ਭਵਾਨੀ ਹੈ ਬਾਣੀ ਤਾਂ ਜਿਹਨੂੰ ਇਹ ਭਵਾਨੀ ਕਹਿੰਦੇ ਨੇ ਜਿਹੜਾ ਭਗਤ ਕਹਿੰਦਾ ਮੁਕਤੀ ਬਰੀ ਮੁਕਤੀ ਕੀ ਬਰੀਆ ਕਹਾਂ ਛੁਪਾਣੀ ਤੂੰ ਕਹੀਦੀ ਆਦਿ ਭਵਾਨੀ ਤੂੰ ਕਹੀਦੀ ਆਦਿ ਭਵਾਨੀ ਤੈਨੂੰ ਤੂੰ ਤਾਂ ਆਦਿ ਭਵਾਨੀ ਕਹਿੰਦੇ ਸੀ ਤੈਨੂੰ ਤਾਂ ਲੋਕ ਮੁਕਤੀ ਕੀ ਬਰੀਆ ਕਹਾਂ ਛੁਪਾਣੀ ਮੁਕਤੀ ਦੇ ਵੇਲੇ ਕਥੇ ਛੁਪ ਗਈ ਤੂੰ ਉਸ ਭਵਾਨੀ ਦੀ ਗੱਲ ਹੈ ਇੱਥੇ ਕਿਉਂਕਿ ਇਹ ਜਿਹੜੀ ਬਾਣੀ ਹੈ ਨਾ ਅਨੰਦ ਬਾਣੀ ਇਹ ਤਾਂ ਆਪੇ ਭਵਾਨੀ ਏ ਥੋੜੇ ਭਵਾਨੀ ਉਹਦੇ ਚੜਲਾਂ ਦੀ ਛੜਲਾਂ 'ਚ ਰਹਿੰਦੀ ਹੈ ਸਭ ਜਣੀ ਥੋੜੇ ਆਲੇ ਚੜਨੇ ਛੜਨੇ ਜੇ ਬਸ ਭਵਾਨੀ ਭਵਾਨੀ ਕਿਉਂਕਿ ਭਵਾਨੀ ਦਾ ਜਿਹੜਾ ਪੜਾ ਉੱਥੇ ਆਇਆ ਹੋਇਆ ਹੈ ਆਪ ਪਿੱਛੇ ਪੜਿਆ ਹੈ ਸੋਈ ਭਵਾਨੀ ਪ੍ਰਥਮ ਕਾਲ ਸਭ ਜਗ ਕੋ ਤਾਤਾ ਸਭ ਤੋਂ ਪਹਿਲਾ ਇਹਨਾਂ ਕਾਲ ਹੈ ਕਲ ਕੀ ਹੁਕਮ ਹੈ ਸਭ ਦਾ ਵਾਪ ਹੈ ਸਭ ਜਗ ਕੋ ਤਾਤਾ ਜਾ ਤੇ ਪeo ਪeo ਤੇ ਇਹ ਬਖਿਆਤਾ ਕਿਤੇ ਸਭ ਨੂੰ ਤੇਜ ਮਿਲਿਆ ਚਾਹਲ ਹੋਏ ਤੇਜ ਫੈਲੇ ਸੋਈ ਬਵਾਨੀ ਨਾ ਬਖਾਈ ਉਤਾਪੇ ਬਵਾਨੀ ਇਹ ਜੇ ਨ ਜ਼ਗਰੀਏ ਸਿਸਟਰ ਉਪਾਇ ਨਾਲ ਹੀ ਭਵਾਨੀ ਦੀ ਗੱਲ ਹੈ ਨਾ ਕਿ ਉਸ ਭਵਾਨੀ ਦੀ ਗੱਲ ਹੈ ਜਿਹੜੀ ਗੁਰਬਾਣੀ ਚ ਭਵਾਨੀ ਉਹਦੀ ਗੱਲ ਨਹੀਂ ਹੈ ਮਤ ਵਾਲੇ ਉਸ ਭਵਾਨੀ ਦੀ ਗੱਲ ਹੈ ਚੜ੍ਹਨ ਛੱਡ ਜੇ ਉਹ ਭਵਾਨੀ ਵੀ ਇਹਦੇ ਹੁਕਮ ਚ ਹੈ ਚੜ੍ਹਨ ਛੱਡਣਾ ਮਤਲਬ ਹੁਕਮ ਚ ਜਿਹੜਾ ਹੁਕਮ ਦੇ ਵਿੱਚ ਹੁੰਦਾ ਚੜ੍ਹਨ ਛੜਨ ਚ ਬਸਦਾ ਹੁੰਦਾ ਕਤੇ ਉਹ ਅਰਥ ਨਹੀਂ ਮੰਨ ਲੈਣੇ ਜਿਹੜੇ ਭਵਾਨੀ ਸਾਨੂੰ ਗੁਰਮਤ ਚਾਹੀ ਹੋਈ ਜੇ ਗੁਰਮਤਿ ਦੇ ਭਵਾਨੀ ਮਾਤਰੂਪ ਜਿਹਦੀ ਗੱਲ ਹੋ ਰਹੀ ਹੈ ਗਾਲ ਉਹ ਪਿਤਾ ਰੂਪ ਚ ਭਵਾਨੀ ਦਾ ਇਹ ਸੋਤਰ ਆਊਗਾ ਦੁਰਗਾ ਸੋਤਰ ਜਿਹੜਾ ਗਾਉੜੇ ਦੀਰਗ ਤਰਪਕ ਦੀ ਸ਼ਰਧਾਉਣੇ ਦੇ ਵਿੱਚ ਉਹ ਭਵਾਨੀ ਦਾ ਹੀ ਹੈ ਵੇਤਾ ਉਹ ਦੋ ਦੋ ਨੇ ਕੋਈ ਚੀਜ਼ ਇੱਕ ਤੇ ਦੋ ਨੋਰ ਕੋਈ ਸਾਡੀ ਬੋਲੀ ਜਦੋਂ ਉਹਨਾਂ ਉਹਦੇ ਨਾ ਬੋਲੀ ਦੋ ਨੋਰ ਆੜੀ ਹੈ ਚੰਨ ਛੰਨ ਜੇ ਬਸਤ ਭਵਾਨੀ ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ ਬ੍ਰਹਮਾ ਵਿਸ਼ਨੂ ਨੇ ਉਤਰੀ ਪਾਇਆ ਦੇਖੋ ਬ੍ਰਹਮਾ ਵਿਸ਼ਨੂ ਨੇ ਤਾਂਤ ਪਾਇਆ ਨਹੀਂ ਬ੍ਰਹਮਾ ਵਿਸ਼ਨੂ ਘਰ ਵਾਲੀ ਦਾ ਨਾ ਕਿਉਂ ਨਹੀਂ ਆਇਆ ਬਈ ਜਦ ਆਇਆ ਆਦਮੀ ਨਾ ਉਹ ਹੈ ਅਰਦਾ ਕਿਹਦਾ ਨਹੀ ਰਿਹਾ ਹੈ। ਵਰਦਨ ਕਰੀ। ਤਾਂਮਾ ਵਰਦਨ ਦਾ ਬੇਚਾਰੀ ਹੈ। ਜੇ ਕਾਨੂੰ ਜਰਾ ਠੰਡੇ ਦਿਮਾਗ ਨਾਲੇ ਸੋਚਣਾ ਚਾਹੀਦਾ। ਜਦ ਵੀ ਆਇਆ ਆਦਮੀ ਦਾ ਬਿਛਾਇਆ। ਉਹਨਾਂ ਦੇ ਘਰ ਵਾਲੀਆਂ ਵੀ ਨੇ ਉਹਨਾਂ ਨੂੰ ਕਿਉਂ ਨਹੀਂ ਆਇਆ ਉਹਨਾਂ ਦਾ ਨੋ ਵੀ ਉਹਨਾਂ ਨੇ ਅੰਤ ਨਹੀਂ ਪਾਇਆ। ਬ੍ਰਹਮਾ ਰੁੱਦਰ ਪਾਇ ਖ ਪਾਇ ਦਾ ਹੁੰਦਾ ਘਰ ਵਾਲੀ ਛੜਤੀ ਵਿਸ਼ਾ ਜ਼ਰਬਾਦਵੀ ਦੇ ਤਰਫ ਇਹ ਤਰਫ ਜਿਹੜਾ ਹੈ ਆਦਮੀ ਦਾ ਵਿਸ਼ਾ ਜਿਹੜਾ ਇਹ ਤੋਂ ਥੱਲੇ ਵਾਲਾ ਧਰਮ ਹੈ ਪੂਰਤੀ ਪੂਜਾ ਵਾਲਾ ਉਹ ਹੋਰ ਦਾ ਤਰਫ ਉਹ ਜਿਹੜੀ ਪੁੱਠੀਆਂ ਪ੍ਰਕਰਮਾਂ ਨੇ ਜਿਹੜੀਆਂ ਅਸੀਂ ਕਰਦੇ ਆ ਖੱਬਾ ਪੈਰ ਪੂਰੇ ਚੱਲਦਾ ਤਾਂ ਵੀ ਪੁੱਠੀਆਂ ਨੇ ਔਰ ਉਹਦਾ ਖੱਬਾ ਪੈਰ ਚੱਲਦਾ ਪੂਰੇ ਸਾਡੀਆਂ ਪ੍ਰਕਰਮਾਂ ਸਿੱਧੀਆਂ ਨੇ ਸੱਜਾ ਪੈਰ ਚੱਲਦਾ ਆਦਮੀ ਦਾ ਤਰਫ ਦਰਾਕਾਰ ਆ ਤਬੀਦਾ ਤਰਫ ਔਰ ਜਿਹੜਾ ਜੋ ਕਸੀੜੀ ਰਹਿੰਦੀ ਐ ਉਹਨੇ ਆਦਮੀ ਦਾ ਰੂਪ ਧਾਰ ਕਰਿਆ ਤਾਂ ਸਿੱਧੀ ਜਿਹੜੂ ਨੇ ਸਿੱਧੀ ਜਾਂ ਫਿਰ ਗੁਰਮੁਖ ਆਦਮੀ ਹੋਵੇ ਉਹ ਉਹਦੇ ਨਾਲ ਇੱਕ ਸੁਰ ਹੋਵੇ ਫਿਰ ਕੋਰੂ ਬੋ ਕੇ ਨਿਕਲੇ ਤਾਂ ਫਿਰ ਇਹ ਨਾ ਕੀਰ ਬਣ ਜ ਇਕੱਠੇ ਹੋਏ ਇਹ ਜੋਤ ਦੋਏ ਮੂਰਤੀ ਦੋਹਾਂ ਦੀ ਜੋਤੇ ਖੋਜਵੇ ਜੋਤੇ ਕਤਾ ਹੋਊਗੀ ਜੇ ਗੁਰਮਤਿ ਦੋਏ ਧਾਰਨ ਕਰਨ ਬਿਨਾ ਗੁਰਮਤ ਦੇ ਤਾਂ ਨਹੀਂ ਹੋਏ ਦੋਹਾਂ ਦੀ ਜੋਤ ਇੱਕ ਨਹੀਂ ਹੋ ਸਕਦੀ। ਵਖਰਾ ਗੁਰੂ ਕਰਨੀ ਨੂੰ ਲੋੜ ਨਹੀਂ। ਵਖਰਾ ਮੁਰਸ਼ਦਣ ਦੀ ਲੋੜ ਨਹੀਂ। ਸਮਝੇ? ਘੇੜ ਸਿੱਖ ਹੈ। ਸਿੱਖ ਹੈ। ਉਲਵਾ ਦਾ ਹੈ। ਉਹ ਕਹੀ ਜਾਣ ਸਰਕਾਰ ਕੋ ਸਰਕਾਰ ਕੀ ਫਰਕ ਪੈਂਦਾ ਇਹਨਾਂ ਨੇ ਕਹਿਆ ਇਹਨਾਂ ਨੂੰ ਕਿਉਂ ਪ੍ਰੋਬਲਮ ਆਈ ਐ ਇਹ ਗੱਲ ਕਹਿਣ ਦੀ ਕਿਉਂਕਿ ਅਬਰ ਦੇ ਛਕਾਉਣ ਲੱਗ ਗਏ ਇਹ ਤਾਂ ਪ੍ਰੋਬਲਮ ਹੋਦੀ ਐ ਵੀ ਲੋਕ ਕਿਉਂ ਨਹੀਂ ਬਦਲਿਆ ਬਾਕੀ ਸਿੱਧੇ ਲੱਗ ਗਏ ਫੇਰ ਵੀ ਇਹ اتحاد ਸਜਾਇਆ ਸਿੰਧ ਨੇ ਸਿੱਖਣੀਆਂ ਦਾ ਸਜਾਇਆ ਹੀ ਨਹੀਂ ਸਜਾਇਆ ਦਸੰਦ ਪੰਜ ਪਿਆਰੇ ਸਾਰੇ ਆਦਮੀ ਹੋਰ ਜਿਹੜੇ ਲੋਕ ਹੁਣ ਰੌਲਾ ਪਾ ਰਹੇ ਨੇ ਕੋਹ ਨੂੰ ਧਰਮ ਦਾ ਗਿਆਨ ਹੈ ਇਹ ਨਹੀਂ ਨਾ ਇਹ ਧਾਰਮਿਕ ਬੰਦੇ ਹੀ ਨਹੀਂ ਧਰਮ ਉਹਨਾਂ ਦਾ ਵਿਸ਼ਾ ਹੀ ਹੈ ਨਹੀਂ ਉਹਨਾਂ ਦਾ ਵਿਸ਼ਾ ਧਰਮ ਨਹੀਂ ਧਰਮ ਵਿਸ਼ਾ ਹੁੰਦਾ ਇੱਕ ਬਚਪਨ ਤੋਂ ਪੜਿਆ ਜਾਂਦਾ ਜਿਹਨਾਂ ਦਾ ਧਰਮ ਵਿਸ਼ਾ ਹੈ ਉਹਨੇ ਜਰੌਲਾ ਨਹੀਂ ਹੈ ਇਹ ਅਰਧ ਸਰੀਰੀ ਲਿਖਿਆ ਅਰਧ ਸਰੀਰੀ ਨਾਲ ਨਾ ਤਾਂ ਤੇ ਹਿੰਦੂ ਹੀ ਰਹੀ ਹੈ ਔਰਦਾ ਕਿਆ ਕਰੀਓ ਬਿਸਵਾਲ ਖੜਾ ਵਿਚ ਇਹ ਸ਼ਬਦ ਕਿਉਂ ਲਿਆ ਹੈ ਕਬੀਰ ਦਾ ਵਿਚ ਗੁਰਬਾਣੀ ਦੇ ਕਹਿੰਦਾ ਔਰਦਾ ਕੀ ਕਰੋਗੇ ਉਹਦਾ ਤਾਂ ਧਰਮ ਤਿਆਰ ਹੋ ਨਹੀਂ ਸਕਦਾ ਹਾਂ ਸੁਣਨ ਦਾ ਜੇ ਮਸਲਮਾਨ ਹੋਏਗਾ ਮਸਲਮਾਨ ਤਾਂ ਸੁਨਨਤ ਕਰਦੇ ਹੋਗੇ ਔਰਦਾ ਕੀ ਕੀਤਾ ਤੁਸੀਂ ਹਿੰਦੂਆਂ ਨੇ ਆਪਣੀ ਕੀਤਾ ਔਰਦਾ ਕੋ ਜਿਹੜੀ ਉਡੀ ਪਾਇਆ ਕੇ ਸਦੇ ਰੇਜਮੀ ਵੈਫਟਾਈਜ਼ ਨਹੀਂ ਕਰਦੇ ਕੋਈ ਵਧੀ ਕਰਦਾ ਇਹ ਤਾਂ ਨਾਉਦਾਰੀਆਂ ਨੂੰ ਸ਼ੁਰੂ ਕਰ ਲਿਆ ਸੀ ਇਹ ਤਾਂ ਸਿਰਫ ਜਿਹੜਾ ਹੈ ਨਾ ਸਮਾਜਿਕ ਗੱਲ ਦੇ ਵਿੱਚ ਸਮਾਜਿਕ ਹੋ ਸਕਦਾ ਸਮਾਜਿਕ ਗੱਲ ਹੋਰ ਹੈ ਸਮਾਜ ਬਰਾਬਰੀ ਹੋਰ ਗੱਲ ਹੈ ਅਨਿਆਂ असल ਸਮਾਜ ਹੋ ਰਿਹਾ ਹੈ ਔਰ ਧਰਮ ਦਾ ਕੋਈ ਅਨਿਆਂ ਨਹੀਂ ਹੋ ਰਿਹਾ ਧਰਮ ਦਾ ਬਦਾਨ ਖੁੱਲੇ ਤੋਂ ਤਾਂ ਕੋਈ ਜਾਂਦਾ ਨਹੀਂ ਹੈ ਇਦੋਂ ਤਾਂ ਕੋਈ ਜਾਂਦਾ ਨਹੀਂ ਇਦੋਂ ਪਾਬੰਦੀ ਹੋ ਗਈ ਸੀ ਸਾਡੀ ਕੋਈ ਮੈਂ ਕਹਿੰਦਾ ਇਹ ਅਬਰ ਸਾਡਾ ਇੱਕ ਫੌਜ ਬਣ ਸੀ ਨਾ ਝਾ ਕੋ ਕੋਈ ਖਾਸ ਗੱਲ ਨਹੀਂ ਹੈ ਕਬੀਰ ਨੇ ਨਾ ਬਣ ਛ ਸੀ ਗੁਰੂਆਂ ਨੇ ਅਬਰ ਦੇ ਸੀ ਕੋਈ ਬਹੁਤ ਵੱਡੀ ਗੱਲ ਨਹੀਂ ਅਬਰ ਦੇ ਛਣਾ ਅਬਰ ਦਾ ਨਾਮ ਲਓ ਚਾਹੇ ਨਾ ਲਓ ਤਾਂ ਵੀ ਤੁਸੀਂ ਭਗਤ ਬਣ ਸਕਦੇ ਹੋ ਕਬੀਰ ਹੀ ਬਣ ਸਕਦੇ ਆ ਪਹਿਲਾਂ ਬਣੇ ਦੀ ਹੁਣ ਕਿਉਂ ਨਹੀਂ ਬਣ ਸਕਦੇ ਇਦੋਂ ਮੂੰਹ ਨਹੀਂ ਦਿੱਦਾ ਕੋਈ ਬਣ ਕੇ ਦਿਖਾਓ ਬਾਣੀ ਨੂੰ ਨਾ ਝਗੋਝ ਲੋ ਤੁਸੀਂ ਜਿਹੜੇ ਬੜੇ ਬੜੇ ਕਹਿੰਦੇ ਨੇ ਅਸੀਂ ਉੱਪਰ ਦੂਏ ਬਾੜ ਦੇ ਨੀ ਬਾਲ ਬੋਲ ਸਕਣੀ ਨਹੀਂ ਬੋਲ ਸਕਣੀ ਰਾ ਛਗਣ ਬਾਣੀ ਬਨ ਕੇ ਤਖੜ ਬਾੜੀ ਬਨ ਲਣ ਉਹ ਲਾ ਗਈ ਅਸੀਂ ਉਹਨੂੰ ਅਵਸਥਾ ਅਕਬੀਰ ਵਾਲੀ ਉਹ ਹੋ ਜੂਰ ਉਹ ਅਵਸਥਾ ਭਗਤਾਂ ਵਾਲੀ ਹੋ ਕੋਈ ਹਟਾਉਂਦਾ ਬਾਣੀ ਦਾ ਬਨਣ ਕੋਈ ਬਰਾਬਰੀ ਐ ਇਦਾਂ ਨਹੀਂ ਹੁੰਦੀ ਬਰਾਬਰੀ ਹੁੰਦੀ ਐ ਬਾਣੀ ਬਨ ਦੇ ਦੇਖੋ ਕਰਕੇ ਦਿਖਾਓ ਬਨ ਕੇ ਦਿਖਾਉਣ ਬਾਣੀ ਜੀ ਨੂੰ ਬਨਣੀ ਕੁਤੁਰੋ ਲੋਕ ਦਾ ਬਾਣੀ ਬੰਨਣ ਤੇ ਦੱਸੋ ਦਾ ਸਹੀ ਰੋਗ ਦਾ ਕੌਣ ਹੈ ਪੌੜਨਲ ਕੀ ਫਰਕ ਪੈਜੂ ਕਿੰਨਾ ਕਿੰਨਾ ਪੌੜ ਵਾਲੇ ਕੀ ਹੈ ਪੱਲੇ ਕਿਸੇ ਦੇ ਜਿਹੜੇ ਪੌੜ ਛਕੀ ਹੋਈ ਜੀ ਜੋ ਕੁਝ ਮਿਲਣਾ ਹੈ ਗੁਰਬਾਣੀ ਨੂੰ ਬੰਨਣ ਤੇ ਮਿਲਣਾ ਛਕੇ ਕੋਈ ਨਾ ਛਕੇ ਫਰਕ ਮਨ ਬਦਲਣਾ ਬਾਣੀ ਦਾ ਪਹਿਲਾਂ ਵੀ ਕੁਰਬਾਨੀ ਦਾ ਬਦਲਿਆ ਹੁਣ ਵੀ ਬਦਲਿਆ ਇਹਦਾ ਇੱਕ ਪੰਥ ਕਿਹਾ ਐ ਕੀ ਐ ਗੱਲ ਹੋਰ ਐ ਇਹਨਾਂ ਨੂੰ ਜ਼ੁਮਾਹਵਾਰੀ ਦਿੱਤੀ ਗਏ ਜਿਹੜੇ ਪਹਾੜਾਂ ਦੇ ਉੱਤੇ ਜ਼ੁਮਾਹਵਾਰੀ ਹੈ ਕੇਵਲ ਇਹ ਪੰਥ ਵਾਸਤੇ ਇਹਦੇ ਵਾਸਤੇ ਪ੍ਰਚਾਰ ਕਰਨਾ ਇਹਦਾ ਪ੍ਰਚਾਰ ਕਰਨਾ ਤੇ ਚੱਡਾ ਵਰਦਾਰ ਰਹਿਣਾ ਬਾਰ ਬਾਰ ਜਾਣਾ ਇਹਦੇ ਵਾਸਤੇ ਉਹਦਾ ਇਹਨੇ ਜ਼ੁਮਾਹਵਾਰੀ ਹੋਇਆ ਬਾਕੀ ਬੁਣਨ ਵਾਲੇ ਮਾਤੇ ਕੋਈ ਉਹ ਜਿਹੜੇ ਖبير ਪੰਥੀਏ ਨੇ ਕਿ ਉਹ ਪਹੁੰਚ ਨਹੀਂ ਸਕਦੇ। ਤੂ ਵੀਰ ਦੀ ਬਾਣੀ ਪੜ ਕੇ। ਰਵਿਦਾਸੀਏ ਨੇ ਉਹ ਪਹੁੰਚ ਨਹੀਂ ਸਕਦੇ। ਗੁਰਬਾਣੀ ਇਹੀ ਪੜਨੀ ਪਊਗੀ ਇਹੀ ਮੰਨੀ ਪਊਗੀ ਇਹ ਤਾਂ ਸ਼ਰਤ ਹੈ। ਫਾਲੋ ਨਾ ਲਓ ਇਹਦਾ ਕੋਈ ਸ਼ਰਤ ਨਹੀਂ ਦੇ। ਅਸੀਂ ਪਹਿਲਾਂ ਰੂਣਾ ਲਿਆ। ਅਸੀਂ ਕਹਿੰਨਾ ਗੁਰਬਾਣੀ ਸੁਣੋ। ਇਹਨੂੰ ਕਮਾਓ ਆਪਣਾ ਆਪ ਬਦਲੋ ਵੈਰੀ ਬਗਰ ਨਾ ਆਪੇ ਨਹੀਂ ਰਹੂਗਾ ਤੁਹਾਡਾ ਬਦਲਣਾ ਮਾਨ ਹੈ ਸਰੀਰ ਬਦਲਣਾ ਕੋਈ ਨਹੀਂ ਜੇ ਲੈ ਲੇ ਕਿਸੇ ਨੇ ਪਹੜ ਉਹ ਸੋਨੇ ਤੇ ਛੋਕ ਉਹ ਗੱਲ ਅਲੱਗ ਹੈ ਅਲੱਗ ਗੱਲ ਹੈ ਪਰ ਗੱਲ ਤਾਂ ਮਨ ਬਦਲਣਾ ਤਾਂ ਜੇ ਪਾਣੀ ਬਦਲੇ ਪਹਾੜ ਤਾਂ ਕੁਝ ਨਹੀਂ ਬਦਲੋ ਗੱਲ ਮਨ ਤਾਂ ਫੇਰ ਵੀ ਉਹੀ ਉੱਥੇ ਖੜੀ ਆ ਗੁਰਬਾਣੀ ਮੰਨੇ ਬਿਨਾਂ ਤਾਂ ਗੱਲ ਉੱਥੇ ਖੜੀ ਐ ਨਾ ਚਾਹੇ ਲੋ ਚਾਹੇ ਨਾ ਲੋ ਪਾਓ ਚਾਹੇ ਨਾ ਪਾਓ ਗੁਰਬਾਣੀ ਨੂੰ ਵੱਲੋਂ ਮੰਨੇ ਕੇ ਦਿਖਾਓ ਖੜੇ ਦਾ ਬੜੋ ਆ ਕੇ ਤਦੋਂ ਪਾਸ਼ਾ ਨੇ ਬਹੁਤ ਕੁਛ ਲੈ ਬਹੁਤ ਖੁਸ਼ ਆਊਗਾ ਇਹਦੇ ਤੇ ਇਹਦੇ ਚ ਗਾਹ ਬਹੁਤ ਕੁਛ ਆਊਗਾ ਸਾਰਾ ਰੱਦ ਵੀ ਕਰਤਾ ਉਹਨਾਂ ਨੇ ਜੇ ਪਾਉਣ ਦਿੱਤੀ ਐ ਵੇਖ ਦਿੱਤਾ ਰੱਦ ਵੀ ਕੀਤਾ ਹੋਇਆ ਆਪੇ ਕੇਵਲ ਕਰਮ ਜੇ ਕਰਮ ਦਿੱਤੇ ਨੇ ਤਾਂ ਰੱਦ ਵੀ ਕਰ ਕੇਵਲ ਕਰਮ ਭਰਮ ਸੇ ਚੀਨੋ ਜਿਹੜੇ ਕਹਿੰਦੇ ਕਰਮ ਦਾ ਅਸੀਂ ਜੇ ਕੱਲੇ ਕੇਵਲ ਨੇ ਨਾ ਕਰਮ ਨਾਮ ਹੈ ਦੀ ਪ੍ਰੈਕਟੀਕਲ ਹੈ ਦੀ ਗੁਰਬਾਣੀ ਦਾ ਫਿਰੇ ਭਰਮ ਨੇ ਪੰਡਿਕਾ ਕਰਮਿਤਾਂਨ ਕਰ ਲੈ ਸਵੇਰੇ ਉੱਠਦੇ ਵੀ ਆ ਪੰਜਵਾਨੀ ਦਾ ਬਾਠ ਵੀ ਕਰਦੇ ਆ ਉਹ ਬਨਦੇ ਹੋ ਨਹੀਂ ਫਿਰੇ ਭਰਮ ਤੁਹਾਨੂੰ ਸਿੱਖੀ ਦਾ ਤੇ ਸੇਖੋਂ ਦਾ ਪਰ ਪੜ ਲਿਆ ਤੁਸੀਂ ਕੇਵਲ ਕਰਮ ਪਰਮ ਸੇ ਚੀਨੋ ਧਰਮ ਕਰਮ ਅਨੁਰਾਗੋ ਅਨੁਰਾਗੋ ਉੱਤੇ ਪੌੜੀ ਲੋੜ ਨਹੀਂ ਹੈ ਧਰਮ ਕਰਮ ਦੇ ਵਿੱਚ ਉਹ ਕਰੋ ਕਰਨ ਵਾਲਾ ਕੰਮ ਉਹ ਬੁੱਧੂ ਸਾਹ ਪਾਸ ਨਹੀਂ ਹੋਇਆ ਉਹ ਕਹਿੰਦਾ ਮੈਨੂੰ ਪੌਣ ਦਿਓ ਕਹਿੰਦਾ ਤੈਨੂੰ ਲੋੜ ਨਹੀਂ ਤੈਨੂੰ ਕੀ ਹੋਇਆ ਪੌਣ ਕਾਇ ਲੈਣੀ ਤੇ ਤੈਨੂੰ ਕਹਦਾ ਪਰਮ ਇਹ ਤਾਂ ਕਿ ਜ਼ਿੰਮੇਵਾਰੀ ਹੈ ਅਲੱਗ ਗੱਲ ਹੈ ਹੋਰ ਹੈ ਕਿਹੜਾ ਇਹਨਾਂ ਨੇ ਸਭ ਚੀਨੀ ਆਈ ਵੀ ਗੱਲ ਕੀ ਹੈ ਸਮਝਦਾ ਤਾਂ ਆਵੇ ਸਮਝਣ ਦਾ ਟਾਈਮ ਹੋਵੇ ਸਮਝਣ ਦੀ ਕੋਸ਼ਿਸ਼ ਕੀਤੀ ਹੋਵੇ ਇਹ ਗੱਲ ਹੋਰ ਹੈ ਉਹ ਗੱਲ ਹੋਰ ਹੈ ਗੁਰਬਾਣੀ ਕੋਈ ਮੰਨ ਲਵੇ ਕੋਈ ਫਰਕ ਨਹੀਂ ਪੈਂਦਾ ਕਿਸੇ ਦੇਸਾਰਣੇ ਵਾਲਾ ਹੋਵੇ ਮੰਨ ਕੇ ਤਾਂ ਦੇਖੇ ਫਿਰ ਪਤਾ ਲੱਗੂਗਾ ਕਿਹੇ ਸਾਪੀ ਰੱਖ ਲੂ ਉਹ ਕਹਿਣ ਦੀ ਲੋੜ ਨਹੀਂ ਉਨੇ ਰਖਣ ਨੇ ਆਪੇ ਸਭ ਕੁਆਪੇ ਛੱਡ ਦੇਣਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਜਿੱਦਣ ਮੰਨੂਗਾ ਉਹਨੇ ਆਪੇ ਬਦਲ ਜਾਣਾ ਪਰ ਅਸੀਂ ਉਸ ਕਿਸ ਹੋਰ ਗੱਲਾਂ ਦੇ ਜਿਆਦਾ ਕਰਦੇ ਹਾਂ ਉਹਨਾਂ ਦਾ ਪਾਈਆ ਦੇ ਸੁਣ ਲੈ ਸਮਝ ਲੈ ਇਹਨੂੰ ਮੰਨ ਲੈ ਤਾਂ ਮਨਵਦਰ ਲੱਗੇ ਆਪੇ ਬਦਲ ਜਾਣਗੇ ਸਰੀਰ ਦੀ ਸੁਧ-ਮੁਧੇ ਨਹੀਂ ਰਣੀ ਜਦੋਂ ਬਾਜਾਂ ਦਾ ਰਹੀ ਬੁੱਧ ਕੀ ਨਾ ਬੁੱਧ ਜਿਹੜੇ ਬੰਦੇ ਨੂੰ ਸੁਧ ਬੁੱਧ ਨਹੀਂ ਰਹਿੰਦੀ ਉਹਨੂੰ ਸਰੀਰ ਦਾ ਪਤਾ ਰਹਿੰਦਾ ਫੇ ਸ਼ੇਪ ਕਰਾਉਂਦੀਆਂ ਗੱਲਾਂ ਉਹ ਨਹੀਂ ਕਰਉਂਦੀ ਇਹਦਾ ਉਦੋਂ ਤੱਕ ਰਹਿੰਦੀ ਹੈ ਜਿੰਨਾ ਚਿਰ ਸਰੀਰ ਨਾਲ ਜੁੜਿਆ ਹੋਇਆ ਹੈ ਜੇ ਕੀ ਸੁਧ ਬੁੱਧ ਕੀ ਬੁੱਧੇ ਨਹੀਂ ਰਹੀ ਸੰਸਾਰੀ ਇਹ ਉਹ ਅਵਸਥਾ ਹੈ ਪਤਾ ਰਹਿੰਦਾ ਵੀ ਕਕਾਰ ਕਿੱਥੇ ਨੇ ਕਿੱਥੇ ਨਹੀਂ ਇਹ ਉਹਨਾਂ ਜਿਹੜੇ ਪਹਿਲਾਂ-ਪਹਿਲਾਂ ਦੀਆਂ ਗੱਲਾਂ ਪ੍ਰਾਇਮਰੀ ਸਕੂਲ ਵਾਲੀਆਂ ਗੱਲਾਂ ਨੇ ਇਹ ਪਹਿਲਾਂ-ਪਹਿਲਾਂ ਦੀਆਂ ਗੱਲਾਂ ਗਾਂ ਰਿਆਂ ਨੇ <coughs> ब्रह्मा बिशन अंत नहीं पायो ब्रह्मा बिशन सूत्र नहीं पायो ब्रह्मा बिशन इनाने अंत नहीं पाया ब्रह्मा बिशनू नु पूजदे ने ना इनानु राय नहीं मिले अंत दा मतलब है इनानु रास्ता ही नहीं मिले और जे होए ਨੇ ਤੇ ਨੇ ਤੇ ਮੁਖ ਚਾਰ ਬਤਾਇਓ ਆ ਜਿਹੜਾ ਇਹਨਾਂ ਦਾ ਬ੍ਰਹਮਾ ਹੈਗਾ ਆਚਾਰ ਮੁਖ ਕਹਿੰਦੇ ਨੇ ਬ੍ਰਹਮਾ ਦੇ ਚਾਰ ਮੁਖ ਨੇ ਚਾਰ ਪ੍ਰਕਾਰ ਦਾ ਗਿਆਨ ਹੈ ਬ੍ਰਹਮਾ ਕੋਲ ਇੱਕ ਮੁਖ ਚ ਇੱਕ ਪ੍ਰਕਾਰ ਦਾ ਗਿਆਨ ਨਿਕਲਦਾ ਨੇ ਤੇ ਨੇ ਤੇ ਉਹ ਵੀ ਬੇਅੰਤ ਬੇਅੰਤ ਕਹਿ ਕੇ ਅਖੀਰ ਹੱਥ ਖੜੇ ਕਰਦੇ ਕਿਸੇ ਨੇ ਵੀ ਅੰਤ ਪਾਇਆ ਅਸੀਂ ਵੀ ਇਹੀ ਕਹਿ ਰਹੇ ਅੰਤ ਪਾ ਨਹੀਂ ਸਕਦਾ ਕੋਈ ਉਹ ਵੀ ਕਹਿੰਦੇ ਨੇ ਅੰਤ ਨਹੀਂ ਪਾਇਆ ਅਸੀਂ ਵੀ ਕਹਿੰਦੇ ਕੋਈ ਅਸੀਂ ਕਿਹੜਾ ਪਾ ਲਿਆ ਉਹ ਤਾਂ ਕਿਸੇ ਨੂੰ ਨੀ ਪਾਇਆ ਇਹਦਾ ਅੰਤ ਹੈ ਹੋਰੀ ਬੇਅੰਤ ਹਾਂ ਬੇਦਾਂਤੀ ਜਿਹੜੇ ਨੇ ਉਹ ਫਸ ਗਏ ਕਹਿ ਕੇ ਉਹਨਾਂ ਨੇ ਅੰਤ ਲਾ ਲਿਆ ਵਿਜਰਾਨ ਬੇਦਾਂਤ ਬੇਦਾਂਤ ਕਿਹਦਾ ਅੰਤ ਹੁੰਦਾ ਕੋਈ ਉਹ ਗਿਆਨ ਗੁਰੂ ਆੰਤ ਕਿਵੇਂ ਉਹਦਾ ਜਿਹੜੇ ਗਿਆਨ ਦਾ ਅੰਤ ਹੈ ਨਾਸੰਤ ਗਿਆਨ ਆ ਉਹ ਜਿਹੜੇ ਗਿਆਨ ਦਾ ਅੰਤ ਹੈ ਉਸ ਬੁੱਧੀ ਦਾ ਵੀ ਅੰਤ ਹੈ ਗਿਆਨ ਵਾਲੀ ਬੁੱਧੀ ਦਾ ਜਿਹੜੀ ਬੁੱਧੀ ਮਰ ਗਈ ਉਹ ਬੰਦਾ ਮਰ ਗਿਆ ਮਰਦਾ ਕੀ ਹੈ ਮਰਦੀ ਬੁੱਧੀ ਹੈ ਬੁੱਧਰ ਗਿਆਨੀ ਹੈ ਖਾਲਸਾ ਉਹ ਇਦਾਂ ਚੰਗਾ ਤਾਂ ਆਯੁਰਵੈਦ ਕਾਲੇ ਕਹਿੰਦੇ ਨੇ ਕਹਿੰਦੇ ਜਦ ਰੋਗੀ ਕੋ ਕਾਲ ਹੈ ਪਹਿਲਾਂ ਉਸ ਬੁੱਧ ਬਣਸਾ ਕਾਲ ਜਾਂ ਘਰਸਦਾ ਹੈ ਬੁੱਧਾ ਨਾਸ ਕਰਦਾ ਹੈ ਹੋਰ ਕੁਛ ਨਹੀਂ ਨਾਸ ਕਰਦਾ ਜਾਂ ਬੁੱਧਾ ਨਾਸ ਹੁੰਦਾ ਹੈ بے ਹੋਸ਼ ਹੋ ਜਾਂਦਾ ਹੈ ਬੇਸੁਰਤ ਹੋ ਜਾਂਦਾ ਕਹਿੰਦੇ ਹੁਣ ਕੀ ਹੋਇਆ ਹੁਣ ਉਹਦੀ ਅਕਲ ਨਹੀਂ ਕੰਮ ਕਰਦੀ ਬੇਸੁਰਤ ਹੋ ਗਿਆ ਅਕਲ ਪਹਿਲਾਂ ਹੀ ਕੰਮ ਕਰਨਾ ਛੱਡ ਜਾਂਦੀ ਹੈ ਜਿਹੜੀ ਅਕਲ ਮੌਤ ਤੋਂ ਪਹਿਲਾਂ ਕੰਮ ਕਰਨਾ ਔੜ ਗਈ ਸਮਝੋ ਮਰ ਗਿਆ ਉਹ ਉਹ ਕਿਹੜੀ ਅਕਲ ਸੀ ਇਹ ਦੇਖੋ ਅੰਤਾਲਾ ਗਿਆਨ ਸੀ ਜਿਹੜੀ ਕਹਿੰਦੀ ਬੇਦਾਲਤ ਉਹੀ ਅਕਲ ਮਰਦੀ ਹੈ ਪਹਿਲਾਂ ਅੰਤ ਕੋ ਪਾਵਣ ਜੋਗ ਹੈ ਆਏ ਸੋ ਗਵਾਏ ਗਵਾਏ ਉਹ ਬੇਦਾਲਤੀ ਨੇ ਜਿਹੜੇ ਇਹਨਾਂ ਨੂੰ ਇਹ ਕਿਹਾ ਹੈ ਅੰਤ ਕੋ ਪਾਵਣ ਜੋਗ ਹੈ ਇਹ ਅੰਤ ਪਾਉਣ ਚੱਲੇ ਸੀਗੇ ਆਏ ਸੋ ਗਵਾਏ ਕੋਟ ਇੰਦਰ ਉਪੇਂਦਰ ਬਣਾਏ ਉਹ ਕੋਟ ਇੰਦਰ ਉਪੇਂਦਰ ਬਣਾਏ ਕਰੋਨਾ ਇੰਦਰ ਬਣਾਏ ਵੱਡਾ ਰਾਜਾ ਜਿਹੜਾ ਹੁੰਦਾ ਇੱਕ ਉਹਨੇ ਇੰਦਰ ਕਹਿੰਦੇ ਨੇ ਉਪਿੰਦਰ ਹੁੰਦਾ ਛੋਟੇ ਰਾਜੇ ਕਰੋੜਾਂ ਹੀ ਬਣਾਏ ਨੇ ਇੱਥੇ ਇੱਕ ਇੰਦਰ ਦੀ ਗੱਲ ਕਰਦੇ ਨੇ ਉੱਥੇ ਕਰੋੜਾਂ ਦੀ ਗੱਲ ਕੀਤੀ ਹੋਈ ਹੈ ਉਹਨੇ ਤਾਂ ਕਰੋੜਾਂ ਹੀ ਬਣਾਏ ਨੇ ਹਾਂਜੀ ਉਪਾਏ ਖਪਾਏ ਬ੍ਰਹਮਾ ਅਰੂਦਰ ਜਿਹੜਾ ਇਹਨਾਂ ਦਾ ਸ਼ਿਵ ਜੀ ਹੈ ਪਤਾ ਨਹੀਂ ਕਿੰਨੇ ਕੁ ਪੈਦਾ ਕਰਕੇ ਕਿੰਨੇ ਖਪਾਉਂਦੇ ਹੁਣ ਇਹ ਤਾਂ ਇੱਕ ਬੰਦੇ ਨੇ ਬ੍ਰਹਮਾ ਨੂੰ ਵੀ ਅਰੂਦਰ ਨੂੰ ਵੀ ਇਹ ਇਹ ਕਿਹੜੇ ਪੰਨਿਆਂ ਦਾ ਲਿਖਿਆ ਹੈ ਇਹ ਐਸ ਤਰੀਕੇ ਦਾ ਕਥਾ ਹੈ ਜੇ ਆਰਐਸਐਸ ਵਾਲਾ ਨੂੰ ਕਹਿੰਦੇ ਮੰਨਣਗੇ ਉਹ ਆਉਣ ਕਥਾ ਸੁਣਨ ਫਿਰੇ ਦੀ ਕੰਬ ਜਾਣਗੇ ਥੱਲੇ ਤੱਕ ਬਰਮਾ ਰੁੱਧਰ ਉਪਾਇ ਖਪਾਏ ਇਹਨਾਂ ਨੂੰ ਕੀ ਪਤਾ ਬੂਰਖ ਨੂੰ ਵੀ ਕਹਦੇ ਆਰਐਸਐਸ ਵਾਲੇ ਆਰਐਸਐਸ ਵਾਲਿਆਂ ਦੇ ਏਜੰਟ ਕਹਿੰਦੇ ਜਿਹੜੇ ਇਹਨੂੰ ਮੰਨਣ ਵਾਲੇ ਨੇ ਮੰਨਣ ਵਾਲਿਆਂ ਨੂੰ ਮੰਨਣ ਵਾਲਿਆਂ ਨੂੰ ਕਹਿੰਦੇ ਨੇ ਐ ਕਹਿੰਦੇ ਵੀ ਅਸੀਂ ਆਪਾਂ ਬਰਮਾ ਰੁੰਦਰੋ ਪਾਏ ਖਪਾਏ ਪਤਾ ਨਹੀਂ ਕਿੰਨੇ ਬਰਮਾ ਰੁੰਦਰੋ ਪਾ ਝੂਠੀਆਂ ਨੇ ਤੁਹਾਡੀਆਂ ਕਹਾਣੀਆਂ ਸਿਮਰਤ ਬੇਦ ਪੁਰਾਣ ਪੁਕਾਰਣ ਪੋਧੀਆਂ ਨਾਂ ਬਰਾਂ ਸਭ ਕੂੜ ਗਾਲੀਓਂ ਉਹ ਛੀਆਂ ਗੱਲਾਂ ਨੇ ਕਹਿੰਦੇ ਹੋ ਜੇ ਇੱਥੇ ਤਾਂ ਕਰੋੜਾ ਹੀ ਨੇ ਇਹ ਗੱਲਾਂ ਸੀਆਂ ਜਿੱਥੇ ਕਲੇਸ਼ ਪਿਆ ਜਿਆਦਾ ਉਹ ਲੈ ਕੇ ਗਏ ਨੇ ਨੋਵੇ ਪਾਸ 6ਵੇਂ ਪਾਸਾ ਨੂੰ ਕੀਰਤਪੁਰ ਮੈਂ ਤੁਸੀ ਸਾਡੇ ਏਰੀਆ ਚ ਰਹੋ ਬਾਈ ਧਾਰੀ ਰਾਜੇ ਬਾਈ ਧਾਰੀ ਰਾਜੇ ਇਹਨਾਂ ਦੇ ਏਰੀਆ ਚ ਨਾ ਰਹੋ ਪੂਸਨ ਬੋਨਾ ਦੇ ਚ ਰੋਜ਼ ਕਲੇ ਸੁਧਦਾ ਉਹ ਕੀਰਤਪੁਰ ਉਹਨਾਂ ਨੇ ਆਪਣਾ ਰਹਿਣ ਆਸਾਨ ਹੈ ਉਹਦੇ ਬਾਅਦ ਕੋਈ ਯੰਗ ਨਹੀਂ ਹੋਈ ਗੁਰੂ ਘਰ ਦੀ ਫਿਰ ਨੋਵੇ ਪਾਸਾਂ ਪਰੇ ਚਲੇ ਗਏ ਥੋੜਾ ਜਿਹਾ ਕਉਰੇ ਦੂਜਾ ਦਾ ਕਬਜ਼ਾ ਹੋ ਗਿਆ ਨਾ ਫਿਰ ਤਿਰਵਲ ਦਾ ਉਹ ਤਿਰਵਲ ਸੀ ਉਹ ਆਪਣੇ ਭਰੇ ਅਨੰਤਪੁਰ ਸਾਹ ਉਹਨਾਂ ਨੇ ਦੋਵੇਂ ਪਾਸ਼ਾ ਨੇ ਉਹ ਬਣਾ ਲਿਆ ਉੱਥੇ ਬਣਾ ਲਿਆ ਥੋੜਾ ਜਿਹਾ ਪਰੇ ਏਰੀਆ ਦਾ ਨਹੀਂ ਛੜਿਆ ਰਾਜਾ ਤਾਂ ਉਹੀ ਹੈ ਉਸ ਦਾ ਏਰੀਆ ਰਸਤਾ ਉਹੀ ਹੈ ਚਲ ਉੱਥੇ ਬਣਾ ਲਿਆ ਉੱਥੇ ਰਹਿੰਦੇ ਰਹੇ ਉਹਨਾਂ ਨੇ ਵੀ ਕੋਈ ਕਲੇਸ਼ ਨਹੀਂ ਪਿਆ ਸਗੋ ਉਹਨਾਂ ਨੂੰ ਇਥੇ ਆ ਕੇ ਦੁਆਨੇ ਆ ਕੇ ਕਿਹਾ ਵੀ ਮਰ ਤੁਸੀਂ ਧਰਮ ਬਚਾਓ ਸਾਡਾ ਨੰਦੂਰ ਸਾਹਿਬੇ ਕਿਹਾ ਉਹ ਉਰੇ ਲੱਗੇ ਚਲ ਚਲੋ ਉਸ ਸ਼ੀਧੀ ਵੀ ਹੋਗੀ ਨਸਮ ਬਾਜਾ ਨਾ ਕੋਈ ਸ਼ੀਧੀ ਗੱਲ ਦਾ ਆ ਜਿਹੜਾ ਆ ਲਿਖਿਆ ਇਹ ਦਾ ਕਲੇਸ਼ ਪਿਆ ਬਾਈ ਦਾ ਰਾਜਾ ਨਾਲ ਉਹਨਾਂ ਦਾ ਧਰਮ ਇਹ ਕੁਝ ਹੋਰ ਲਿਖ ਰਹੇ ਨੇ ਆ ਕਲੇਸ਼ ਪਿਆ ਇਹ ਗੱਲਾਂ ਦਾ ਇਹਨਾਂ ਨੂੰ ਕੀ ਪਤਾ ਡੇ ਬੂਰਖ ਦੇ ਇਹ ਦੱਸਣ ਕਿਹੜੀ ਗੱਲ ਦਾ ਕਲੇਸ਼ ਪਿਆ ਐਕਸਪਲੇਨ ਕਰ ਕਲੇਸ਼ ਕਿਹੜੀ ਗੱਲ ਦਾ ਪਿਆ ਦਾ ਰਾਜਾ ਨਾਲ ਕਿਉਂ ਕਲੇਸ਼ ਪਿਆ ਉਹ ਕਿਹੜੀ ਗੱਲ ਸੀ ਮੁਸਲਮਾਨਾਂ ਨਾਲ ਕੋਈ ਕਲੇਸ਼ ਨਹੀਂ ਸੀ ਉੱਤੇ ਮੁਸਲਮਾਨ ਦਾ ਬਜ਼ਾਰ ਨੂੰ ਆਏ ਨੇ ਭੇਜੇ ਨੇ ਸੈਟਲ ने ਨੇ ਭੇਜਣੇ ਸੀ ਉਹਦਾ ਇਹਨਾਂ ਨੇ ਬੰਗਿਆ ਵੀ ਅਸੀਂ ਤੁਹਾਡੇ ਅਧੀਨ ਆ ਸਾਡੀ ਸਪੋਰਟ ਕਰੋ ਆ ਜੀ ਗ੍ਰੰਥ ਜਿਹੜਾ ਲਿਖਿਆ ਇਹਨਾਂ ਕੋਲੇ ਪਾਇਆ ਸਾਰਾ ਕਿਉਂ ਲਿਖਾ ਪਿਆ ਜਿਨ੍ਹਾਂ ਨੇ ਸ਼ਹਾਦਤ ਦੋਈ ਇਹ ਮੰਨ ਕੇ ਵੀ ਉਹਨਾਂ ਜੋ ਕਿਰਪਾ ਰਾਮ ਰਹੇਗਾ ਕੱਲਾ ਬਾਕੀ ਪਿਛੇ ੜ ਗੇ ਸ਼ਾਤ ਦੁਆਤੀ ਕਿਰਪਾ ਰਾਮ ਨੇ ਲਿਖਾਇਆ ਇਹ ਸਾਰਾ ਯਾ ਲਿਖੋ ਉਹਨਾਂ ਦੀ ਪੂਰੀ ਪੂਰੀ ਤੇ ਸਿੱਧਾਈ ਛੱਡੋ ਬਹੁਤ ਕੁਝ ਲਿਖਿਆ ਹੋਇਆ ਹੈ ਆਦਿ ਗੁਰੂ ਗ੍ਰੰਥ ਬਹੁਤ ਕੁਝ ਲਿਖਿਆ ਹੋਇਆ ਇੱਧਰ ਸਿੱਧਾ ਤੁਸੀਂ ਕਰੋ ਡਾਇਰੈਕਟ ਅਟੈਕ ਕਰਤਾ ਉਹਨਾਂ ਨੇ ਆ ਡਾਇਰੈਕਟ ਅਟੈਕ ਹੈ ਇਹ ਉਹ ਇਨਡਾਇਰੈਕਟ ਅਟੈਕ ਹੈ ਉਥੇ ਆਦੀ ਬਣ ਚੋ ਏ ਡਾਇਰੈਕਟ ਐਕਸ਼ਨ ਐ ਤੇ ਇਹਨੂੰ ਬੜਾ ਪਤਾ ਕੀ ਗੱਲ ਹੈ ਅਨੇ ਅੰਗੇ ਸਕਨੋ ਦੇਖਣ ਨਹੀਂ ਚਾਹੁੰਦਾ ਕੋਈ ਬਾਣੇ ਵਾਲਿਆਂ ਨੂੰ ਆਹੋ ਆ ਦੂਰੇ ਨੇ ਜਿਹੜੇ ਇਹ ਕਿਉਂ ਖਿਚੜੀ ਹੋਏ ਰਹਿੰਦੇ ਨੇ ਥੱਲੇ ਗੱਲ ਹੀ ਇਹਨਾਂ ਨੂੰ ਕੋਈ ਦੇਖਣ ਨਹੀਂ ਚਾਹੁੰਦਾ ਕਿਉਂ ਐਂਦੇ ਪਰਾਂਦਾਂ ਦੁਰਦੋਰ ਐ ਕਿਤੋਂ ਗੱਲ ਚੱਲਦੀ ਐ ਕਿਉਂ ਚੱਲਦੀ ਐ ਸਾਨੂੰ ਤਾਂ ਪਤਾ ਹੀ ਆ ਸਾਨੂੰ ਕੋ ਪਿਆ ਹੈ ਆ ਜਿਹੜਾ ਇਹਨਾਂ ਦਾ ਧਰਮ ਨਾਲ ਸੰਬੰਧੇ ਕੋਈ ਨਹੀਂ ਡੁਗਡੂਗੀ ਹੋਈ ਵਜਾਈ ਜਾਂਦੇ ਵੇ ਵਸਨ ਵੇ ਨਾ ਕੋਈ ਲੈਣ ਨਾ ਦੇਣ ਦਾ ਧਰਮ ਨਾਲ ਸੰਬੰਧ ਲੋਕਾਂ ਦੇ ਵਿੱਚ ਐਸਾ ਖੇਲ ਲਚਾਇਆ ਹੋਇਆ ਉਹਨੇ ਚਤਰਦੰਸ ਦਾ 14 ਲੋਕਾਂ 'ਚ ਸਾਰਾ ਖੇਲ ਉਹਦਾ ਹੀ ਲਚਾਇਆ ਹੋਇਆ ਹੁਕਮਦਈ ਰਖੇ ਲਚਾਇਆ ਹੋਇਆ ਆਦ ਪੁਰਖ ਦਾ ਖੇਲ ਹੈ ਇਹ ਅਕਾਲ ਦਾ ਅਕਾਲ ਦਾ ਬਹਰ ਆਪ ਹੀ ਬੀਜ ਮਲਾਇਓ ਬਸ ਜਿਹੜਾ ਜਰ ਖੇਲ ਖੇਲਦਾ ਵਾਬਕ ਉਹ ਬੁਦਾਰੀ ਵਾਲੇ ਤਮਾਸ਼ੇ ਵਾਲੀ ਗੱਲ ਹੈ ਬਾਜੀਗਰ ਡੰਕ বাজਾਈ ਸਭ ਖਲਕ ਤਮਾਸ਼ੇ ਆਈ ਬਾਜੀਗਰ ਸੌਂਗ ਸਕੇਲਾ ਆਪਣੇ ਕੋਲ ਰਵੇ ਆਪਣੇ ਰੰਗ ਰਵੇ ਆਪਣੇ ਰੰਗ ਰਵੇ ਇਕੱਲਾ ਆ ਨਾ ਬਹਰ ਆਪ ਹੀ ਬੀਜ ਮਲਾਇਓ ਕਹਿੰਦੇ ਫੇਰ ਆਪਣੀ ਉਸੇ ਥੈਲੀ ਚ ਪਾ ਲੈਂਦਾ ਸਭ ਕੁਝ ਇਕੱਠਾ ਕਰਕੇ ਮਦਾਰੀ ਦੀ ਥੈਲੀ ਜੋ ਬਾਹਰ ਕੱਢ ਦਿੰਦਾ ਪਹਿਲਾਂ ਸਭ ਕੁਝ ਆ ਬਹੁਤ ਕੁ ਸਾਰਾ ਮਦਾਰੀ ਦੀ ਝੋਲੀ ਚੋਂ ਨਿਕਲਿਆ ਆ ਫਿਰ ਆਪਣਾ ਮਦਾਰੀ ਇਕੱਠਾ ਕਰ ਲੈਂਦਾ ਕੇ ਆ ਲੈਣ ਦਾਣਵ ਦੇਵ ਫਨਿੰਦ ਅਪਾਰਾ ਦਾਣਵ ਦੇਵ ਫਨਿੰਦ ਅਪਾਰਾ ਇਹਨਾਂ ਦਾ ਛੇਸ਼ਨਾਗ ਫਨਿੰਦ ਕੋਈ ਆ ਅਪਾਰਾ ਹੀ ਨੇ ਕਹਿੰਦੇ ਇੱਥੇ ਪਤਾ ਹੀ ਨਹੀਂ ਕਿਨੇ ਛੇਸ਼ਨਾਗ ਨੇ ਕਿੰਨੇ ਦਾਣਵ ਨੇ ਕਿੰਨੇ ਦੇਵ ਨੇ ਅਪਾਰਾ ਅਣਗਿਣਤ ਹੰ ਗੰਧਾਰਬ ਜਚ ਰਚੇ ਸੁਭਚਾਰਾ ਗੰਧਾਰਬ ਜਿਹੜੇ ਰਾਗੀ ਨੇ ਵਜਾਉਣ ਵਾਲੇ ਨੇ ਗੰਧਾਰਬ ਉਹਦੇ ਨੇ ਜਿਹੜੇ ਸਾਜ਼ ਵਜਾਉਂਦੇ ਨੇ ਜਚ ਨੇ ਜਿਹੜੇ ਗਾਉਣ ਵਾਲੇ ਆ ਨਚਣ ਵਾਲੇ ਨੇ ਰਚੇ ਬਥੇਰੇ ਰਚੇ ਸੁਭਚਾਰਾ ਉਹ ਸ਼ੋਭਾ ਬਾਣੀ ਕੋ ਦੇ ਹੁੰਦੇ ਸੀ ਪਹਿਲਾਂ ਦੇਵਤਿਆਂ ਦੇ ਆ ਜਿਹੜੇ ਨਾ ਕੀਰਤ ਜਿਵੇਂ ਆਪਾਂ ਕਰਦੇ ਆ ਇਹੋ ਜਿਹਾ ਕੁਛ ਕਰਦੇ ਸੀ ਉਹ ਉਸ ਵੇਲੇ ਜਿਵੇਂ ਆਪਾਂ ਕੀਰਤਨ ਕਰਦੇ ਆ ਨਾ ਇਹੋ ਜਿਹਾ ਕੁਛ ਕਰਦੇ ਸੀ ਉਹ ਵੀ ਭੂਤ ਆਪ ਭਵੇਖਾ ਭਵਾਨ ਕਹਾਣੀ ਭੂਤ ਭਵੇਖਤ ਭਵਾਨ ਕਹਾਣੀ ਭੂਤ ਭਵੇਖਾ ਭਵਾਨ ਕਹਾਣੀ ਤਿੰਨ ਲੋਕ ਤਿੰਨ ਕਾਲ ਹੋ ਗਏ ਭੂਤ ਭਵੇਖਰ ਭਵਾਨ ਤਿੰਨੇ ਹੋਏ ਚੌਥਾ ਕਿੱਥੇ ਗਿਆ ਕਾਲ ਤੇ ਦੇ ਹੁੰਦੇ ਨੇ ਤੇਨੇ ਲੋਕ ਨੇ ਉਹੜਾ ਹਾਦ ਸੱਚਾ ਨਾ ਉਹ ਪਰੇ ਐ ਨਾ ਤੇ ਜੋ ਗਾਦ ਸੱਚ ਜੁਗ ਤੇ ਨੇ ਚਾਰ ਜੁਗ ਉਹ ਦੇਈ ਨਹੀਂ ਉਹ ਤਾਂ ਬਖਤ ਭਵਾਨ ਤਾਂ ਗਾਇਤਾ ਵਿੱਚ ਜੁਗ ਦਾ ਤੇ ਨੇ ਜੇ ਮਾਇਆ ਦਾ ਜੁਗ ਨੇ ਜਾਂ ਮਾਇਆ ਦੀ ਵਿੱਚ ਜੁਗ ਨਹੀਂ ਹੁੰਦਾ ਕੋਈ ਮਾਇਆ ਜੇ ਕਾਲ ਹੁੰਦੇ ਨੇ ਮਾਇਆ ਤੇ ਜਦ ਮਾਇਆ ਨਹੀਂ ਹੁੰਦੀ ਫਿਰ ਕਾਲ ਵੀ ਨਹੀਂ ਹੁੰਦਾ ਕੋਈ ਮਾਇਆ ਦੇ ਵਾਚ ਚੌਥਾ ਕਾਲ ਹੁਣ ਵੀ ਹੈਗਾ ਰੇਂਦਾ ਹੀ ਉਹ ਤਾਂ ਹਮੇਸ਼ਾ ਹੀ ਰਹਿੰਦਾ ਹੈ ਚੌਥਾ ਕਾਲ ਹੈ ਤਾਂ ਸਭ ਕਰਦਾ ਕਾਲ ਹੈ ਚੌਥਾ ਕਾਲ ਹੈ ਤਾਂ ਮਹਾ ਕਾਲ ਚੌਥਾ ਕਾਲ ਹੈ ਤਾਂ ਮਹਾ ਹੈ ਉਹ ਅਕਾਲ ਵੀ ਹੈ ਖਾਲ ਵੀ ਹੈ ਉਹ ਚੌਥਾ ਕਾਲ ਦਾ ਸਾਰਿਆਂ ਦਾ ਫਾਇਦਾ ਕਰਨ ਵਾਲਾ ਸਾਰਿਆਂ ਦਾ ਸਭ ਕੋ ਕਾਲ ਸਭਨ ਕੋ ਕਰਤਾ ਹੀ ਤਾਂ ਚੌਥਾ ਕਾਲ ਹੈ ਇਹ ਉਹਨੂੰ ਵੀ ਮਾਇਆ ਜੇ ਬੜੀ ਬੈਠੇ ਨੇ ਜੇ ਮਾਇਆ ਜੇ ਨਾ ਵੜਦੇ ਤੇ ਉਥੇ ਕਾਲ ਦਾ ਜਵਾਬ ਕਵੇਂ ਦਿੰਦੇ ਜਦ ਪਡਤ ਨੇ ਬਾੜ ਪਾੜੀਆ ਚੌਥਾ ਕਾਲ ਮਾਇਆ ਜਿ ਵੜ ਲਿਆ ਬਾੜ ਘੇ ਮੇ ਦਿੰਦਾ ਚੌਥਾ ਕਾਲ ਮਾਇਆ ਜਿ ਪਡਤ ਨੇ ਤਾਂ ਵੜਿਆ ਫਿਰ ਪਡਤ ਇਹ ਦੱਸਿਆ ਜਦ ਮਹਾ ਆ ਜਾਂਦੀ ਹੈ ਜਿਹੜਾ ਕਹਿਆ ਵੀ ਅਰਬਤ ਨਰਬਤ ਤੰਦੂਕਾਰਾ ਫਿਰ ਪੰਜਵਾਂ ਕਾਲ ਹੋਇਆ ਨਾ ਜਦ ਸੰਸਾਰ ਨਹੀਂ ਹੁੰਦਾ ਰਚਨਾ ਨਹੀਂ ਹੁੰਦੀ ਉਹ ਜਿਹੜਾ ਸਮਾਂ ਹੈ ਅਰਬਾਂ ਖਰਬਾਂ ਸਾਲਾਂ ਦਾ ਉਹ ਫਿਰ ਪੰਜਵਾਂ ਕਾਲ ਹੋਇਆ ਨਾ ਚਾਰ ਕਾਲ ਤਾਂ ਵਾਝੇ ਹੋਗੇ ਵਾਝਾ ਤਾਂ ਖਤਮ ਹੋ ਗਈ ਫਿਰ ਕਾਲ ਚਾਰ ਕਮੇ ਰਹੇ ਕਾਲ ਤਾਂ ਵਜੇ ਹੋਗੇ ਫਿਰ ਐਨੀ ਅਗਲ ਤਾਂ ਸਿੱਖਾ ਨੂੰ ਨਹੀਂ ਹੈ ਪ੍ਰਚਾਰਕਾਂ ਨੂੰ ਵਿਦਵਾਨਾਂ ਨੂੰ ਵੀ ਕਾਲ বুঝਲੇ ਤੇ ਉਹ ਕਾਲਾਂ ਦੇ ਡੈਕ ਨਹੀਂ ਕੀਤਾ ਇਹਨਾਂ ਨੇ ਕਾਲ ਚਾਰ ਮੰਡੀ ਬੈਠੇ ਨੇ ਸਾਰੇ ਵਿਦਵਾਨਾ ਸਾਹਿਬ ਜੀ ਤਾਂ ਕਹਿੰਦਾ ਉਹਨਾਂ ਮੈਂ ਪੰਡਤ ਐ ਹੋ ਪੰਡਤਾਂ ਦੇ ਚੇਲੇ ਨੇ ਸਾਰੇ ਇਹ ਕਾਲ ਪੰਜ ਕਿਉਂ ਨਾ ਬੰਨੇ ਪੰਜ ਹੋ ਗਏ ਕਾਲ ਫਿਰ ਕਾਲ ਤਿੰਨੇ ਨੇ ਤਿੰਨੇ ਹੁੰਦੇ ਨੇ ਚੌਥਾ ਕਾਲ ਜਿਹੜਾ ਹੈਗਾ ਉਹ ਅਕਾਲ ਹੈ ਸਤਿਗੰਡ ਉਹਦਾ ਵਿਸ਼ਾ ਹੀ ਰਹਿੰਦਾ ਉਹਦਾ ਕੀ ਹੁਲ ਵੀ ਹੈਗਾ ਕੜ ਜੋਗਾ ਹੈ ਆ ਹੁਣ ਦੋ ਯੁਗ ਨੇ ਸਾਡੇ ਵਾਸਤੇ ਦੋ ਨੇ ਪਿਆਦਾ ਸੀ ਕੜ ਜੋਗ ਜਿਹੜਾ ਹਾਂਗੇ ਅਸਾ ਯੁਗ ਜਿਹੜਾ ਹਾਂਗੇ ਇੱਕ ਘੜੀ ਨਾਲ ਮਿਲਤੇ ਤਾਂ ਕਲਜੋਗ ਨਾ ਕਰਜੋਗ ਤਾਂ ਜੇ ਕਲਜੋਗ ਨਾ ਹੋਤਾ ਫਿਰ ਕੀ ਹੋਤਾ ਸਾਰੇ ਗੁਰੂ ਸਾਹਿਬ ਨੂੰ ਰੱਦ ਕਰ ਰਹੇ ਨੇ ਜਿਹੜਾ ਮਿਲਿਆ ਹੋਇਆ ਉਹਦੇ ਵਾਸਤੇ ਕਲਜੋਗ ਨਹੀਂ ਹੈ ਜਿਹਦੇ ਅੰਦਰ ਕਲਪਨਾ ਦਾ ਕਲਜੋਗ ਹੈ ਜਿਹਦੇ ਅੰਦਰ ਕਲਪਨਾ ਨਹੀਂ ਹੋ ਕਲਜੋਗ ਨਹੀਂ ਹੋ ਸਜੋਗ ਹੈ ਕਟ ਘਟ ਕੇ ਕੇ ਪਟ ਪਟ ਕੀ ਜਾਨੀ ਘਟ ਕੇ ਤੇ ਜਾਣੇ ਪਟ ਪਟ ਕੇ ਵੀ ਜਾਣੀ ਅਦਲਾ ਹਰੇਕ ਪਰਦਾ ਜਾਣਦਾ ਕੋਈ ਮੋਟਾ ਹੀ ਨਹੀਂ ਜਾਣਦਾ ਇੱਕ ਤਾਂ ਆਦੂ ਰੂਵੇ ਜਾਣਦਾ ਕਾਲ ਵੀ ਦੇ ਅੰਦਰ ਪਰਦੇ ਪੂਰੇ ਪਰਦੇ ਜਾਣਦਾ ਪਰਦੇ ਘਟ ਕੇ ਪਟ ਪਟ ਗਈ ਜਾਨੀ ਇੱਕ ਪਰਦਾ ਵੀ ਨਹੀਂ ਉਹ ਲੁਕਿਆ ਹੋਇਆ ਕਿਸੇ ਦਾ ਜਿੰਨੇ ਫਰਦੇ ਵੀ ਤੇਰੇ ਪਾਏ ਹੋਏ ਰੇ ਨਾ ਲੋਕਾਂ ਤੋਂ ਉਹ ਸਾਰੇ ਜਾਣਦੇ ਫਰਦੇ ਬਬਲਕ ਤੋਂ ਪਾਲੂ ਉਹ ਤਾਂ ਕਦੇ ਪਾਲੂਗਾ ਗਾਂ ਫਰਦੇਆਂ ਥੱਲੇ ਦਾ ਬੈਠਾ ਜਿਹਦੇ ਉੱਤੇ ਫਰਦੇ ਪਾਏ ਨੂੰ ਤਾਂ ਪਤਾ ਹੈ ਜਾਂ ਫਰਦੇ ਉੱਤੇ ਪਿੰਦਾ ਆਦਮੀ ਦੇ ਕਪੜਾ ਇੱਕ ਹੋਰ ਦੇਤਾ ਉਹਨੂੰ ਤਾਂ ਪਤਾ ਲੱਗਦਾ ਕਪੜੇ ਦੇਈ ਜਾਂਦਾ ਉਹਨੂੰ ਪਤਾ ਉੱਤੇ ਕਿ ਉਹ ਬੋ ਜਾ ਦਿੱਤੇ ਨੇ ਫੜ ਫੜ ਕੇ ਜਾਂਦੀ ਤਾਤ ਮਾਤ ਜੇ ਜਾਤ ਨਾ ਪਤਾ ਤਾਤ ਬਾਤ ਜੇ ਜਾਤ ਨਾ ਪਤਾ ਤਾਤ ਮਾਤ ਉਹਦਾ ਤਾਤ ਮਾਤ ਕੋਈ ਨਹੀਂ ਹੈ ਜਾਤ ਬਾਤ ਕੋਈ ਨਹੀਂ ਹੈ ਤੇ ਜਾਤ ਬਾਤ ਵਰ ਆਗਤ ਹੋ ਗਈ ਜਾਤ ਬਾਤ ਕਿਥੋਂ ਆਈ ਸਨਹਾਰ ਜਾਤ ਬਾਤ ਕਿਥੋਂ ਆਈ ਉਹ ਤਾਂ ਕਹਿੰਦੇ ਜਾਤ ਬਾਤ ਹੁੰਦੀ ਹੋਰੀ ਕੋਈ ਹੈ ਉਹ ਨਹੀਂ ਜੇ ਸਾਰੇ ਉਹਦੀ ਅਲਸ ਨੇ ਇਹ ਨਾਲ ਦੀ ਜਾਸਪਤ ਕਿਵੇਂ ਬਣ ਗਈ ਇਹ ਬਣਾਈ ਛਾਤਰ ਬਾਬੂ ਨੇ ਦਿਮਾਗ ਚ ਬਿੱਪਰ ਦਾ ਛਾਤਰ ਦਿਮਾਗ ਉਹਨੇ ਬਣਾਈ ਜਾਸਪਤ ਉਹਨੂੰ ਜਾਇਦੇ ਸੇ ਆਪਣੀ ਸੇਵਾ ਕਰਨ ਵਾਲੇ ਉਹਨੂੰ ਜਾਇਦੇ ਤੇ ਨਾ ਇਹ ਛਾਤਰ ਇੱਥੇ ਦੇ ਜਿਹੜੇ ਛਾਤਰ ਦਿਮਾਗ ਨੇ ਨਾ ਉਹਨਾਂ ਦੀਆਂ ਕੱਡਾਂ ਨੇ ਉੱਥੇ ਤਾਂ ਹੀ ਕੱਢੇ ਨੇ ਛਾਤਰ ਤੇ ਉਹ ਟਿਕੜਾ ਟਿਕਦੇ ਤੇ ਜਿਹੜੇ ਜਿਆਦਾ ਖਰਾਬ ਹੁੰਦੇ ਜੇਲ੍ਹ ਚ ਬੰਦੀ ਟਿਕਦੇ ਜਾਂਦੇ ਉੱਥੇ ਪਾਰਟੀ ਅਪਣਾ ਲੈਂਦੇ ਨੇ ਕਈ ਦਾ ਬੰਦੇ ਜਾ ਕੇ ਜਿਹੜੇ ਸੁਧਰ ਜਾਂਦੇ ਨੇ ਪਛਤਾਉਂਦੇ ਨੇ ਬਹੁਤੇ ਤਾਂ ਸੁਧਰ ਜਾਂਦੇ ਨੇ ਕੁਝ ਐਸੇ ਵੀ ਹੁੰਦੇ ਨੇ ਜਿਹੜੇ ਜੇੜ ਦੇ ਵਿੱਚ ਵੀ ਰਾਜੇ ਕਰਦੇ ਨੇ ਜਾ ਕੇ ਹੁੰਦੇ ਨੇ ਉੱਥੇ ਵੀ ਰਾਜ ਕਰਨਾ ਚਾਹੁੰਦੇ ਨੇ ਚਾਹੇ ਪੁਲਿਸ ਦਾ ਰਾਜ ਆ ਉੱਥੇ ਪਰ ਰਾਜ ਆਪਣਾ ਪੁਲਿਸ ਵੀ ਉਹ ਕੋ ਤੋਂ ਜਗਤੀ ਹੁੰਦੀ ਹੈ ਇਸ ਕਰਕੇ ਸੱਚ ਵੀ ਕਈ ਵਾਰ ਉਪਤ ਹੋ ਜਾਂਦਾ ਘਪਤਿਆਂ ਤੋਂ ਬਿਰਦ ਤੋਂ ਕਈ ਵਾਰ ਕੋਪਤ ਹੋ ਜਾਂਦਾ ਵੀ ਇਹਨਾਂ ਨੂੰ ਕੋਈ ਬਤ ਪਰਾਂ ਕਰ ਲੈਣ ਦਿਓ ਪਬਲਿਕ ਜੋ ਉਹਨਾਂ ਦੇ ਨਾਲ ਹੁੰਦੀ ਹੈ ਪਬਲਿਕ ਜੀ ਦੇ ਨਾਲ ਹੋਵੇ ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਹ ਫਿਰ ਚੁੱਪ ਬੱਟ ਜਾਂਦੇ ਨੇ ਕੋਈ ਚੇਰ ਖਾਤਰ ਠੀਕ ਟਾਈਮ ਤੇ ਸੱਚ ਪ੍ਰਗਟ ਹੁੰਦਾ ਹੈ ਸਮਾਂ ਹੁੰਦਾ ਫਿਰ ਪ੍ਰਗਟ ਹੋ ਜਾਂਦਾ ਉਹਨੂੰ ਕੋਈ ਸਾਰੇ ਪਤਾ ਹੈ ਨਾ ਜੇ ਲੋੜ ਆਦੀ ਪ੍ਰਗਟ ਹੋ ਜਾਂਦਾ ਜੇ ਉਹਦੀ ਲੋੜ ਹੈ ਲੋਕਾਂ ਨੂੰ ਦੇਈ ਬਟੜ ਨਹੀਂ 파ਰਖੂ ਨਹੀਂ ਗਾਹਕ ਨਹੀਂ ਬੋਲ ਕਵੀ ਨੇ ਕਹਿੰਦਾ ਜੇ ਤੇਰੇ ਕੋ ਨਾਮ ਨਹੀਂ ਹੈ ਪੰਡਰ ਤਾਂ ਖੋਲ ਨਾ ਉਹਨੂੰ 파ਰਖੂ ਆਕੇ ਖੋਲ ਜਿੱਤੇ ਸੌਦਾ ਲੈਣਾ ਉੱਥੇ ਖੋਲ ਅਗੜੀ ਨਹੀਂ ਖੋਲੇ ਨਾ ਕ ਰੰਗ ਕਾਹੂ ਨਹੀਂ ਰਹਾਤਾ ਇਹ ਰੰਗ ਰਹਾਤਾ ਕਾਹੂ ਨਹੀਂ ਰਹਾਤਾ ਕਿਤੇ ਇਹਨਾਂ ਨਾਲ ਜੁੜਿਆ ਹੈ ਬਾਗ ਆਪਣੇ ਕ ਰੰਗ ਜਹੰਮਾ ਕੋਈ ਪ੍ਰਭਾਵ ਆਇਆ ਨਾ ਕਿਸੇ ਚੀਜ਼ ਦਾ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਆਪਣੇ ਰੰਗ ਰਵੇ ਇਕੱਲਾ ਆ ਆਪਣੇ ਰੰਗ ਰਵੇ ਪੇ ਇਕੱਲਾ ਉਹ ਨਹੀਂ ਕਿਸ ਸੰਸਾਰ ਇਹਦਾ ਕੋਈ ਸੰਸਾਰ ਚ ਪ੍ਰਭਾਵ ਨਹੀਂ ਪੈਂਦਾ ਝੁਲਮ ਹੋਈ ਜਾਂਦੇ ਨੇ ਉਹ ਸਭ ਕੋਹ ਕੀਤਾ ਹੀ ਹੁੰਦਾ ਹੁੰਦਾ ਸਣੀ ਉਹ ਜੋ ਕਰਦਾ ਹੁੰਦਾ ਤਾਂ ਉਹ ਹੈ ਸਾਨੂੰ ਸਾਡੇ ਤੇ ਪ੍ਰਭਾਵ ਤਾਂ ਪੈਂਦਾ ਸਾਨੂੰ ਲੱਗਦਾ ਵੀ ਆਹ ਫਲਾਣਾ ਬੰਦਾ ਕਰਦਾ ਉਹ ਕਰਦਾ ਉਹ ਤੇ ਪ੍ਰਭਾਵ ਕੀ ਉਹ ਤਾਂ ਆਪੇ ਕਰਦਾ ਜਿਹੜਾ ਉਹ ਕਰਦਾ ਡੋਰੀ ਹਲਾਉਂਦਾ ਦਾ ਹਲਦੀ ਹੈ। ਹੈ। ਸਰਬਜੋਤ ਕੇ ਵਿੱਚ ਸਮਾਨਾ। ਸਰਬਜੋਤ ਕੇ ਵਿੱਚ ਸਮਾਨਾ ਜਿਹਦੀ ਜੋਤ ਹੈ ਸਾਰਿਆਂ ਦੇ ਵਿੱਚ ਸਮਾਈ ਹੋਏ। ਕਿਉਂ ਸਮਾਇਆ? ਜੋਤ ਕਾਬੂ 'ਚ ਨਹੀਂ ਕਰਨੀ ਸਵਾ ਕੇ ਕਾਬੂ 'ਚ ਕਰਨੀ ਆ। ਜੇ ਸਰੀਰ 'ਚ ਜੋਤ ਸਭਾਈ ਹੋਈ ਆ ਤਾਂ ਸਰੀਰ ਕਾਬੂ 'ਚ ਜੇ ਜੋਤ ਮਨ ਸਰੀਰ 'ਚ ਸਮਾਇਆ ਹੋਇਆ ਤਾਂ ਸਰੀਰ ਕਾਬੂ 'ਚ ਹੈ। ਵੇ ਕਾਬੂ ਸਰੀਰ ਵੀ ਹੋ ਜਵੇ ਇਸ ਕਰਕੇ ਉਹ ਜੋਤ ਚ ਸਮਾਇਆ ਜੋਤ ਕਾਬੂ ਕੀਤੀ ਉਹਨੇ ਸਰੀਰ ਦੀ ਕਾਬੂ ਕੀਤਾ ਉਹ ਜੋਤ ਨੇ ਸਰੀਰ ਕਾਬੂ ਕੀਤਾ ਉਹਨੇ ਜੋਤ ਕਾਬੂ ਕੀਤੀ ਹੈ ਜੋਤ ਨੇ ਸਰੀਰ ਕਾਬੂ ਕੀਤਾ ਇਸ ਕਰਕੇ ਉਹਦਾ ਸਭ ਕੁਝ ਉਹਦੇ ਕਾਬੂ ਚ ਹੀ ਹੈ ਹ ਸਭ ਨੂੰ ਸਰਬ othor ਪਹਿਚਾਨਾ ਸਭ ਨੂੰ ਸਰਬ ਸਾਰੇ ਕਹਿੰਦੇ ਨੇ ਸਾਰਿਆਂ ਨੇ ਬਨ ਲਈਏ ਗੱਲ ਕਿ ਸਾਰੇ ਜਗ੍ਹਾ ਹੋਏ ਦਾ ਸਾਰਿਆਂ ਦੇ ਵਿੱਚ ਇਹ ਗੱਲ ਤੇ ਕੋਈ ਹੋ ਨਹੀਂ ਹੈ ਕਿਸੇ ਤਰਫ ਦੀਆਂ ਦੋ ਰਾਇਆਂ ਨਹੀਂ ਇਸ ਗੱਲ ਤੇ ਕਿ ਬਈ ਸਭ ਦੇ ਅੰਦਰ ਨਹੀਂ ਹੈ ਜਿੰਨੇ ਵੀ ਅੱਜ ਤੱਕ ਧਰਮ ਹੋਏ ਨੇ ਸਾਰਿਆਂ ਨੇ ਕਹਿੰਦੇ ਪਹਿਚਾਣੀ ਹੈ ਗੱਲ ਵੀ ਸਭ ਜਗ੍ਹਾ ਹੀ ਹੈਗਾ ਭਾਈ ਉਹ ਸਰ ਵੀ ਹੈਗਾ ਸਾਰਿਆਂ ਦੇ ਅੰਦਰ ਵੀ ਹੈਗਾ ਇਸ ਗੱਲ ਤੇ ਕੋਈ ਭਲੇਖਾ ਰੀਏ ਕਿਸੇ ਨੂੰ ਨਾ ਬਤ ਪੇ ਇਸ ਗੱਲ ਤੇ ਕਾਲ ਰਹਿਤ ਅਨਕਾਲ ਸਰੂਪਾ ਕਾਲ ਰਹਿਤ ਉਹਦਾ ਕਾਲ ਇਹ ਨਹੀਂ ਜੋ ਦਾ ਕਾਲ ਹੁੰਦਾ ਹੀ ਨਹੀਂ ਅਕਾਲਰ ਅਨਕਾਲ ਸਰੂਪਾ ਉਹਦਾ ਸਰੂਪ ਬਿਨਾਂ ਕਾਲ ਤੋਂ ਉਹਦਾ ਸਰਬ ਸਰੂਪ ਪ੍ਰਗਟ ਹੁੰਦਾ ਹੈ ਗੁਪਤ ਹੋ ਜਾਂਦਾ ਅਲਾਨ ਕੋ ਰਖੋ ਅਬਗਤ ਅਬਤੂਤਾ ਜਿਵੇਂ ਕਛੂ ਹੈ ਨਾ ਕਛੂ ਆਪਣੇ ਪੰਜੇਰ ਸਰੀ ਬਾਹਰ ਕਰ ਲਵੇ ਅੰਦਰ ਕਰ ਲਵੇ ਜਦ ਸਰੀਰ ਪੰਜੇ ਬਾਹਰ ਕੱਢਦਾ ਕੁੱਝ ਤੋਂ ਲੱਗ ਜਾਂਦਾ ਸਰੂਪ ਦੱਸਦੇ ਨੇ ਜੇ ਮਿਸਾਲ ਯਾਰ ਸਰੀਰ ਅੰਦਰ ਕਰ ਲੈਂਦਾ ਹੈ ਬਸ ਫਿਰ ਉਹ ਕੀ ਹੈ ਫਿਰ ਸੁੱਤ ਨੂੰ ਹੈ ਪਰ ਅੰਦਰ ਸਭ ਅੰਦਰ ਮਰਿਆ ਤਾਂ ਕੁਝ ਨਹੀਂ ਜਦੋਂ अपने ਬਾਹਰ ਕੱਢ ਲੈਂਦਾ ਫਿਰ ਟੁੱਟ ਲੱਗ ਜਾਂਦਾ फिर ਉਹ रूप हो ਰੂਪ बस ਜਾਂਦਾ के ਇੰਨਾ है, और कुछ नहीं है. दो ਦੋ ਹਾਲ ਤਾਂ ਇਹ ਗੱਛੂ ਜਿਹਾ ਹੁੰਦਾ ਹੀ ਹੈ ਕੋਪਣੀ ਸਿੱਧੀ ਬਾਹਰ ਕੱਢ ਲਈ ਜਬ ਮਰਜੀ ਉਹਦੀ ਬਾਹਰ ਕੱਢ ਲੈਂਦਾ ਗੱਛੂ ਕਿਸੇ ਤਰ੍ਹਾਂ ਕੱਢਦਾ ਨਹੀਂ ਇਸ ਕਰਕੇ ਨਹੀਂ ਜਬ ਮਰਜੀ ਇਸਦੀ ਤੁਰ ਪਿੰਦੇ ਜਾਂ ਵਰਜੀ ਹੁੰਦੀ ਹੈ ਆਪਣਾ ਸਭ ਕੁਝ ਅੰਦਰ ਕਰ ਲੈਂਦਾ ਆ ਹਾਂਜੀ ਅਲਖਪੁਰਖ ਅਭਗਤ ਅਬਧੂਤਾ ਅਲਖਪੁਰਖ ਹੈ ਉਹ ਅਭਗਤ ਹੈ ਅਭਗਤ ਕਹਿਣਾ ਨੇ ਉਹ ਜਿੱਥੇ ਜੋਤ ਹੈ ਉੱਥੇ ਉਹ ਹੈਗਾ ਉਹ ਤਾਂ ਜੋਤ ਨੂੰ ਤੁਸੀਂ ਵੱਖਰਾ ਨਹੀਂ ਦੇਖ ਸਕਦੇ ਕਿਤੇ ਵੱਖਰਾ ਨਹੀਂ ਦੇ ਸਕਦੇ ਜੋਤ ਨੂੰ ਆਪਣੇ ਅੰਦਰ ਵੀ ਦੇਖੂਗੇ ਦੂਏ ਦੰਦਰੋਂ ਤਾਂ ਖਰਾਂ ਦੇਖੋਗੇ ਪਹਿਲੀ ਗੱਲ ਹੈ ਜੇ ਦੂਏ ਦੀ ਜੋਤ ਹੈ ਉਹ ਤਾਂ ਤੁਹਾਨੂੰ ਅੱਖਰੋਂ ਦਿਖਣੀ ਹੋਣੀ ਜੇ ਦੂਏ ਦੀ ਜੋਤ ਅੱਖਰਾਂ ਨਹੀਂ ਦਿਖਣੀ ਤੇ ਇਹ ਸਖਰਾਂ ਉਹਦੇ ਜੋਤ ਤੋਂ ਵੱਖਰਾ ਨਹੀਂ ਹੈ ਜਿੱਥੇ ਜੋਤ ਹੈ ਇਸ ਕਰਕੇ ਆਪਣੀ ਜੋਤ ਦੇ ਵਿੱਚ ਹੀ ਹੈ ਜਾਤਮਾਹ ਜੋਤ ਜੋਤਮਾਹ ਜੋਤ ਜੋਤ ਉਹਨਾਂ ਨੇ ਕਹਣਾ ਕਹਣਾ ਮੈਂ ਜੋਤ ਦੇ ਵਿੱਚੋਂ ਆਪਣੀ ਜੋਤ ਚੋ ਜਾਣੇ ਜੇ ਕਿਸੇ ਨੇ ਦਰਸ਼ਨ ਕਰਨਾ ਆਪਣੀ ਜੋਤ ਦੇ ਵਿੱਚੋਂ ਕਰ ਲੋ। ਸਰੀਰ ਤੋਂ ਜੋਗੀ ਸਰੀਰ ਤੋਂ ਕਰ ਰਹੇ ਤੇ ਦਰਸ਼ਨ। ਸਰੀਰ ਤੋਂ ਨਹੀਂ ਹੁੰਦੇ। ਸਰੀਰ ਤੋਂ ਜੋਤ ਦਾ ਦਰਸ਼ਨ ਲਊਗਾ। ਸਰੀਰ ਤੋਂ ਜੋਤ ਮਿਲੂਗੀ। ਜਾਤਮਾ ਜੋਤ ਦਾ ਬੰਦਾ ਸਰੀਰ ਜਿਹੜੀ ਜਾਤ ਹੈ ਇਹ ਜੋਤ ਹੈ। ਜੋਤ ਦੇ ਵਿੱਚ ਗਾਹ ਹੋਇਆ। ਬੰਨ ਮੈਂ ਆਪ ਹੈ। ਬਸ ਜੋਤ ਵਿੱਚੋਂ ਦਰਸ਼ਨ ਹੋਊਗਾ। ਸਰੀਰ ਤੋਂ ਨਹੀਂ ਕੋਲ। ਜਿਹੜੇ ਸਰੀਰ ਤੋਂ ਕਰਦੇ ਤੇ ਉਹ ਗਲਤ ਸੀ। ਸ਼ਰੀਰ ਚੋ ਹੋਣਾ ਹੀ ਨਹੀਂ ਸ਼ਰੀਰ ਚੋ ਸ਼ਬਦ ਦਾ ਦਰਸ਼ਨ ਕਰ ਦਿੱਤਾ ਉਹ ਸ਼ਰੀਰ ਦੇ ਜਿਹੜੇ ਸ਼ਰੀਰ ਜਿਹੜਾ ਦੇਖਦੇ ਆ ਨਾ ਜਿਵੇਂ ਹਾਰਟ ਚੱਲਦਾ ਹਾਰਟ ਬੀਟਿੰਗ ਹੋਰ ਆਵਾਜ਼ਾਂ ਨੇ ਸ਼ਰੀਰ ਦੇ ਵਿੱਚ ਡਾਕਟਰ ਦੇਖਦੇ ਨੇ ਉਹ ਜੋ ਉਹ ਚੀਜ਼ਾਂ ਸ਼ਰੀਰ ਆਵਾਜ਼ ਸੁਣ ਲੱਗੇ ਜੋਗੀ ਜੋਤ ਵਿੱਚੋਂ ਜਨਮ ਸੀ ਅਭੁਤਤਾ ਉਹ ਤੂਤਾ ਤੂ ਤਾ ਜਿ ਸੁਧ ਕੀ ਨਾ ਸੁਧ ਬੁੱਧ ਕੀ ਨਾ ਬੁੱਧ। ਕਾਰ ਰਹੇ ਤਾਂ ਅਲੱਖਪੁਰਖ ਅਬਗਤ ਅਬਤੂਤਾ। ਅਲੱਖਪੁਰਖ ਹੈ ਅਬ ਤੂ ਤੇਰਾ ਮਤਲਬ ਇਹ ਹੈ ਆਬਤੂਤ ਨਹੀਂ ਤੇ। ਅਬਤੂਤਾ ਹੋ ਹੈ ਜਿਹੜੀ ਹੈ ਨਾ ਆਹ ਬਿਪੁਤੀ। ਜੋ ਮਾਇਆ ਹੈ ਇਹਦੇ ਨਾਲ ਕੋਈ ਲਿੰਕ ਨਹੀਂ ਹੋਦਾ। ਇਹ ਵੀ ਉਹ ਦੋ ਦੋ ਨੂੰ ਕਹਿ ਦੇਣੀ ਇਹਦਾ ਮਾਇਆ ਨਾਲ ਲਿੰਕੇਣਾ ਹੋਵੇ ਕੋਈ। ਆਇਆ ਨਹੀਂ ਕੋਈ ਭੁੱਖ ਨਹੀਂ ਉਹਦੇ ਨਾਲ ਲਿੰਕਤਾ ਨਹੀਂ ਕਹਿ ਸਕਦੇ ਭੁੱਖ ਨਹੀਂ ਜੇ। ਮਾਇਆ ਦੀ ਭੁੱਖੇ ਨਹੀਂ ਉਹਦੇ ਉੱਤੇ। ਜਾਤ ਪਾਤ ਜੈ ਚਿਹਨ ਨ ਬਰਨਾ। ਜਾਤ ਪਾਤ ਜੈ ਨਾ ਉਹਨੇ ਕੋਈ ਜਾਤ ਹੈ ਨਾ ਪਾਤ ਹੈ ਨਾ ਚਿੰਨ ਨਾ ਕੋਈ ਬਰਨ। ਪਹਿਲਾਂ ਵੀ ਆ ਚੁੱਕਿਆ ਹੈ। ਅਬ ਦੇਵ ਉਦੇਵ ਅਭੀ ਗੱਤ ਹੈ ਢੋਲਦਾ ਨਹੀਂ ਅਭੀ ਗੱਤਾਂ ਦਾ ਢੋਲਦਾ ਨਹੀਂ ਹੈ ਮਨ ਢੋਲਦਾ ਨਾ ਉਹ ਢੋਲਦਾ ਨਹੀਂ ਹੈ ਅੱਛਾ ਹੈ ਹਨ ਪਰਮਾ ਅੱਛਾ ਹੈ ਵਰਦਾਰੀ ਹੈ ਹਨ ਪਰਮਾ ਪਰਬੂ ਕੋ ਕਾਲ ਸਭਨ ਕੋ ਕਰਤਾ ਸਭ ਕੋ ਕਾਲ ਸਾਰਿਆਂ ਦਾ ਕਾਲ ਹੈ ਔਰ ਸਾਰਿਆਂ ਦਾ ਕਰਤਾ ਵੀ ਹੈ ਬਣਾਇਆ ਵੀ ਸਾਰਿਆਂ ਨੇ ਸਾਰਿਆਂ ਨੂੰ ਉਸੇ ਨੇ ਕਾਰ ਰੂਪ ਵੀ ਸਾਰਾ ਨੋਈ ਹੁਕਮ ਹੀ ਕਾਲ ਹੈ ਹੁਕਮ ਹੀ ਕਰਤਾ ਹੈ ਇਹ ਬਰਦਾ ਨੇ ਸ਼ਿਵ ਜੀ ਕਾਲ ਹੈ ਬ੍ਰਹਮਾ ਕਰਤਾ ਹੈ ਘਟਦੀ ਨਾ ਗੱਲ ਉਹ ਕਾ ਗਿਆ ਸੰਸਾਰੀ ਹੋ ਵੀ ਬਣਾਈ ਨੂੰ ਲੈ ਜੀ ਬਣ ਆਇ ਪਤਾ ਲੱਗੂਗਾ ਉੱਥੇ ਇੱਕ ਇਤੋ ਮਨੂਸੀ ਵੀ ਕੋਈ ਹੈ ਤਾਂ ਪੜ ਲਿਆ ਸੀ ਤੈਨ ਹੋ ਰਹੀ ਸਕਦੇ ਤੈਨ ਕੇਵੇਂ ਨੇ ਫੇਰ ਦੇਖਿਆ ਵੀ ਤੇਨ ਦਾ ਲਫਜ਼ ਨਹੀਂ ਆਇਆ ਹੋਇਆ ਗੁਰਬਾਣੀ ਤੇ ਚ ਤੇ ਤਾਂ ਪੰਡਤ ਦਾ ਭਲੇਖਾ ਪਾਇਆ ਹੋਇਆ ਐ ਇਤੋਂ ਪੱਕਾ ਹੋ ਗਿਆ ਵੀ ਹੈ ਇੱਕ ਹੋ ਰਹੀ ਦ ਸਭ ਕੋ ਕਾਲ ਸਭਨ ਸਭ ਕੋ ਕਾਲ ਸਭਨ ਕਰਤਾ ਜੇ ਪੱਕਾ ਹੋ ਗਿਆ ਤੂੰ ਤੇਨ ਕਦੇ ਬਨ ਲੋਗੇ ਬਨ ਸਕਦਾ ਜਿਹੜਾ 10 ਦਸਮਦੀ ਬਾਣੀ ਪੜ ਲਈ ਉਹ ਸਾਰਾ ਸਰਜੋਧਨ ਆਦਾਂ ਕਰ ਲੂਗਾ ਸੌਖਾ ਦੱਸਿਆ ਹੋਇਆ ਇਹ ਰੋਗ ਸੋਗ ਦੁਖਣ ਕੋ ਹਰਤਾ ਰੋਗ ਸੋਗ ਦੁਖਣ ਕੋ ਹਰਤਾ ਜਿਹੜੇ ਰੋਗ ਨੇ ਰੋਕਾ ਦੇ ਨੇ ਸਾਰੇ ਰੋਗ ਉਹ దీਰਗ ਉਹਦੇ ਨਾ ਪੁਰਾਣਾ ਰੋਗ ਹੈ ਜਿੰਨੇ ਔਗੜ ਨੇ ਸਾਡੇ ਰੋਗ ਨੇ ਸਾਰੇ ਔਗੜਾਂ ਨੂੰ ਹੱਲਣ ਵਾਲਾ ਰੋਗ ਸੋਗ ਸੋਗ ਉਹਦਾ ਸਾਡੂ ਜਿਹੜੀ ਚਿੰਤਾਵਾਂ ਨੇ ਸਾਡੇ ਅੰਦਰ ਔਗੜਾਂ ਔਰ ਚਿੰਤਾਵਾਂ ਇਹਨਾਂ ਦੇ ਨਾਸ ਕਰਨ ਵਾਲਾ ਹੱਲਣ ਵਾਲਾ ਦੂਰ ਕਰਨ ਤੋਖਣ ਕੋ ਹਰਤਾ ਦੋਖ ਵੀ ਸਾਡੇ ਚ ਕੀਰ ਬੁਰਾਈਆਂ ਨੇ ਆਪਣਾ ਪਰਾਇ ਸਮਝਣਾ ਦੋਖ ਨੇ ਸਾਡੇ ਵਿੱਚ ਵਿਰੋਧ ਇਹ ਦੋਖ ਦੋਹ ਹੈ ਤਾਂ ਉਕੜੇ ਪਰ ਔਗਣ ਦੁੱਖ ਦਿਸਰ ਆ ਜਾਂਦਾ ਦੁਏ ਦਾ ਹਿੱਸਾ ਜਿਆਸੀ ਖਾਣਾ ਚਾਹੁੰਨੇ ਲੋਕ ਹੈ। ਉਹ ਤਾਂ ਆਪਣੇ ਪੈਰ ਕੋਲੇ ਬੰਨ੍ਹ ਵਾਲੇ ਨੇ ਉਕੜ। ਕੁਛ ਦੁਇਆ ਨਾਲ ਨੇਟੜ। ਤਰੋ ਕਰਨਾ ਕਿਸਨ ਬੈਰ ਵਿਰੋਧ ਕਾਮਪਰੋਧ ਲੋਭੋ ਝੂਠ ਵਿਕਾਰ ਮਹਾਂ ਲੋਭ ਤਰੋ ਇਹ ਦੋਏ ਆ ਗਏ। ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲੈਵਾ ਪੜ ਕਰ ਕਰ ਇਹ ਸਾਰਿਆਂ ਨੂੰ ਹੱਲ ਵਾਲਾ ਇੱਕ ਚਿੱਤ ਜਹ ਇੱਕ ਛਿਣ ਤੇ ਆਇਓ ਕਾਲ ਫਾਸ ਕੇ ਵਿਚਨਾ ਆਇਓ ਇੱਕ ਜੀ ਨੇ ਇੱਕ ਛਿਣ ਤੇ ਆ ਲਿਆ ਕਾਲ ਫਾਸ ਦੇ ਵਿੱਚ ਨਹੀਂ ਉਹ ਇੱਕ ਦਰਸ ਦਿਖਾਏ ਜੀਓ ਦਿਖਾਏ ਜੀਓ ਇੱਕ ਛਣੇ ਦਰਸ਼ਨ ਹੋ ਗਿਆ ਹੋ ਗਿਆ ਦਰਸ਼ਨ ਇੱਕ ਵਾਰ ਹੋ ਗਿਆ ਚਾਹੇ ਇੱਕ ਆ ਗਿਆ ਉਹ ਫਿਰ ਕਾਲ ਫਾਸ ਚ ਨਹੀਂ ਆਇਆ ਮੁੜ ਕੇ ਫਿਰ ਨਹੀਂ ਕਾਲ ਫਾਸ ਚ ਆਉਂਦਾ ਤਉ ਪ੍ਰਸਾਦ ਕਵਿਤ ਫਤ ਸੁਚੇਤ ਹੋਏ ਕਾ ਕੋ ਚਾਰ ਕੀਓ ਕਦੋਂ ਅਚੰਤ ਹੋਏ ਕਾ ਸੋਭਤ ਅਚੇਤ ਹੋ ਕਦੋਂ ਸੁਚੇਤ ਹੋ ਕੇ ਚੇਤਨਾ ਕੋ ਚਾਰਕਿਓ ਕਦੋਂ ਅਚੰਤ ਹੋ ਕੇ ਸੋਭਤ ਅਚੇਤ ਹੋ ਕਿਤੇ ਤੱਕ ਇੱਕ ਹੀ ਦੀ ਗੱਲ ਹੈ ਹੁਣ ਇੱਕ ਦੀ ਗੱਲ ਹੈ ਜਿਹੜਾ ਇੱਕ ਹੈ ਕਿਤੇ ਤੱਕ ਤੂ ਸੁਚੇਤ ਲੈ ਕੀ ਕਰਨਾ ਹੈ ਆਪਣਾ ਕੰਮ ਕਰ ਰਹੇ ਹਾਂ ਸੁਚੇਤ ਹੋਗੇ ਗਾੜੀ ਜੇ ਤਨਾ ਕੋ ਚਾਰ ਕਿਉ ਚੱਕਣਾ ਹੋਇਆ ਰਹਿਣ ਚੱਕਣਾ ਜਿਹੜੀ ਸਾਡੀ ਦੁਕਾਨ ਆ ਨਾ ਦੁਰੀਦਾਰੀ ਦੁਕਾਨਦਾਰੀ ਇਹ ਕਹਿੰਦਾ ਦੋ ਇੱਕਨ ਖੁੱਲੇ ਹੁੰਦੇ ਨੇ ਆਦਮੀ ਖੁੱਲੇ ਹੁੰਦੇ ਨੇ ਇੱਥੇ ਚਾਰ ਗਾਨਾਂ ਦੀ ਲੋੜ ਸੰਸਾਰੀ ਨਵਾਂ ਨਸਾਨ ਪਲੱਸ ਦਰਗਾਹੀ ਇੱਥੇ ਦਾ ਨੰਬਰ ਨਸਾਨ ਸੰਸਾਰ ਦਾ ਚਾਰ ਗਾਨ ਨਸਾਨ ਹੈ ਇਦੇ ਚਾਰ ਗੱਲ ਚਾਹੀਦੇ ਨੇ ਦੋ ਨਾਲ ਦਰਦੀ ਵਾਲੀ ਸੋਲਦੀ ਹੈ ਦੋ ਨਾਲ ਬਾਹਲੇ ਗਾਖ ਦੀ ਗੱਲ ਸੋਲਦੀ ਹੈ ਚੇਤਨਾ ਕੋ ਚਾਰ ਕਿਓ ਆ ਚੇਤਨਾ ਕੋ ਚਾਰ ਕਿਓ ਹੱਥ ਪੈਰ ਕਰ ਕੰਬਦਾ ਬਚੀਤਨਾ ਜਣਾ ਦੋਏ ਕੰਬ ਇਕੱਠੇ ਹੀ ਰੱਖਣੇ ਨੇ ਅੰਦਰਲੇ ਕਰਨ ਵੀ ਖੋਲੇ ਬਾਹਲੇ ਵੀ ਖੋਲੇ ਕਾ ਤੂੰ ਸੁਚੇਤ ਹੋਏਗਾ ਚੇਤਨਾ ਕੋਚਾਰ ਕੀਏ ਚੇਤਨਾ ਕੋਚਾਰ ਹੋਏ ਬਿਨਾ ਕੰਮ ਨਹੀਂ ਹੁੰਦਾ ਹੈ ਕਿਵੇਂ ਹੋਊਗਾ ਇਹਦਾ ਦੋਏ ਕੰਨ ਕੋਲੇ ਰੱਖਣੇ ਔਖੇ ਨੇ ਦੋਏ ਬੰਦ ਕਰਕੇ ਬਹਿ ਜੰਨੇ ਕੀ ਕਿਹਾ ਜੇ ਖੁੱਲੇ ਹੁੰਦੇ ਇਹ ਕੰਨ ਇਹ ਕਹਦੇ ਕਹਿਣਾ ਵੀ ਕੀ ਕਿਹਾ ਧਿਆਨ ਕੰਨਾਂ ਚ ਨਹੀਂ ਰਹਿੰਦਾ ਸਾਰਾ ਦਿਨ ਚੇਤਨਾ ਕੋ ਚਾਰ ਕਿਓ ਕਾ ਤੂੰ ਅਚਿੰਤ ਹੋਏ ਕੇ ਸੋ ਚਾਰ ਜਗ੍ਹਾ ਚੇਤਨਾ ਕੰਮ ਕਰ ਰਹੀ ਹੈ ਇੱਕ ਜਗ੍ਹਾ ਕੰਮ ਕਰਦੀ ਓਖੀ ਹੈ ਜਿਹੜਾ ਸੁਚੇਤ ਸੁਚੇਤ ਕੰਮ ਕਰ ਰਹੀ ਉਹ ਵੀ ਠੀਕ ਕਰ ਲੈ ਚੇਤਨ ਜਨ ਵੀ ਗੱਲ ਕਰ ਲੈ ਚੇਤਨ ਜਾ ਰਹੀ ਹੋਗੀ ਚੇਤਨਾ ਕੋ ਚਾਰ ਕਿਓ ਕਾ ਤੂੰ ਅਚਿੰਤ ਹੋਏ ਕੋਈ ਪੰਕਤੀ ਬੋਲਦੀ ਪਰਲਾ ਦੇ ਅਰਥ ਕੀ ਨੇ ਇਤਨਾ ਕੋਚਾਰ ਕੀਓ ਇਤਨਾ ਕੋਚਾਰ ਕੀਓ ਇੱਕ ਹਫਤਾ ਸੌਖੀ ਗੱਲ ਹੈ ਜਿਹੜੀ ਪੰਡਤ ਜੀ ਨੇ ਲਿਖਤੀ ਇਹਨਾਂ ਨੂੰ ਤਾਂ ਐਵੇਂ ਲੱਗਦਾ ਬੋਰਖਾਨ ਨੂੰ ਇਹਨਾਂ ਨੂੰ ਪਤਾ ਹੀ ਅਸਲ ਵਿੱਚ ਅਰਥ ਕੀ ਹੁੰਦਾ ਫਿਰ ਤਾਂ ਪਤਾ ਲੱਗੇ ਜਿਹੜੇ ਲੋਕ ਗੁੱਗੂ ਨੇ ਬਿਲਕੁਲ ਗੁੱਗੂ ਉਹ ਦਸਮਰਾਂ ਦਾ ਵਿਰੋਧ ਕਰਦੇ ਪਤਾ ਲੱਗੂ ਵੀ ਇਹਦੇ ਕੋ ਗੋ ਕੀ ਹੈ ਅਰਥ ਦਿਨਾਂ ਕਿਹਨੇ ਕੀਤੇ ਇਹਦੇ ਦਾ ਅਰਥ ਦੂਹੇ ਕਰਦੇ ਭੂਗੂ ਬਣਾਉਣ ਵਾਲੀ ਕੋਕੂ ਬਣਾਉਣਾ ਇਹ ਦੇਖ ਨਾ ਜੇ ਇਹ ਅਸ ਦੂਹੇ ਕਰ ਸਕਦਾ ਨਰੈਣ ਸਿੰਘ ਰੈਣ ਤਾਂ ਕਮਿਆਂ ਵੀ ਖਤਰੇ ਵਾਲੇ ਅਰਥ ਦੇ ਤਾਂ ਵੀ ਖਤਰੇ ਉਹ ਜਿਹੜੀਆਂ ਪਹਿਲੀਆਂ ਮੰਗਦੀਆਂ ਨੇ ਰੂਦਰ ਉਪਾਇ ਖਪਾਏ ਉਹਦਾ ਅਰਥ ਤਾਂ ਗਲਤ ਕਰ ਨਹੀਂ ਸਕਦਾ ਉਹ ਕਿੱਥੋਂ ਗਲਤ ਕਰ ਦਿੰਦਾ ਕੀ ਤਾਂ ਗੱਲ ਤੇ ਜਿੱਥੇ ਜਿਹਾ ਹੋਇਆ ਘਰੇ ਆਇਰ ਉਹ ਹੋਉਦਾ ਹੀ ਨਹੀਂ ਹੁੰਦਾ ਯਾਰ ਤੇ ਇੰਦੀ ਗੱਲ ਆਈ ਤੇ ਸਮਝ ਨਹੀਂ ਹੁੰਦਾ ਚੇਤਨਾ ਕੋਚਾਰ ਕੀਓ ਚੇਤਨਾ ਕੌਣ ਪੜਨ ਨੂੰ ਚੇਤਨਾ ਕੀ ਸੋਬਤ ਅਚੇਤ ਹੋ ਕਿਦੈ ਉਚਿੰਤ ਹੋਇਆ ਪਿਆ ਪਤਾ ਨਹੀਂ ਪਤਾ ਨਹੀਂ ਸੋਬਤ ਜੇਦੋ ਸੁੱਤਾ ਪਿਆ ਸੁੱਤਿਆ ਰਹਿਣਾ ਬਿਆਣੀ ਜਿਹੜਾ ਗੁਰਗ੍ਰਪਾਤੋਂ ਜਾਗਿਆ ਹੋਇਆ ਉਹ ਤਾਂ ਸचेत ਹੈ ਗੁਰਗ੍ਰਪਾਤੋਂ ਸੇਜਣ ਜਾਗਿਆ ਹਾਂ ਗੁਰਗ੍ਰਪਾਤੋਂ ਸੇਜਣ ਜਾਗੇ ਜਿਹੜਾ ਅਰਵਨ ਬਸਿਆ ਬੋਲੇ ਅਮਰਤ ਬਾਣੀ ਜਿਹੜੇ ਅਮਰਤ ਬਾਣੀ ਨੂੰ ਗੁਜਾਰਾ ਹੈ ਉਹ ਹੈ ਉਹ ਦੂਏ ਨੇ ਕਤੋਂ ਭਿਖਾਰੀ ਹੋਏ ਕਾ ਮੰਗ ਤੋ ਫਿਰਤ ਭੀਖ ਕਿਤੇ ਭਿਖਾਰੀ ਹੋਇਆ ਭੀਖ ਮੰਗਦਾ ਫਿਰਦਾ ਹੈ ਭਿਖਾਰੀ ਸੰਸਾਰ ਦੇ ਭਿਖਾਰੀ ਨਹੀਂ ਹੈ ਓਏ ਜਿਹੜੀ ਅਰਦਾਸਾਂ ਕਰਦੇ ਨੇ ਬਖਾਰੀ ਜਗਤ ਦੇ ਬਖਾਰੀ ਫਿਰਦਾ ਹੈ ਸਭ ਕੋ ਦਤਾ ਰਾਹੁਲ ਕਲ ਧਰਮਗਦਮੀ ਦੀਆਂ ਉੱਚੀਆਂ ਦੀਆਂ ਕਬੀਰ ਵੀ ਭੇਖ ਭਗਦਾ ਫਿਰਦਾ ਵੀਰ ਪਰਮੇਸ਼ਰ ਨਾਮ ਦਾ ਦਾਨਪਾ ਠੂਠਾ ਬੜੀ ਫਿਰਦਾ ਸੀ ਤਾਂ ਹੀ ਤਾਂ ਅਰੋਜ ਵਾਲਾ ਫਿਰਦਾ ਸੀ ਨਾਨਕ ਮੰਗੇ ਨਾਮਦਾਨ ਬਖਾਰੀ ਹੈ ਆਪ ਵੀ ਗੋਖ ਭਖਾਰੀ ਤੇਰੇ ਆਪ ਵੀ ਤੋਂ ਭਖਾਰੀ ਤੇਰੇ ਇੱਥੇ ਆਏ ਭਖਾਰੀਆਂ ਦੀ ਗੱਲ ਕਰਨ ਲੱਗੇ ਉੱਚੇ ਭਖਾਰੀਆਂ ਦੀ ਗੱਲ ਕਰੋ ਤੁਸੀਂ ਇਹਨਾਂ ਦੀ ਕੀ ਕਰਦੀ ਹੈ ਵਿਚਾਰੇ ਇਹ ਤਾਂ ਆਪਣਾ ਹੱਕ ਲੈਣ ਆਏ ਨੇ ਭਖਾਰੀ ਦੀਆਂ ਨੇ ਇਹ ਉਹਨਾਂ ਦਾ ਹੀ ਹੱਕ ਹੈ ਕੋਈ ਨਹੀਂ ਭੀਖ ਦੇ ਕਿਉਂ ਆਪ ਦਾਤਾ ਬਣਦੇ ਨਹੀਂ ਨਾ ਤਾਂ ਭਖਾਰੀ ਲੱਗਦੇ ਨੇ ਆਪਣੇ ਹੀ ਲੈਣ ਆਏ ਨੇ ਉਹਨਾਂ ਦਾ ਹੀ ਉਹ ਨੱਕ ਨਾ ਖਸਮਤ ਕਰ ਧੱਕੇ ਦੇ ਜਹਾਂ ਦਾਣੇ ਤਾਂ ਉਹਨਾਂ ਤੇ ਵੀ ਤਾਂ ਲੱਗੂਗਾ ਜੇ ਤੇ ਦਾਣੇ ਨਹੀਂ ਉਨਦੇ ਲੈ ਭੇਜਿਆ ਵੀ ਜਾਓ ਉੱਥੋਂ ਲੈ ਆਓ ਆਪਣੇ ਤਾਂ ਜਾ ਕੇ ਨਾਨਕਾ ਸੱਚੇ ਸੱਚ ਉਹਨਾਂ ਘਰ ਤੇ ਪਹੁੰਚੀ ਹੈ ਸਾਡੇ ਉਹ ਬਈ ਉਹ ਕਿਵੇਂ ਭਿਖਾਰੀ ਹੋਗੇ ਭਿਖਾਰੀ ਹੋ ਅਜ ਤੋਂ ਬਗਦੋ ਭਿਖਾਰੀ ਹੈ ਅਦੂਬ ਘਾਰੀ ਹੋ ਕੇ ਬਹੁਤ ਪੇਰ ਤੇ ਪੀਕ ਪੀਕ ਕਿਹੜੀ ਮੰਗਦਾ ਸਵਾਲ ਇਹ ਜੇ ਤਾਂ ਮਾਇਆ ਮੰਗਦਾ ਕਿ ਨਾਲ ਬਗਦ ਬਗਦ ਤੇ ਫਿਰ ਤੇ ਪੀਕ ਹੋਏ ਕੈ ਮੰਗਿਓ ਧਨ ਦੇ ਤੋ ਕਿਤੇ ਕਹਿੰਦੇ ਮਹਾਦਾਨੀ ਬਣਿਆ ਬੈਠਾ ਆਪ ਰਾਜਾ ਉਹਨਾਂ ਦੇ ਆਇਆ ਜਿਵੇਂ ਕਰਣਾ ਪਰ ਦਾਨ ਕਰਦਾ ਤੇ ਕਰਦਾ ਉਹ ਵੀ ਧਾਰ ਮੁਕਾਨ ਦੇਖੋ ਦੋਏ ਧਾਰ ਮੁਕਾਨ ਮਹਾਦਾਨੀ ਬਣਿਆ ਬੈਠਾ ਹੈ ਉਹ ਵੀ ਤਾਂ ਬਹੁਤ ਵੱਡਾ ਹੈ ਦੇ ਦੇ ਮੰਗੇ ਸੈਸਾ ਕੋਣਾ ਸੁਭ ਕਰੇ ਸੰਸਾਰ ਉਹ ਗੱਲ ਹੈ ਉਧਰ ਜਾ ਮੰਗਦਾ ਤਾਂ ਮੁਗਤਾ ਜਾਂ ਦਿਲ ਆਦਮੀ ਦੀ ਗੱਲ ਹੈ ਕਹੂੰ ਮਹਾਦਾਨ ਹੋਏਗਾ ਮੰਗੇ ਉਹ ਤੁਹਾਨੂੰ ਦੇ ਦੋ ਸਿਆਰੀ ਹੋਊਗੀ ਕਹੁ ਮਾਦਾਨ ਹੋਇ ਕਾ ਚਲੋ ਦਾਨਵਾਨ ਕਹਿ ਲੋ ਮਾਦਾਨ ਹੋ ਗਏ ਮੰਗਿਓ ਦਾਨ ਦੇ ਤੋ ਜੋ ਬਗਲਾ ਬਗਲਾ ਬੇਜੋ ਜਿਹੜਾ ਬਗਲਾ ਇਦਕ ਆਕੇ ਉਹ ਹੀ ਲੜੇ ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ ਕਿਤੇ ਮਹਾਰਾਜਾ ਨੂੰ ਇਹ ਦਾਨ ਦੇ ਰਹੇ ਤੂੰ ਆਪੇ ਦੇ ਰਹੇ ਕਿਤੇ ਮੰਗਦੇ ਨੇ ਬੰਗਦੇ ਕੌਣ ਨੇ ਬੰਗਦੇ ਨਹੀਂ ਤੇ ਤੇ ਦੰਦੇ ਨੇ ਆਪ ਦੇਖੋ ਦਾਦਾ ਬੰਦ। ਭਿਖਾਰੀ ਜਾਂ ਸੀ ਭਿਖਾਰੀ ਤੇ ਤੇ ਤੋਂ ਮੰਗਿਆ। ਜਦ ਉਹ ਹੀ ਤੇ ਤੋਂ ਮੰਗਿਆ ਗਾਂ ਦਤਾ ਫਿਰ ਆਪ ਦਾਦੀ ਬਣ ਗਿਆ। ਤੈਨੂੰ ਦਾਦੀ ਨਹੀਂ ਕਹਿ ਰਿਹਾ। ਇਹ ਲਿਆ ਕੇ ਦਤਾ ਬਾਈ ਦਾਦੀ ਬਣੀ। ਦਾਦਾ ਬਣੀ ਹੈਗਾ। ਉਹ ਲਿਆ ਕੇ ਦੇ ਰਿਹਾ ਕਿਸੇ ਤੋਂ ਮੰਗੇ ਫੇਰ ਕਹਿੰਦਾ ਮੈਂ ਦਾਦਾ। ਗੱਲ ਇਹ ਹੈ। ਫੇਰ ਦਾਦਾ ਬਣ ਗਿਆ ਤੂੰ। ਤੂੰ ਇਹ ਕਹਿੰਦਾ ਮੈਂ ਦਾਦਾ ਮੰਗੇ ਲਿਆਇਆ ਮੈਨੂੰ ਦਾਦਾ ਨਾ ਕੋ। ਦਾ ਦਾ ਦਾ ਦਾ ਦਾ ਦਾ ਦਾ ਇਹ ਕੋ ਦੇਵ ਨਾਰ ਇਹ ਕਹੋ ਆਹ ਨਹੀਂ ਕਿਹਾ ਆਣੀ ਗੱਲ ਗਈ ਇਹ ਕਦੇ ਨਹੀਂ ਕਹੀ ਬਈ ਇਹ ਤਾਂ ਝੂਠ ਬੋਲਿਆ ਆਪਣੀ ਇੱਜ਼ਤ ਬਣੂਦਾ ਪੱਲ ਬਣੂਦਾ ਮੈਂ ਜਾ ਤਾਂ ਕੋ ਖੁਦਾ ਦਾ ਬਣਦਾ ਹੈ ਪਰਮੇਸ਼ਰ ਦਾ ਸ਼ਰੀਕ ਬਣਦਾ ਵੱਡਾ ਕਹੋਦਾ ਸੋਭ ਕਰੇ ਸੰਸਾਰ ਸੋਭ ਕਰੇ ਸੰਸਾਰ ਸੰਸਾਰ ਦੀ ਸੋਭਾ ਦੀ ਇੱਛਾ ਅੰਦਰ ਹੂੰ ਮਹਾਰਾਜਣ ਤੇ ਛੀਨ ਛਿਤ ਲੇਤ ਹੂੰ ਕਿੱਦੇ ਦਾ ਮਹਾਰਾਜਾ ਨੂੰ ਮਹਾਰਾਜੇ ਦੰਦ ਦੇ ਰਿਹਾ ਕਿਤੇ ਉਹਨੂੰ ਦੇ ਚਾਤਰ ਛੀਨ ਛਿਤ ਛਤਰ ਕਿਤੇ ਰਾਜ ਗਤੀ ਦੇ ਰਿਹਾ ਕਿਤੇ ਉਹ ਖੋ ਰਿਹਾ ਕੋਈ ਦੂਸਰਾ ਖੋਲਦਾ ਕੇ ਖੋਦਾ ਦਾ ਤੇਰੇ ਹਕੂਮ ਨਾਲੇ ਆ ਉਹ ਤਾਂ ਕਹਿੰਦਾ ਤੂੰ ਖੋ ਉਹ ਦੂਆ ਕੇ ਖੋਲੂ ਜੇ ਤੇ ਤੂੰ ਨਹੀਂ ਕਹਿੰਦਾ ਉਹ ਔਰੰਗਜ਼ੇਬ ਕਰਨ ਦਿੱਦਾ ਵੀ ਤੂੰ ਆ ਖੁਦਾ ਵੀ ਤੂੰ ਹੁਕਮ ਨਾਲੇ ਮਿਲ ਗਿਆ ਗੱਦੀ ਹੁਕਮ ਨਾਲੇ ਖੋਹਤੀ ਔਰ ਤੇ ਤੇ ਕਿਹਦੇ ਤੋਂ ਖੋਹ ਕੇ ਦੂਦੇਤੀ ਸੀ ਕੀਤਾ ਨਹੀਂ ਕਬ ਕੀਤਾ ਦੂਏ ਨੂੰ ਦੇਤੀ ਗਦੀ ਜਦੋਂ ਔਰੰਗਜ਼ੇਬ ਨੇ ਵਿਗਾੜ ਕੀਤਾ ਇਹਨਾਂ ਨੇ ਇਹਦੇ ਖੋਹ ਕੇ ਹੋਰ ਕਿਸ ਨੂੰ ਦੇਤੀ ਮਤਲਬ ਖੋਹ ਲਈ ਨੇ ਤੇ ਬੋ ਰਾਜਮਣ ਅਰਕ ਮੜਦਾ ਗੱਦਿੱਦ ਉਹ ਰੁਬੜ ਜਾਂਦੀ ਕਹੂੰ ਬੇਦ ਰੀਤ ਕਹੂੰ ਤਾਂ ਸਿਓ ਬਪਰੀਤ ਕਹੂੰ ਇਹ ਗਾਲ ਉਸ ਤਾ ਬੇਦੁਰਦੀ ਬੇਦ ਬਣੀ ਉਹ ਬੇਦੁਰਦੀ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਪਤਾ ਹੀ ਨਹੀਂ ਬੇਦ ਕੀ ਚੀਜ਼ ਹੈ ਉਹ ਬੇਦ ਤੇ ਤਾਂ ਉਲਟਾ ਹੈ ਪੰਡਤਾਂ ਦਾ ਤਰਭੂ ਬੇਦੌੜਾ ਤਰਫਤਾ ਦੀ ਸਾਬਤ ਕਰ ਰਹੇ ਹੋ ਸੰਵਰਤ ਸ਼ਾਸਤਰ ਬੇਦ ਆ ਪੜਨ ਤਾਂ ਪਾੜੀ ਬਾਟ ਕਿਹੜੀ ਬਾੜ ਪਾੜੀ ਬੇਤੋਲਟ ਬਾਟ ਪਾੜੀ ਐ ਬੇਦਾਂ ਮੈਂ ਨਾਮ ਉਤਮ ਬੇਦ ਵੇਦ ਹੈ ਉਹ ਸੋ ਸੋਨੇ ਰਾਹੀਂ ਫਿਰੇ ਜੋ ਬੇਤਾਲਿਆ ਵੇਦ ਕਦੇ ਕੋਹ ਵੰਤ ਝੂਠੇ ਝੂਠਾ ਜੋ ਨਾ ਬੇਚਾਰਾ ਸੰਵਰਤ ਸ਼ਾਸਤਰ ਜਿਹੜੇ ਨੇ ਵੇਦ ਤੋਂ ਉਲਟ ਨੇ ਸੇ ਮਰਦੀ ਵੀ ਆਏ ਉਲਟਣੇ ਬੇਤੋਂ ਇਹ ਤੋਂ ਬਾਟ ਪਾੜੀ ਹੋਈ ਆ ਉਹ ਬੇਤ ਤੇ ਲੈ ਕੇ ਖੜਾ ਕਰਦੇ ਆਂ ਅਸੀਂ ਵੈਦਿਕ ਧਰਮ ਆ ਹੈ ਸਾਡਾ ਉਹਦੇ ਵਿੱਚ ਕਿਹੜਾ ਵੈਦਿਕ ਤੇ ਇਹਦੇ ਵਿੱਚ ਚਾਰ ਪ੍ਰਕਾਰ ਦਾ ਗਿਆਨ ਆਯੁਰਵੈਦਿਕ ਨਾਲ ਸਾਡਾ ਕੋਈ ਸਬੰਧ ਨਹੀਂ ਉਹੜੇ ਵੈਦ ਦੇ ਬਿਜਾ ਟੂਣੇ ਦਾ ਬੋਲ ਹੋਏ ਸ਼ਕਤੀਆਂ ਪੈਦਾ ਕਰਦੀਆਂ ਰਾਤ ਜੱਗ ਵਗੈਰਾ ਉਹਦੇ ਨਾਲ ਕੋਈ ਸਬੰਧ ਨਹੀਂ ਸਾਡਾ ਸਰਬੋਤਮ ਦਾ ਜਿਹੜਾ ਆਤਮ ਗਿਆਨ ਵੇਦ ਵਿੱਚ ਨਾਮ ਉੱਤਮ ਹੈ ਜਿਹੜਾ ਨਾਮ ਉੱਤਮ ਵੇਦਾਂ ਨਾਮ ਉੱਤਮ ਉੱਤਮ ਨਾਮ ਹੈ ਜਿਹੜਾ ਚੈਪਟਰ ਉਹਦੇ ਨਾਲ ਸੰਬੰਧਦਾ ਥੋੜਾ ਬਾਕੀ ਸੰਸਾਰੀ ਗਿਆਨ ਹੋ ਤਿੰਨ ਤਰ੍ਹਾਂ ਦਾ ਸੰਸਾਰੀ ਗਿਆਨ ਵਿਪਰੀਤ ਕਹੂ ਵੇਦਰੀਤ ਕਿਤੇ ਤਾਂ ਤੂੰ ਵੇਦਰੀਤ ਦੇ ਵਿੱਚ ਹੈ ਬਿਲਕੁਲ ਕਿਉਂਕਿ ਉਹਦੇ ਵਿਪਰੀਤ ਉਹਦੇ ਵਿਪਰੀਤ ਉਹ ਰਾਖੇ ਕਹੂੰ ਅਸਲ ਜੇ ਰਾਖਸ਼ ਕੌਣ ਹੈ ਅਸਲ ਚ ਉਹ ਹੈ ਜਿਹੜਾ ਬੇਦਰੀਤ ਤੇ ਬਪਰੀਤ ਹੈ ਬਪਰੀਤ ਅ ਭਰ ਸ਼ਾਸਤਰ ਹੈ ਬੇਦਰੀਤ ਤੇ ਉਲਟਾ ਸੰਪਰਤ ਸ਼ਾਸਤਰ ਦੇ ਪੜਨ ਤਰੇ ਬਾੜ ਪਾੜੀ ਆ ਤੇ ਪੜਦੇ ਹੋ ਯਾਰ ਹੋਰ ਕੌਣ ਹੈ ਦੂਜੇ ਨੂੰ ਤਾਂ ਕਹਿੰਦਾ ਰਾਖਸ਼ੇ ਦੂਜੇ ਨੂੰ ਪਹਿਲਾਂ ਕਹਿ ਦਈਏ ਨਾ ਇਹ ਜਿਹੜਾ ਆਪਣਾ ਧਰ ਬਣਾਇਆ ਜਿਨ੍ਹਾਂ ਨੇ ਉਹ ਨੂੰ ਨਹੀਂ ਬਣਿਆ ਉਹ ਨੂੰ ਰਾਖਸ਼ ਕਹਤੈ ਇਹ ਠੀਕ ਹੈ ਵੇਦ ਵਿੱਚ ਹੈਗਾ ਵੀ ਉਹ ਰਾਖਸ਼ ਉਹ ਹੈ ਅਸੁਰ ਅਸੁਰ ਉਹ ਹੈ ਜਿਹੜਾ ਪਰਮੇਸ਼ਰ ਦੀ ਸੁਣਨਾ ਸੋਲਡੀ ਬਲਾਉ ਸੱਚ ਦੀ ਤੇ ਸਿਮਰਤ ਯਾਦ ਰੱਖਣਾ ਸੱਚ ਨਾਲ ਸੁਰ ਬਣਾ ਹੀ ਖੜੇ ਨੇ ਸੱਚ ਤੋਂ ਵੇਸ ਤਾਂ ਇਹ ਕਰਦੇ ਨੇ ਅਸਰ ਉਹ ਹੈ ਜਿਹੜਾ ਸੱਚ ਨੂੰ ਸੁਰ ਦੂਜੇ ਪਾਸੇ ਕਰਦਾ ਹੈ ਜਿਹੜਾ ਮਾਇਆ ਨਾਲ ਜੋੜਦਾ ਹੈ ਮੂਰਤੀ ਪੂਜਾ ਕਰਦਾ ਹੈ ਉਹ ਸੁਰ ਹੈ ਆਪ ਨੇ ਜਿਹੜੇ ਨਹੀਂ ਚੱਲੇ ਜਿਹੜੇ ਨਹੀਂ ਕੇ ਵੀ ਇਹ ਰਸਤਾ ਰੀ ਅਸੀਂ ਚੱਲਣ ਉਹਨਾਂ ਨੂੰ ਕਹਿੰਦੇ ਸੁਰ ਨੇ ਪਤਾ ਸਾਡੇ ਨਾਲ ਸੁਰ ਸੁਰ ਬੁਲਾਓ ਕਿਵੇਂ ਹੁਣ ਸਾਡੇ ਕਹਦੇ ਕੋਈ ਗੁਰਬਾਣੀ ਨੂੰ ਛੱਡੋ ਸਾਡੀ ਸੁਣੋ ਪੰਥ ਦੀ ਸੁਣੋ ਸੁਰ ਬਲਾਓ ਗੁਰਬਾਣੀ ਨੂੰ ਛੱਡ ਦਿਓ ਕਿਵੇਂ ਛੱਡ ਦੇਣ ਕਿ ਜਿਹੜਾ ਸਿੱਖ ਆ ਉਹ ਤਾਂ ਛੱਡਦਾ ਨਹੀਂ ਕਹੂੰ ਤਿਰਗੁਣ ਅਤੀਤ ਕਹੂੰ ਸਰਗੁਣ ਸਮੇਤ ਕਹੂੰ ਬੇਦ੍ਰੀਤ ਕਹੂੰ ਦਾਸਿਓ ਅਤੀਤ ਤਿਰਗੁਣ ਅਤੀਤ ਜਾਂ ਬੇਦ੍ਰੀਤ ਤੇ ਤਿਰਗੁਣ ਅਤੀਤ ਹੋ ਜਾਂਦਾ ਜੇ ਬੇਦਰੀਤ ਹੈ ਜੋ ਗੁਰਬਾਨੇ ਵਾਲੀ ਵੀ ਤੇ ਬੇਦਰੀਤ ਹੈ ਤਾਂ ਤਿੰਨ ਗੋਣਾਂ ਤੇ ਪਰੇ ਹੈ ਤਰੇ ਗੋਣਾਂ ਬਿੱਟੇ ਖਾਈਏ ਸਰ ਫਿਰ ਤੇ ਰੋਣਾ ਦੀਤ ਹੈ ਕਹੋ ਸੁਰਗੋਣ ਸੁਵੇਤੋ ਸੁਰਗੋਣ ਸੁਵੇਤ ਕਹੇ ਸਰਗੋਣ ਸੁਵੇਤ ਨਹੀਂ ਕਹਿਆ ਸੁਰਗੋਣ ਸੁਵੇਤੋ ਸਰਗੋਣ ਨਹੀਂ ਕਹਿਆ ਸੁਰਗੋਣ ਕਹਿਆ ਸਾਰੇ ਗੋਣ ਦੇ ਨਾਲ ਦੇਵਤੇ ਆਲੇ ਗੋੜਾਂ ਦੇ ਸਵੇ ਤੋਂ ਸੁਰ ਗੋੜ ਨਾਲ ਦੇਵਤੇ ਆਲੇ ਗੋੜ ਸੁਰ ਗੋੜ ਸੁਰ ਦੇਵ ਤੇ ਰੁਗਾ ਉਹ ਸੁਰ ਦੇਵ ਦੇਵਤੇ ਆਲੇ ਗੋੜ ਭਗਤਾਂ ਆਲੇ ਗੋੜੀ ਉਤੇ ਹੁੰਦੇ ਨੇ ਤਾਂ ਤੇ ਤਾਂ ਮਾਨਸ ਤੇ ਦੇਵਤੇ ਕੀ ਹੈ ਮਾਨਸ ਤੇ ਦੇਵਤਾ ਕੀ ਤਾਂ ਦੇਵਤੇ ਨੇ ਜੋ ਸਿੱਖ ਬਣਨਾ ਉਜੜ ਪੁੱਠੇ ਰੱਖਦੇ ਜਾਂਦੇ ਉਹਨਾਂ ਦਾ ਸਿੱਖ ਉਹ ਤਾਂ ਰਾਹ ਹੈ ਪੁੱਠਾ ਉਹਦਾ ਤਾਂ ਉਹਨਾਂ ਦਾ ਸਿੱਖ ਬਣਦਾ ਨਹੀਂ ਦੇਵਤਾ ਸਟੂਡੈਂਟ ਸਟੂਡੈਂਟ ਕੌਣ ਜਿਹੜਾ ਮਾਨਸ ਤੇ ਦੇਵਤਾ ਭਰੇ ਹੈ ਭਈ ਦੇਵਤਾ ਦਾ ਜੋ ਪਹਿਲੀ ਕਲਾਸ ਵਾਲਾ ਹੈ ਪਹਿਲੀ ਕਲਾਸ ਤੋਂ ਬਾਅਦ ਦੇਵਤੇ ਨਹੀਂ ਡਵੈਲਪ ਹੋ ਕੇ ਨਾ ਭਗਤ ਬਣਦੇ ਭਗਤ ਵੱਡਾ ਦੇਵਤਾ ਨਹੀਂ ਵੱਡਾ ਤਾਂ ਇਹ ਕਹੇ ਭਗਤ ਬਰਾਬਰ ਔਰ ਨਾ ਦੇਵਤਾ ਦਾ ਸਿੱਖ ਸਾਰੇ ਹੀ ਨੇ ਦੇਵਤਾ ਤਾਂ ਬਗੁੱਲੀ ਗੱਲ ਹੈ ਉਹ ਵੀ ਅੰਦਰ ਹੈ ਦੇਵ ਤੇ ਚਿੰਤਾ ਉਹ ਦੇਵ ਉਹਦਾ ਸਵਾਹ ਦੇਵਤੇ ਵਾਲਾ ਦੂਏ ਦਾ ਨੁਕਸਾਨ ਨਹੀਂ ਕਰਨਾ ਉਹ ਦੇਵ ਹੈ ਪੁਰਾਣੀ ਸੋਚਣਾ ਖੈਦਾ ਦੇਵ ਹੈ